ਏ ਆਰ ਪੀ 1550 ਏ ਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ 11 ਵਜੇ 6 ਮਿੰਟ ਹੋਏ ਨੇ 20 ਫਰਵਰੀ ਦਾ ਦਿਨ ਹੈ ਅਵਰਾ 2017 ਦਾ ਸੋਮਵਾਰ ਹੈ 9 ਫੱਗਣ ਨਾਨਕਸ਼ੇਸਮਤ 548 ਨਿਗਾ ਹਾਰਦਿਕ ਸਵਾਗਤ ਹੈ ਜੀ ਅੱਜ ਦੀ ਲੋਕ ਸਾਡੇ ਵਿੱਚ ਅਹਿਮ ਕਟਾਵਾਂ ਗੱਲਾਂ ਬਾਤਾਂ ਜੀ ਸੰਗੀਤ ਸੁਣਦੇ ਮਸਲਾਂ ਤੇ ਗੱਲਬਾਤ ਹੋਈ ਖਬਰਾਂ ਲੋਕਲ ਤੇ ਅੰਤਰਰਾਸ਼ਟਰੀ ਪੰਜਾਬ ਦੇ ਵਿੱਚ ਪਾਣੀਆਂ ਦੀ ਜਿਹੜੀ ਸਿਆਸਤ ਖੇਲੀ ਜਾ ਰਹੀ ਹੈ ਵੋਟਾਂ ਦੇ ਇਲੈਕਸ਼ਨ ਤੋਂ ਪਹਿਲਾਂ ਚਟਾਲੇ ਇੱਕ ਬੰਨੇ ਪੀਰ ਮੁਹੰਮਦ ਇੱਕ ਬੰਨੇ ਪੂਹ ਚੱਕੀ ਫਿਰਦਾ ਹੈ ਪਿੱਛੇ ਕਹਾਣੀ ਕੀ ਹੈ ਇਹ ਰੌਲਾ ਕੀ ਹੈ ਹਰਿਆਣੇ ਵਾਲੇ ਪਾਸੇ ਨਹਿਰ ਪਟਣ ਤੇ ਲਈ ਪੀਰ ਮੁਹੰਮਦ ਕਿਉਂ ਕਹਿੰਦਾ ਹੈ ਚ ਜਾ ਮੈਂ ਡੱਕਣੀ ਇਸ ਦੀ ਗੱਲਬਾਤ ਤੇ ਨਾਲ ਵਿਕਟੋਰੀਆ ਦੇ ਇੱਕ ਜੱਜ ਨੇ ਇੱਕ ਡਰਗ ਟ੍ਰੈਸ ਇਸ ਕਰਕੇ ਛੱਡ ਦਿੱਤਾ ਹੈ ਕਰ ਦਿੱਤਾ ਕਿ ਉਹ ਕੋਈ ਸ਼ਰਫ ਹੈ ਨਹੀਂ ਸੀ ਉਹਦੇ ਸੈੱਲ ਤੋਂ ਉਹਦੇ ਅਦਾਲਤ ਦੇ ਕਮਰੇ ਚ ਲਿਆਉਣ ਦੇ ਆ ਲੈ ਸਰਾਰ ਦਾ ਕੱਲ ਨੂੰ ਬਜਟ ਦਾ ਦਿਨ ਹੈ ਸੁਣ ਲਿਓ ਐਮਐਸਪੀ ਘਟਾ ਦਾਂਗੇ ਆ ਕਰਦਾਂਗੇ ਉਹ ਕਰਦਾਂਗੇ ਫੈਰੀਆਂ ਲਿਆਏ ਬਸ ਉਹੀ ਪੰਜਾਬ ਵਾਲੀ ਲਾ ਲਿਆ ਕਰੋ ਹੁਣ YouTube ਵਾਲੀ ਸੜਕਾਂ ਬਣੀ ਜਾਂਦੀਆਂ ਆ ਗੱਲਾਂ ਹੋਈ ਜਾਂਦੀਆਂ ਉਹੀ ਇੱਥੇ ਚੱਲਣੀ ਨਾਲ ਹੁਣੇ ਐਬ ਦੇ ਵਿੱਚੋਂ ਇੱਕ ਹੋਰ ਘਟਨਾ ਗੋਲੀ ਦੀ ਦਾ ਪਤਾ ਲੱਗਿਆ ਧੰਨਵਾਦ ਮਿੱਤਰਾਂ ਦਾ ਜਿਨ੍ਹਾਂ ਨੇ ਹੁਣੇ ਦੱਸਿਆ ਫਰਦੌਸ ਸਾਹਿਬ ਕੋਲ ਕਲਗੀਦਰ ਦਰਵਾਜ਼ਾ ਕੋ ਕਿਸੇ ਘਰ ਦੇ ਵਿੱਚ ਸ਼ੂਟਿੰਗ ਹੋਈ ਹੈ ਪੁਲਿਸ ਨੇ ਘਰ ਘੇਰਿਆ ਹੋਇਆ ਅਪਸ਼ਟ ਖਬਰਾਂ ਆਏ ਨੇ ਕਿ ਮ੍ਰਿਤਕ ਜਿਸ ਤੇ ਗੋਲੀ ਚੱਲੀ ਹੈ ਉਹ ਉਸ ਜਾਨ ਜਾਂਦੀ ਗਈ ਹੈ ਜਾਨ ਚਲੇ ਗਈ ਇਹ ਪਤਾ ਲੱਗਿਆ ਤੇ ਨਾਲ ਹੀ ਆਪਣੀ ਮਾਂ ਬੋਲੀ ਪੰਜਾਬੀ ਦੀ ਗੱਲ ਮਾਂ ਬੋਲੀ ਜਸਾ ਜੇਕਰ ਸਚਤਾ ਵਾਲੀ 247 1559 1844247 1550 ઓનર નંબર હે કેઆરપીઆડિયો.કોમ ਤੇ સીધા પ્રસારણ સુન દેઓ તે એપ ડાઉનલોડ કર શકદેઓ નહી તા પ્રોગ્રામ જેڑا ખબરનામા تے પિયા ਹੁੰਦਾ ਉੱਤੇ ਸੁਣ શકદેઓ 1844 247 1550 ਜਦ ਵੀ ફોન کرنا ਤੁਸੀਂ ਇਸ નંબર ਤੇ ਮੈਨੂੰ ਪਤਾ ਮੁਸ਼ਕਲ ਹੈ کئی ਵਾਰ ਘੰਟੀਆਂ ਵੱਧ ਵੱਜਦੀਆਂ ਨੇ ਪਰ ਫਿਰ ਵੀ ਤੁਹਾਡਾ ਧੰਨਵਾਦ ਹੈ ਤੁਸੀਂ ਬਹੁਤ ਲੰਮਾ ਸਮਾਂ ਹੋ ਗਿਆ ਸਾਥ ਦੇ ਰਹੇ છો ખેતી ہوئے ਦਾ ਹੱਲ ਹੋ ਜਾਣਾ ਧੰਨਵਾਦ ਦੇ ਨਾਲ ਹੀ ਨਿਮੀ ਡੌਲਜੀ ਦਾ ਨੰਬਰ 6044406462 info@krpioradiodotcom ਇਹ ਉਹਦਾ ਈਮੇਲ ਹੈ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਹਾਨੂੰ ਹੈ ਇਕਰ ਦਾ ਸੱਕ ਉਬਲੇ ਤੇ ਜੜਾ ਮਜੀਸ਼ ਦੀਆਂ ਇੱਕ ਚੂ ਚੁਟਕੀ ਸੁਹੇ ਖਾਬ ਦੀ ਨਿਤ ਸੁਪਨੇ ਪੀਠ ਦੀਆਂ ਵਿੱਚ ਰੰਗਣ ਖੱਦਰ ਨੱਡੀਆਂ ਤੇ ਡਲਡਲ ਪੈਂਦਾ ਚਾਹ ਵੇ ਅੱਕ ਦੇ ਕੂਲੇ ਫੰਬਿਆ ਕਿਤ ਉੱਡਦਾ ਉਡਦਾ ਆ ਅੱਜ ਕੋਟ ਕਲੀ ਦਾ ਰੰਗ ਵੇ ਤੇਰੀ ਦੇਹ ਨੂੰ ਦਿਆਂ ਚੜਾ ਤੇ ਪਿੰਜ ਤੁੰਬ ਸੰਗ ਸਲਿਕੀਆਂ ਮੈਂ ਧਾਗਾ ਲਮਾ ਬਣਾ ਇਹ ਧਾਗਾ ਮੇਰੇ ਦਾਜ ਦਾ ਮੈਨੂੰ ਲੱਗਦਾ ਸਕਾਪਰਾ ਯਾਰ ਉਹੀ ਵਾਲੇ ਖੇਤ ਨੂੰ ਇੱਕ ਜਾਂਦੀ ਪਹੀ ਜਿਹਾ ਵੇਖ ਨਵਾਈਆਂ ਟਾਹਣੀਆਂ ਤੇ ਅਸਾਂ ਨਵਾਈ ਧੌਣ ਤੇ ਹੱਥ ਭਰੇਂਦੇ ਤੋਪਿਆਂ ਨੂੰ ਬੁੱਲ ਤਾਂ ਸ਼ੋਂਦੇ ਗਾਉਣ ਇੱਕ ਉੱਡਣ ਤਿੱਤਰ ਖੰਭੀਆਂ ਜੋ ਅੱਗ ਕਲੇ ਦੇ ਲਾਉਣ ਤੇ ਦੂਜਾ ਪੱਤਰੋ ਪੱਤਰੀ ਅਜ ਮਛਰੀ ਫਿਰਦੀ ਪੌੜ ਸੁਬਰ ਤੇ ਸੁਬਰ ਤੇ ਤਿਲ ਪੱਤਰਾ ਹਾਲੇ ਨੀਲਖ ਘੁੰਗਟ ਬਾਗ ਸੁਣਨ ਵਾਲੀਆਂ ਲੈਣਾ ਸੁਬਰ ਤੇ ਤਿਲ ਪੱਤਰਾ ਹਾਏ ਨੀਲਕਰ ਘੁੰਗਟ ਬਾਗ ਇੱਕ ਚੋਪ ਤਾਂ ਬੜੀ ਰੰਗੀ ਲੜੀ ਧਾਗੇ ਦੇ ਖੁੱਲ ਗਏ ਭਾਗ ਇਹ ਧੁੱਪਾਂ ਜ਼ਹਿਰ ਕਸ਼ੀਦੀਆਂ ਇਹ ਤਰਤਾ ਮੋਰਨੀਆਂ ਨੀ ਬਾਵਲ ਆਖੇ ਪੈਂਦੀਆਂ ਨੇ ਧੀਆ ਤੋੜਨੀ ਆ ਇੱਕ ਸੂਈ ਮੇਰੀ ਨਿਕੜੀ ਇੱਕ ਦਰਦਸਲ ਮੜੇ ਨੇ ਲਿਖਿਆ ਸਾਹਾਂ ਨੂੰ ਚੁਗਣਾ ਹੈ ਪਰ ਮਾਨਸ ਚੰਮੜੇ ਨੇ ਅਜ ਲਾਲ ਹੋ ਗਏ ਖੱਦਰ ਦੇ ਦਰਿਆ ਮੈਨੂੰ ਅਗਲੇ ਘਰ ਵਿੱਚ ਤੋੜ ਕੇ ਪਰ ਕੱਲੀ ਰਹਿ ਜਾਊ ਮਾਂ ਜੋ ਹਵਾ ਚਕੰਗਣ ਜੋ ਹਵਾ ਚਕੰਬਣ ਮੂਂਗਰੇ ਮੇਰਾ ਮੱਥਾ ਜਿਹਾ ਡਰੇ ਤੇ ਨਾਲੇ ਵੰਗਾ ਮਹਿੰਦੀਆਂ ਦਾ ਸੁਪਨਾ ਇੱਕ ਤਰੇ ਮੈਂ ਬਣ ਜਾ ਫੁੱਲ ਫੁਲਕਾਰੀਆਂ ਕੋਈ ਤੋਪੇ ਆੜ ਭਰੇ ਮੈਨੂੰ ਚੁੰਮ ਕੇ ਹਿੱਕ ਨਾਲ ਲਾ ਲਵੇ ਮੇਰੇ ਸਭੋ ਦੁੱਖ ਹਰੇ ਮੈਨੂੰ ਚੁੰਮ ਕੇ ਹਿੱਕ ਨਾਲ ਲਾ ਲਵੇ ਮੇਰੇ ਸਭੋ ਦੁੱਖ ਹਰੇ ਹਰਮਨਜੀਤ ਰਾਣੀ ਤਤ 11 ਵਜੇ 12 ਮਿੰਟ ਹੋਏ ਨੇ ਤੁਹਾਡਾ ਨਿਗਾ ਹਾਰਦਿਕ ਸਵਾਗਤ ਹੈ ਸੋਮਵਾਰ ਦਾ ਦਿਨ ਹੈ ਹਫਤੇ ਦੀ ਸ਼ੁਰੂਆਤ ਹੈ ਸ਼ੁਰੂ ਦੇ ਵਿੱਚ ਥੋੜਾ ਜਿਹਾ ਨਰਮ ਹੁੰਦਾ ਦੁਪਹਿਰ ਨੂੰ ਫਿਰ ਸੈੱਟ ਹੋ ਜਾਂਦਾ ਸਰੀਰ ਸਾਰੇ ਇਸ ਦਿਨ ਦੇ ਵਿੱਚ ਥੋੜੇ ਜੇ ਦਰਮੇਂ ਹੁੰਦੇ ਨੇ ਕਿਉਂਕਿ ਦਿਨ ਦੇ ਦੋ ਛੁੱਟੀਆਂ ਕਿਸੇ ਦੀ ਇੱਕ ਛੁੱਟੀ ਕਰਕੇ ਦਿਨ ਹਫਤੇ ਦੀ ਸ਼ੁਰੂਆਤ ਹੈ ਪਰ ਦਿਨ ਸਾਰੇ ਕੁਝ ਹਨ ਜਿਹਹ ਜਿਹੇ ਉੱਪਰ ਵਾਲੇ ਨੇ ਬਣਾਏ ਨੇ ਖੁਸ਼ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਸਭੇ ਚੀਜ਼ਾਂ ਕਦੇ ਨਹੀਂ ਪੂਰੀਆਂ ਹੁੰਦੀਆਂ ਤੇ ਨਾ ਹੀ ਪੂਰੀਆਂ ਹੋਣੀਆਂ ਚਾਹੀਦੀਆਂ ਇਹ ਸਮਰਾਤ ਬਣ ਕੇ ਬੰਦਾ ਰੱਬ ਬਣ ਜਾਂਦਾ ਹੈ। ਅਰ ਐਬਸ 4 ਤੋਂ ਇੱਕ ਖਬਰ ਮਿਲੀ ਹੈ 20 ਮਿੰਟ ਪਹਿਲਾਂ ਕਿ ਉੱਥੇ ਗੋਲੀ ਚੱਲੀ ਹੈ ਗੁਰਦੁਆਰਾ ਸਾਹਿਬ ਜਿਹੜੇ ਨੇ ਕਲਗੀ ਦਰਬਾਰ ਉਹਦੇ ਨੇੜੇ ਕਿਸੇ ਘਰ ਦੇ ਵਿੱਚ। ਇਹ ਗੱਲ ਖੱਲਣ ਦਾ ਨਾਮ ਨਹੀਂ ਲੈ ਰਹੀ ਜਿਆਦਾ ਐਵਸਪੋਰਟ ਦੇ ਵਿੱਚ ਗੋਲੀਆਂ ਦਾ ਵਟਾਂਦਰਾ ਸ਼ੁਰੂ ਹੋਇਆ ਇੱਕ ਦੂਜੇ ਦੇ ਨਾਲ ਉਹ ਮੁੰਡਿਆਂ ਦਾ ਜਿਹੜਾ ਕਤਲ ਐਡਮਿੰਟਨ ਦੇ ਵਿੱਚ ਸਿੱਧੂ ਤੇ ਮੰਗੜਤਾ ਹੋਇਆ ਉਸ ਤੋਂ ਬਾਅਦ ਬਹੁਤ ਤਲਖੀ ਹੈ ਫਜ਼ਾ ਗਰਮ ਹੈ ਐਵਸਪੋਰਟ ਵਾਲੇ ਦੱਸ ਰਹੇ ਨੇ ਕੁਝ ਘਟਨਾਵਾਂ ਵੀ ਹੋਈਆਂ ਜਿਹੜੀਆਂ ਪੁਲਿਸ ਨੂੰ ਪਤਾ ਨਹੀਂ ਪਰ ਭਾਈਚਾਰੇ ਚ ਪਤਾ ਨਹੀਂ ਜਿਹੜੀ ਅੱਜ ਸੰਦੇਹਾਂ ਦੀ ਘਟਨਾ ਹੋਈ ਹੈ ਸਾਰਾ ਏਰੀਆ ਪੁਲਿਸ ਨੇ ਵੜਿਆ ਹੋਇਆ ਤੇ ਗੋਲੀ ਚੱਲੀ ਹੈ ਦੱਸਣ ਦੇ ਨਾਲ ਕਿਉਂ ਅੰਦਰ ਤਾਂ ਜਾਣ ਹੀ ਦਿੱਤਾ ਜਾਂ ਕਿਉਂਕਿ ਜਗਾ ਜਿਹੜੀ ਹੈ ਤਾਂ ਹੀ ਘੇਰੀ ਹੈ ਨਹੀਂ ਤਾਂ ਦੇਖਣ ਵਾਲੇ ਦੱਸਿਆ ਕਿ ਪੁਲਿਸ ਕੋਈ ਵੀ ਗੱਡੀ ਹੈ ਜਿਹੜੀ ਐਂਬੂਲੈਂਸ ਵਗੈਰਾ ਕਿਤੇ ਨਹੀਂ ਗਈ ਇਹਦਾ ਮਤਲਬ ਕੁਝ ਨਾ ਕੁਝ ਗਲਤ ਹੈ ਦਾਤਾ ਸੁੱਖ ਰੱਖੇ ਬਹੁਤ ਘੰਟਿਆਂ ਵੱਧੀ ਇਸ ਤੇ ਆਪਾਂ ਗੱਲ ਕੀਤੀ ਹੈ ਪਾਈਚਾਰਾ ਚਿੰਤਕ ਚੰਤਤਾ ਹੈ ਜੇ ਆਪਣੇ ਘਰੇ ਲੱfte ਜ਼ਿਗਰ ਘਰੇ ਸੁੱਤੇ ਪਏ ਦਾ ਇਹ ਮਤਲਬ ਨਹੀਂ ਜੇ ਕਿਸੇ ਤੇ ਚੱਲੀ ਆ ਉਹ ਆਪਣਾ ਧੀ ਪੁੱਤ ਨਹੀਂ ਪਾਈਚਾਰਾ ਉਹਨੂੰ ਹੀ ਕਹਿੰਦੇ ਆ ਕਮਿਊਨਿਟੀ ਇੱਕ ਹੈ ਚੰਗੇ ਮਾਰੇ ਦੇ ਵਿੱਚ ਜਦ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਖੜਦੇ ਹੋ ਜ਼ਿੰਦਗੀ ਤਾਂ ਚੱਲਦੀ ਹੈ ਗੱਲ ਨੇ ਮਾਪਿਆਂ ਬਹੁਤ ਚਿੰਤ ਕੀਤਾ ਬਹੁਤ ਪਰਿਵਾਰ ਜਿਹੜੇ ਨੇ ਐਵਸਫੋਰ ਦੇ ਵਿੱਚੋਂ ਚਲੇ ਗਿਆ ਕੋਈ ਕੋਕਨਾਗਨ ਚਲੇ ਗਿਆ ਕੋਈ ਬ੍ਰੈਂਟਨ ਚਲੇ ਗਿਆ ਕੋਈ ਪੰਜਾਬ ਉੱਠ ਗਏ ਕਾਰਨ ਇੱਕੋ ਹੀ ਹੈ ਕਿ ਆਪਣੇ ਬੱਚਿਆਂ ਨੂੰ ਬਚਾ ਲਈ ਹੈ ਕੱਖ ਨਹੀਂ ਤਾਂ ਹੀ ਕਿਹਾ ਤਾਂ ਹੀ ਕਹੀਦਾ ਪਿਛੇ ਢਾਰੇ ਹੋਣ ਪੱਕੀਆਂ ਸੰਧਾ ਹੁਣ ਕੱਚੀਆਂ ਹੁਣ ਚਵਾਰਾ ਹੋਵੇ ਚ ਸਬਾਤ ਹੋਵੇ ਦੋ ਕਿੱਲੇ ਹੁਣ ਡੇਢ ਹੋਣ ਤਿੰਨ ਹੁਣ ਨਾ ਵੇਚਿਓ ਤੇ ਨਾ ਹੀ ਘਰ ਵੇਚਿਓ ਇਹ ਗੱਲ ਚੱਲਦੀ ਐ ਅਕਸਰ ਵੀ ਅਖੀਰ ਲਿਉਣੀ ਪਊ ਕੋਈ ਗੱਲ ਨੀ ਉਹ ਭੋਏ ਉਹ ਧਰਤੀ ਅਜਲਾ ਤੋਂ ਉੱਥੇ ਰਹੀ ਐ ਜੇ ਤੁਹਾਡੀ ਨਾਂ ਵੀ ਵਿਕੂ ਕੁਛ ਨੀ ਫਰਕ ਪੈਂਦਾ ਤੁਹਾਨੂੰ ਇੱਥੇ ਰੋਟੀ ਮਿਲੀ ਐ ਆਪਣਾ ਘਰ-ਬਾਰ ਪਿੱਛੇ ਰੱਖੋ ਕਈ ਵਾਰ ਅਜਿਹਾ ਸਮਾਜ ਹੁੰਦਾ ਸਿਰ ਤੇ ਛੱਤ ਵੀ ਨਹੀਂ ਹੁੰਦੀ ਸਾਰਾ ਕੁਝ ਵੇਚ-ਪਟ ਕੇ ਆ ਜਾਂਦੇ ਫੇਰ ਵੀ ਹਲੇ ਤੱਕ ਉਸਦੇ ਗੱਲ ਪੁੱਛੀ ਸੀ ਨਾ ਕਿਸੇ ਨੇ ਕਿ 에어ਪੋਰਟ ਤੇ ਜਾ ਕੇ ਉਹ ਕਹਿੰਦੇ ਅਸੀਂ ਐਨਆਰਆਈ ਆ ਹੈ ਕੈਨੇਡੀਅਨ ਸਿਟੀਜ਼ਨਸੀ ਉਹ ਫੜ ਲਏ ਰੁਪਇਆ 30000 ਲਈ ਫਿਰਦੇ ਲਜਾ ਇਹ ਦੁੱਖ ਦੀ ਘਟਨਾ ਗੁਰੂ ਮਹਾਰਾਜ ਕਿਰਪਾ ਰੱਖੇ ਇਹ ਚੀਜ਼ਾਂ ਨਿਬੜ ਜਾਣ ਕਿਸ ਹੰਝੂ ਦੇ ਸਿੱਟਦੇ ਨੇ ਉਹਨਾਂ ਦੇ ਹੱਥ ਨਹੀਂ ਕੋਈ ਵੀ ਮਾਪਾ ਨਹੀਂ ਚਾਹੁੰਦਾ ਕਿ ਜਵਾਨ ਪੁੱਤ ਦੇ ਉੱਪਰ ਕਫਨ ਪਾਉਣ। ਹਰ ਇੱਕ ਆਪਣੀ ਵੱਲੋਂ ਟਰਾਈ ਬੈਸਟ ਕਰਦਾ ਜੇ ਉਹ ਮਿਹਨਤਾਂ ਵੀ ਕਰਦੇ ਨੇ ਉਹ ਘਰ ਦੇ ਲਈ ਉਹ ਕਰਦੇ ਨੇ। ਬਾਲ ਬੱਚਿਆਂ ਦੀ ਸਹੂਲਤ ਲਈ ਕਰਦੇ ਨੇ ਉਹਨਾਂ ਨੇ ਕਿਹੜਾ ਲਾਸ ਬੈਗ ਜਾ ਕੇ ਗੈਂਬਲਿੰਗ ਕਰਨੀ ਆ ਉਹ ਇੱਥੇ ਹੀ ਨੇ ਸਰੀ ਜੋਗੇ ਨੇ ਸਰੀ ਤੋਂ ਘਰ ਕੰਮ ਤੋਂ ਘਰ ਘਰ ਤੋਂ ਕੰਮ ਗਰੋਸਰੀ ਖਤਮ ਕਰ। ਦੋਸ਼ ਨਾ ਦਈਏ ਮਾਪਿਆਂ ਨੂੰ ਵੀ ਬਹੁਤ ਕਈ ਵਾਰ ਗੱਲਾਂ ਚੱਲਦੀਆਂ ਉਹ ਮਾਪੇ ਐ ਨਹੀਂ ਕਰਦੇ ਕੋਈ ਨਹੀਂ ਚਾਹੁੰਦਾ ਕਿਸੇ ਦਾ ਧੀ ਪੁੱਤ ਖਰਾਬ ਹੋਏ ਕੁਝ ਕਿਸਮਤ ਦੇ ਗੇੜ ਨੇ ਤੇ ਕੁਝ ਅਜਿਹੀਆਂ ਚੀਜ਼ਾਂ ਜਿਹੜੇ ਸਾਡੇ ਕੰਟਰੋਲ ਤੋਂ ਬਾਹਰ ਰਹੀ ਭਾਈਚਾਰੇ ਦੀ ਮਦਦ ਦੀ ਗੱਲ ਭਾਈਚਾਰਾ ਇੱਕ ਡਾਹ ਕੇ ਖੜਦਾ ਜਦ ਵੀ ਆਵਾਜ਼ ਦਈਏ ਪਿਛਲੇ ਦਿਨੀ ਮੁੰਡੇ ਹੁੰਦਲ ਨੇ ਆਤਮ ਹੱਤਿਆ ਕੀਤੀ ਸੀ ਉਸ ਦੇ ਨਾਲ ਦੇ ਦੋਸਤਾਂ ਨੇ ਕੱਲ ਫੰਡਰੇਜ਼ਿੰਗ ਕੀਤਾ ਹੁਣ ਉਹ ਖੁਦਕੁਸ਼ੀ ਦਾ ਕਾਰਨ ਘਰ ਹੋ ਸਕਦਾ ਕੰਮ ਹੋ ਸਕਦਾ ਕੋਈ ਰੋਗ ਹੋ ਸਕਦਾ ਪਰ ਭਾਈਚਾਰਾ ਤਾਂ ਨਾਲ ਖੜਾ ਨਾ ਇਹ ਗੱਲ ਬੜੀ ਵਿਵਾਦ ਵਿਵਾਦ ਦੀ ਚੱਲ ਰਹੀ ਹੈ ਅੱਜ ਸਵੇਰੇ ਵੀ ਬੜੇ ਕਈ ਮੈਸੇਜ ਕਈ ਕਿਰਤ ਹੁੰਦੇ ਨੇ ਜਿਨ੍ਹਾਂ ਨੇ ਉਦਾਰਵਾਦੂ ਗੱਲ ਉਦਾਰਵਾਦੀ ਗੱਲ ਨਹੀਂ ਕਰਨੀ ਸਦਾ ਹੀ ਸਦਾ ਉੱਠੀ ਗੱਲ ਕਰਨੀ ਆ ਹੋ ਗਿਆ ਉਹ ਹੋ ਗਿਆ ਔਰ ਕਰਨਾ ਵੀ ਨਹੀਂ ਕੱਟ ਮੁੰਡੇ ਜਿੰਮ ਸਿੰਘ ਵਾਰੇ ਪਤਾ ਲੱਗਿਆ ਉਸ ਦਿਨ ਉਸਦੇ ਦੋਸਤਾਂ ਨੇ ਆ ਕੇ ਜਿਹੜੇ ਉਹਦੇ ਨਾਲ ਪੜ੍ਹਦੇ ਸੀ ਉਹ ਵੀ ਦੋਸਤ ਵੀ ਨਹੀਂ ਸੀ ਗਾਂ ਤੋਂ ਗਾਂ ਉਹਦਾ ਕਨੈਕਸ਼ਨ ਲੱਭ ਕੇ ਦੱਸਿਆ ਕਿ ਪੈਸੇ ਢੇਲੇ ਚਾਹੀਦੇ ਨੇ ਮੁੰਡੇ ਦੀ ਡੈਥ ਹੋ ਗਈ ਕੋਸ਼ਿਸ਼ ਕੀਤੀ ਮੈਂ ਸੇਂਟ ਪੌਲ ਤੋਂ ਪਰ ਕਈ ਵਾਰ ਨੈਕਸਟ ਟੂ ਕਿੰਨੂ ਉਹ ਨਹੀਂ ਦੱਸਦੇ ਉਸ ਗੱਲ ਦਾ ਪਤਾ ਲੱਗਿਆ ਮੁੰਡੇ ਦੀ ਓਵਰਡੋਜ਼ ਡੈਥ ਹੋਈ ਪਰ ਭਾਈ ਚਰਨ ਲਾਹ ਇਹਦੇ ਤੇ ਹੰਗਾਰਾ ਦਿੱਤਾ ਅੱਜ ਸੁਨੇਹਾ ਕੋਈ ਭਾਈਮਾਨ ਕੋਈ ਆਪਣਾ ਸੁੰਡ ਵਾਲਾ ਉਹ ਕਹਿੰਦਾ ਜੀ ਇਹ ਤਾਂ ਪੈਸੇ ਉਹਦੀ ਤਾਂ ਬੋਡੀ ਜਿਹੜੀ ਭਾਰਤੀ ਐਂਬੈਸੀ ਭੇਜ ਰਹੀ ਹੈ ਉਹ ਡਰਗ ਖਾ ਕੇ ਉਹਦੀ ਡੈਥ ਹੋਈ ਹੈ ਭਾਈ ਚਰਨ ਨੂੰ ਇਹ ਦੱਸਿਆ ਨਹੀਂ ਗਿਆ ਤੇ ਆਪਾਂ ਕਿਹਨੇ ਦੇ ਚੁੰਡੀ ਪਈ ਗਈ ਕਾਰਨ ਇਹ ਹੈ ਵੀ ਬਹੁਤ ਬਾਰ ਮੌਤਾਂ ਹੋਈਆਂ ਕੋਈ ਨਹੀਂ ਐਂਬੈਸੀ ਕੋਈ ਨਹੀਂ ਹਾਈ ਕਮਿਸ਼ਨ ਭੇਜਦਾ 9000 ਡਾਲਰ ਬਈ ਬਿਲਦੀ ਫੋਟੋ ਮੇਰੇ ਕੋਲ ਹੈ 1 ਵਜੇ ਉਹਦੀ ਮੁੰਡੇ ਦੀ ਦੇ 130 ਤੇ 108 ਤੇ ਇੱਕ ਛੋਟਾ ਜਿਹਾ ਚਰਚ ਨੂੰ ਮਫਿਨਲ ਹਾਲ ਆ ਉਹਦੇ ਵਿੱਚ ਰੱਖੀ ਗਈ ਆ ਉਥੋਂ ਭੇਜਣਿਆਂ 9200 ਡਾਲਰ ਉਹਦੀ ਬੋਡੀ ਤੇ ਖਰਚ ਆ ਜਿਹੜਾ ਆਨਲਾਈਨ ਲੋਕ ਪੈਸੇ ਦਿੱਤੇ ਆ 35-40 ਹਜ਼ਾਰ ਡਾਲਰ ਹੋ ਗਿਆ ਉਹ ਪਰਿਵਾਰ ਆ ਇੱਥੇ ਨੇੜੇ ਦੇ ਪਰਿਵਾਰ ਨੇ ਜਿਨ੍ਹਾਂ ਨੇ ਸੈਟਅਪ ਕੀਤਾ ਮਾਂ 12-14 ਲੱਖ ਦੇ ਵਿੱਚ ਕਰਜ਼ਈ ਹੈ ਜੇ 10-20-20 ਡਾਲਰਾਂ ਦੇ ਨਾਲ ਭਾਈਚਾਰੇ ਨਾਲ ਕਿਸੇ ਦਾ ਟੱਬਰ ਬਚ ਜਾਊ ਉਹ ਵੀ ਦਿਨ ਰਾਤ ਪੰਜਾਬ ਦੀਆਂ ਗੱਲਾਂ ਕਰਦੇ ਆ ਡਰਗ ਨਾਲ ਹੀ ਮਰ ਗਿਆ ਕਹਿ ਲਓ ਪਰ ਮਾਪੇ ਮਾਂ ਦਾ ਤਾਂ ਕਸੂਰ ਕੋਈ ਨਹੀਂ ਜਿਨੇ 5 ਕਿਲੇ ਗਹਿਣੇ ਧਰਕੇ ਆਪਣੇ ਪੁੱਤ ਨੂੰ ਭੇਜਿਆ ਪਰ ਕਿਸਮਤ ਹੱਥੋਂ ਕਿਰ ਗਈ ਇਹ ਬੈਸ ਦਾ ਮੁੱਦਾ ਨਹੀਂ ਹੈ ਵੀ ਉਹ ਕਿਵੇਂ ਮਰਿਆ ਹੁਣ ਕਰਕੇ ਮੁੰਡਾ ਮਰ ਗਿਆ ਉਹਦੇ ਲਈ ਨਹੀਂ ਪੈਸੇ ਇਕੱਠੀ ਕੀਤੇ ਜੇ ਉਹ ਨੂੰ ਕਹਦੇ ਉਹ ਤਾਂ ਆਤਮ ਹੱਤਿਆ ਕਰ ਗਿਆ ਜੀ ਅਸੀਂ ਨਹੀਂ ਪੈਸੇ ਕਰਨੇ ਇਕੱਠੇ ਇਹ ਨਹੀਂ ਕਹਾਣੀ ਮੈਂ ਨੂੰ ਕੰਟੇਨਰ ਟਰੱਕਰਸ ਨੂੰ ਕਹਿੰਦਾ ਤੁਸੀਂ 1500 ਜੀਓ ਕੱਲ ਉੱਥੇ 10 15 ਹੀ ਬੈਠੇ ਸੀ ਜਦ ਮੈਂ ਜਾ ਕੇ ਹਾਜ਼ਰੀ ਲਵਾਈ ਤੁਸੀਂ ਇਉਂ ਨਾ ਕਰੋ ਤੁਹਾਡੇ 20 50 ਡਾਲਰ ਮੈਂ ਜੀ ਜਵਾਕ ਮੈਂ ਬੋਈ ਨੂੰ ਲੈ ਕੇ ਜਾਣਾ ਮੈਂ ਆਹ ਕਰਨਾ ਮੈਂ ਉਹ ਕਰਨਾ ਮੁੰਡੇ ਦੀ ਮਦਦ ਕਰੋ ਰੱਬ ਨਾ ਕਰੇ ਕਿਸੇ ਤੇ ਅਜਿਹਾ ਵਕਤ ਆਵੇ ਫਿਰ ਭਾਈਚਾਰਾ ਨਾਲ ਖੜਦਾ ਜਦ ਵਕਤ ਪੈਂਦੀਆ ਫਿਰ ਇਉਂ ਹੀ ਕਹੀਦਾ ਜਦ ਕਿਸੇ ਨੂੰ 5 4 ਲੱਖ ਜ਼ਮੀਨ ਚੋਂ ਬਣ ਗਿਆ ਕਿਸੇ ਤੋਂ ਉਹਦੇ ਨਾਲ ਚਾਰ 파ਟ ਉਹ ਕਹਿੰਦਾ ਯਾਰ 파ਟਨਰ ਕਾਦੇ ਲਈ ਹੋਣੇ ਸੀ 5 ਲੱਖ ਮੈਨੂੰ ਬਣ ਜਾਣਾ ਸੀ ਤੇ ਜਿੱਦਨ ਖਲਾਰੀ ਚ ਬਾੜਦੀ ਆ ਕਿਤੇ ਵੱਧ ਜ਼ਮੀਨ ਚ ਫਸਦਾ ਉਸ ਦਿਨ ਦੇ ਤਾਂ ਸੌਖੇ ਸੀ ਹੁਣ ਤਾਂ ਦੇ ਤੇ ਹੀ ਵੱਸਦਾ ਹਰ ਇੱਕ ਗੱਲ ਦੀ ਹਰ ਇੱਕ ਵਾਰ ਦੀ ਖਲ ਲਾਇਆ ਕਰੋ ਜਾਂ ਤਾਂ ਮੂਰੇ ਹੋ ਕੇ ਹਿੱਸਾ ਪਾਇਆ ਕਰੋ ਜੇ ਕਰਨਾ ਕੱਖ ਨਹੀਂ ਫਿਰ ਭਾਈਚਾਰੇ ਨੂੰ ਕਰਨ ਦੇ ਟੈਕ ਇਟ ਇਜ਼ੀ ਹਰ ਇੱਕ ਚੀਜ਼ਾਂ ਆਪਣੇ ਹਿਸਾਬ ਨਾਲ ਨਹੀਂ ਹੁੰਦੀਆਂ ਨਾ ਮੇਰੇ ਜਾਂ ਤੁਹਾਡੇ ਜਾਂ ਭਾਈਚਾਰੇ ਦੇ ਕਿਸੇ ਇਨਸਾਨ ਦੇ ਸਬੰਧ ਨਾਲ ਉਸ ਤਰ੍ਹਾਂ ਚੀਜ਼ਾਂ ਨਹੀਂ ਹੁੰਦੀਆਂ ਜਿਵੇਂ ਅਸੀਂ ਚਾਹੁੰਦੇ ਆ ਆਪਾਂ ਰੱਬ ਨਹੀਂ ਆਪਾਂ ਦੁਨੀਆ ਦੇ ਘੜਤ ਨਹੀਂ ਹੈ ਕਿ ਸਾਡੇ ਹਿਸਾਬ ਨਾਲ ਚੀਜ਼ਾਂ ਹੋਣਗੀਆਂ ਠੀਕ ਹੈ ਉਹ ਉਹ ਦੇ ਨਾਲ ਵੀ ਡੈਥ ਹੋ ਗਈ 900 ਬੰਦਾ ਮਰ ਗਿਆ ਬੀਸੀ 'ਚ ਸਾਰਿਆਂ ਨੂੰ ਦਿਨ ਰਾਤ ਚੱਕੀ ਫਿਰਦੀ ਹੈ ਸਰਕਾਰ ਤੇ ਉਹ ਐਮਐਸਪੀ ਉਹ ਮੈਡੀਕਲ ਸਿਸਟਮ ਤੇ ਵੀ ਅਸੀਂ ਪੈਸੇ ਖਰਚਦੇ ਆ ਸਾਡੇ ਟੈਕਸ ਪੇਅਰ ਦੀ ਮਨੀ ਆ ਉਹ जे ਕਹਿ ਦਈਏ ਬਈ ਐਂਬੂਲੈਂਸ ਵਾਲੇ ਜਾਂ ਮੈਡੀਕਲ ਸਰਵਿਸ ਵਾਲੇ ਵੀ ਓਵਰਡੋਜ਼ ਜਿਹੜਾ ਬੰਦਾ ਉਹਨੂੰ ਮਦਦ नहीं ਦੇਣੀ ਇਹ ਪੋਸੀਬਲ ਨਹੀਂ ਹੈ ਦੂਜੇ ਭਾਈਚਾਰੇ ਦੇ ਲੋਕ ਉਹਨਾਂ ਨੂੰ ਬਚਾਉਣ ਲਈ ਲੱਖਾਂ ਹੀ ਡਾਲਰ ਸਰਕਾਰ ਖਰਚ ਰਹੀ ਹੈ ਮਿਲੀਅਨਸ ਡਾਲਰ ਦੀ ਫੰਡਿੰਗ ਹੋ ਰਹੀ ਹੈ ਤੇ ਉਹ ਵੀ ਸਾਡੇ ਪੈਸਿਆਂ ਦੀ ਹੈ ਜੇ ਅਸੀਂ ਆਪਣੇ ਧੀ ਪੁੱਤ ਨੂੰ ਜਿਹੜਾ ਪੰਜਾਬ ਤੋਂ ਉੱਜੜ ਕੇ ਵਕਤ ਦਾ ਧੱਕਿਆ ਇੱਥੇ ਆਇਆ ਜੇ ਉਹਦੇ ਮਦਦ ਕਰਨਾ ਫਰਜ਼ ਹੈ ਭਾਈ ਚਰਦਾ ਇਹ ਜਿਹੜੇ ادارے ਨੇ ਆ ਜਿਹੜੀ ਜਿੱਥੇ ਆ ਕੇ ਕੋਈ ਸਨੇਹਾ ਦੇ ਨੇ ਨਹੀਂ ਅਗਲਾ ਪਹਿਲਾਂ ਵੀ ਆਓ ਜੀ ਇੱਥੇ ਪਹਿਲਾਂ ਰੇਡੀਓ ਤੇ ਗੱਲ ਕਰੋ ਪਹਿਲਾਂ ਦੱਸੋ ਕੀ ਇਕੱਠਾ ਕਰਨਾ ਸਾਡੀ ਮਿਹਨਤ ਦਾ ਕੀ ਦੋਵਗੇ ਫੇਰ ਅਗਲੇ ਗੱਲ ਤੋੜਦੇ ਆ ਇਹ ਮਾਣ ਹੈ ਇਸ ਮੰਚ ਨੂੰ ਜਿਹਦੇ ਵਿੱਚ ਆ ਕੇ ਭਾਈ ਨਾਲ ਕੋਈ ਦੁੱਖ ਦੀ ਗੱਲ ਕੋਈ ਸਾਂਝੀ ਕਰ ਸਕਦਾ ਜੇ ਮਿਲੀਅਨਸ ਆਫ ਡਾਲਰ ਹੈਤੀ ਨੂੰ ਭੇਜਦਾ ਮਿਲੀਅਨਸ ਆਫ ਡਾਲਰ ਪਾਤਾਂ ਨੂੰ ਭੇਜਦਾ ਸਾਡੇ ਧੀ ਪੁੱਤ ਤੇ 25-30 ਹਜ਼ਾਰ ਡਾਲਰ ਮਸਿਆ ਨੀ ਲੱਗਣੋ ਹਰ ਜਣੀ ਜੇ 20 ਡਾਲਰ ਬੋਝੋ ਦੇਤੇ ਠੰਡੇ ਰਿਆ ਕਰੋ ਥੋੜੇ ਜੇ ਭਾਈਚਾਰੇ ਦੇ ਤੌਰ ਤੇ ਜਿਉਇਆ ਜਾਂਦਾ ਭਾਈਚਾਰੇ ਦੇ ਨਾਲ ਹੀ ਜਿਉਇਆ ਜਾਂਦਾ ਬਾਈ ਦਾ ਕਮਿਊਨਿਟੀ ਫਾਰ ਦਾ ਕਮਿਊਨਿਟੀ ਅੱਗੇ ਚੱਲਣ ਤੋਂ ਪਹਿਲਾਂ ਇੰਦਰਪ੍ਰੀਤ ਸਿੰਘ ਟਿਵਾਣਾ ਮੌਂਟਰੀਅਲ ਤੋਂ ਲਾਈਨ ਨੰਬਰ 2 ਤੁਸੀਂ ਇਰ ਤੋਂ ਬਾਈ ਸਸੀਗਾ ਬਾਈ ਜੀ ਬਾਈ ਜਿਹੜੀ ਗੱਲ ਸੁਣੀ ਨਾ ਮੈਨੂੰ ਵੀ ਬੜਾ ਦੁੱਖ ਜਿਹਾ ਲੱਗਿਆ ਪਹਿਲਾਂ ਮੈਂ ਕਿਤੇ ਵੀ ਸਾਡੇ 프ਾਂਟੋ ਦੋਸਤ ਮਿੱਤਰ ਰੇਡੀਓ ਵਾਲੇ ਉਹਨਾਂ ਨੇ ਵੀ ਕਹਿੰਦੇ ਵੀ ਸਾਨੂੰ ਵੀ ਗੱਲ ਆਣੀਆਂ ਵੀ ਤੁਸੀਂ ਜੀ ਐਡ ਦਿੱਤੀ ਬੰਦੇ ਨੂੰ ਉਹ ਫਲਾਣਾ ਡੈੱਥ ਦਾ ਕਾਰਨ ਇਹ ਮੁੰਡੇ ਦੇ ਵਿਚਾਰਦੇ ਫਾਦਰ ਦੀ ਵੀ ਡੈੱਥ ਹੋਈ ਵੀ ਪਟਿਆਲੇ ਜਿਹਦੇ ਨਾਲੇ ਸੰਬੰਧ ਸੀ ਇੱਕ ਮੁੰਡੇ ਦੀ ਇੱਥੇ ਵੀ ਡੈੱਥ ਹੋਈ ਚਲੋ ਆਪਾਂ ਮੰਨਦੇ ਆ ਜਿਹੜੀ ਪ੍ਰੋਬਲਮ ਆਪਣੇ ਹੈਗੀ ਐ ਪਰ ਜਿਹੜਾ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਆ ਨਾ ਦਾਨੀਆਂ ਦੀ ਕੌਮ ਕਹਾਈ ਜਾਂਦੀ ਹੈ ਆਪਣੇ ਸਿੱਖ ਕੌਮ खास करके चलो ਪੰਜਾਬੀ ਉਹ ਕਹਿ ਸਕਦੇ ਆ ਆਪਾਂ ਸਾਰੇ ਪੰਜਾਬੀਆਂ ਨੇ ਹੰਬੜਾ ਮਾਰ ਕੇ ਪੈਸੇ ਇਕੱਠੇ ਕੀਤੇ ਨੇ ਤੁਸੀਂ ਉਹ ਦੇਖੋ ਵੀ ਉਹਨਾਂ ਦੇ ਟੱਬਰ ਦਾ ਕਿਵੇਂ ਮਤਲਬ ਆਪਾਂ ਕਹਿੰਦੇ ਆ ਕਿ ਮੁੱਦਾ ਵੱਜ ਗਿਆ ਸਾਰਾ ਕੁਝ ਹੀ ਨਾ ਤੇ ਜੇ ਆਪਾਂ ਹੋਰ ਕੰਮਾਂ ਵਾਸਤੇ ਆਪਾਂ ਇੰਨੇ ਇਕੱਠੇ ਕਰਕੇ ਦਿੰਨੇ ਆ 20 ਅਸੀਂ ਉਸ भी ਵੀ ਸਾਨੂੰ ਸ਼ੱਕ ਸੀਗਾ ਵੀ ਜਿਹੜੇ ਮੁੰਡਿਆਂ ਦੀ ਐਂ ਡੈਥ ਹੋ ਰਹੀ ਹੈ ਨਾ ਕੋਈ ਬਾਥਰੂਮ ਚ ਬੈਠਾ ਰਹਿ ਗਿਆ ਇਹ ਪ੍ਰੋਬਲਮ ਕਿਤੇ ਨਾ ਕਿਤੇ ਹੈਗੀ ਜਿਹੜੇ ਮੁੰਡੇ ਛੋਟੇ ਉਮਰ ਚ ਆ ਰਹੇ ਨੇ ਨਾ 12 12ਵੀਂ ਪੜ੍ਹ ਕੇ ਜਾਂ ਹੋਰ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਚਲੋ ਇੰਡੀਆ ਜਾਉ ਰਹੇ ਆ ਕਿਦੋਂ ਕੋਈ ਬੰਦਾ ਗਲਤ ਚੀਜ਼ ਬੰਦਾ ਰਿਕਾਰਡ करके ਕਰਦਾ ਦੱਸਦਾ ਨਹੀਂ ਹੈਗਾ ਤੇ ਉਹ ਨਿਕਲੂਗਾ दल ਚੋ ਜੇ ਕੋਈ ਉਹਦੀ ਮਦਦ ਕਰੂਗਾ ਤੇ ਲੋਕਾਂ ਨੂੰ ਕੋਈ ਸਸਤਾ ਬਣਾ ਕੇ ਜਿਹੜੇ ਬੰਦੇ ਆ ਉਹਨਾਂ ਨੂੰ ਕਰ ਸਕਣ ਦਵਾਈ ਜਾਂ ਕੋਈ ਪ੍ਰੋਪਰ ਮੈਡੀਕਲ ਉਹਨਾਂ ਨੂੰ ਸਹਾਇਤਾ ਕਰਕੇ ਘੱਟੋ ਘੱਟ ਉਹਨਾਂ ਦੀ ਜਾਨ ਤਾਂ ਬਚ ਜੇ ਜੀ ਮੇਰੇ ਮੈਨੂੰ ਇਹ ਲੱਗਦਾ ਕਿ ਕੋਈ ਸਰਫਾ ਜਹੇ ਸਟੂਡੈਂਟ ਆਰਗੇਨਾਈਜੇਸ਼ਨ ਕੋਈ ਮੂਰੇ ਆਵੇ ਜਾਂ ਇੱਛੇ ਦੇ ਜਿਹੜੇ ਮੁੰਡੇ ਜੰਪੜ ਵਾਲ ਨੇ ਉਹਨਾਂ ਨੂੰ ਨੇੜੇ ਲਾ ਕੇ ਪੁੱਛਿਆ ਜਾਵੇ ਨਹੀਂ ਤਾਂ ਇਹ ਚੀਜ਼ਾਂ ਅੱਗੇ ਅੱਗੇ ਵੱਧ ਸਕਦੀਆਂ ਨੇ ਘੱਟ ਇਹਨਾਂ ਨੂੰ ਜੇ ਉਹਨਾਂ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਉਹਨਾਂ ਨੂੰ ਕੋਈ ਭੰਡਣਾ ਨਹੀਂ ਚਾਹੀਦਾ ਵੀ ਐਂ ਜੇ ਡਰਗ ਕਰਕੇ ਉਹ ਜੀ ਮੈਂ ਤਾਂ ਇਹ ਕਹਿੰਦਾ ਵੀ ਉਹ ਬੱਚੇ ਆਉਂਦੀ ਕੋਈ ਬੰਦਾ ਹੋਰ ਚੀਜ਼ ਖਾਣ ਲੱਗ ਗਿਆ ਹੋਰ ਵੀ ਨਰਕੇ ਚਲੇ ਜਾਂਦਾ ਤੇ ਆਪਣੀ ਜਾਨ ਗਵਾ ਬੈਠਦਾ ਧੰਨਵਾਦ ਵੀਰ ਜੀ ਸਰਵਾ ਜੀ ਜੀ ਮੁਸ਼ਕਲ ਇਹੀ ਹੈ ਕਿ ਉੱਥੋਂ ਤੁਸੀਂ ਅੱਜ ਦੇ ਹਾਲ ਜਿਹੜੇ ਦੇਖਦੇ ਹੋ ਚਕ ਬਹੁਤ ਚਕਾ ਚੌਦਾਲੀ ਜ਼ਿੰਦਗੀ ਦੇ ਵਿੱਚ ਗਰੀਬ ਜਿਹੜਾ ਬੱਚਾ ਵਾਲ ਵਾਲੇ ਮੋਟਰਸਾਈਕਲ ਸਕੂਟਰ ਕਾਰਾਂ 5 ਲੱਖ 10 ਲੱਖ 20 4 ਲੱਖ 30 ਲੱਖ ਦੇ ਫੋਰਚੂਨਰ ਉੜਦੇ ਧੂੜਾਂ ਦੇ ਵਿੱਚ ਗਰੀਬ ਅਮੀਰ ਦਾ ਫਰਕ ਹੈ ਜਿਹੜਾ ਉਹਨਾਂ ਨੂੰ ਤੋੜ ਦਿੰਦਾ ਨਸ਼ਿਆਂ ਦੀ ਬਹੁਤਾਤ ਹੈ ਉਹ ਨਸ਼ੇ ਜਿਹੜੇ ਕਦੇ ਨਹੀਂ ਸੀ ਸੁਣੇ ਦੇ ਪੰਜਾਬ ਦੀ ਧਰਤ ਤੇ ਵਿਖਦੇ ਆ ਹੁਣ ਤਾਂ ਉਹ ਵੀ ਕਹਿਣ ਲੱਗੇ ਜਿਨ੍ਹਾਂ ਨੇ ਕਦੇ ਨਹੀਂ ਸਿੱਖਿਆ ਗੁਰਦਾਸ ਮਾਨ ਵਰਗੇ ਵੀ ਕਹਿਣ ਲੱਗੇ ਕਿ ਪੰਜਾਬ ਦਾ ਪੰਜਾਬ ਖਾ ਲਿਆ ਨਸ਼ਿਆਂ ਸੋ ਇਹ ਗੱਲੇ ਜੇ ਤੁਸੀਂ ਵਕਤ ਦੀ ਗੱਲ ਦੇਖਿਓ ਅੱਜ ਤੋਂ 25 30 ਸਾਲ ਪਹਿਲਾਂ ਨੌਕਰੀਆਂ 35 ਸਾਲ ਪਹਿਲਾਂ ਉੱਥੇ ਕਿਸੇ ਨੂੰ ਨਹੀਂ ਕੁਝ ਨਹੀਂ ਮਿਲਿਆ ਅੱਜ ਉੱਥੇ ਬੱਚਿਆਂ ਲਈ ਕੁਝ ਨਹੀਂ ਹੈ ਪ੍ਰਾਈਵੇਟ ਸੈਕਟਰ ਰਹਿ ਗਿਆ ਜਾਂ ਗੜਗਾਓ ਜਾਓ ਜਾਂ ਦਿੱਲੀ ਜਾਓ ਜਾਂ ਫਰੀਦਾਬਾਦ ਜਾਓ ਉੱਥੇ 10000 ਨੌਕਰੀ ਮਿਲਦੀ ਆ ਆਈਟੀ ਸਪੈਸ਼ਲਿਸਟ ਨੂੰ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ 10000 ਤਾਂ ਉਹਦਾ ਰਹਿਣ ਦਾ ਖਰਚਾ ਉੱਥੇ ਪੰਜਾਬ ਦੇ ਬੱਚੇ ਉੱਥੇ ਗਲਤ ਰਾਹਾਂ 'ਚ ਪੈ ਕੇ ਜਾਂ ਵਕਤ ਦੇ ਮਾਰੇ ਇੱਧਰ ਨੂੰ ਭੱਜਦੇ ਆ ਚਲੇ ਪੁੱਤ ਨੇ ਧੀਆ ਜਿਨ੍ਹਾਂ ਨੂੰ ਦੋ ਘੜੇ ਸੀ ਖੂਹਾਂ ਤੇ ਘੱਲਦੇ ਰੈਸਟੋਰੈਂਟਾਂ ਇੱਥੇ ਜਾ ਕੇ ਪੱਬਾਂ ਦੇ ਵਿੱਚ ਜਾਂ ਪੀਜ਼ਿਆਂ ਤੇ ਮਠਿਆਈ ਦੀਆਂ ਸ਼ਾਪਾਂ ਤੇ ਦੇਖਿਓ ਜਦੋਂ ਵੇਟਰਸ ਦਾ ਥਾਲ ਚੱਕੀ ਤੁਹਾਡੇ ਸਾਹਮਣੇ 20-22 ਸਾਲ ਦੀਆਂ ਧੀਆ ਤੁਰੀਆਂ ਫਿਰਦੀਆਂ ਬਣਦਾ ਕੀ ਹੈ ਸੋਚਿਆ ਸੀ ਕਦੇ ਅੱਜ ਤੋਂ 10 ਸਾਲ ਪਹਿਲਾਂ ਕਿਸੇ ਵੀ ਆਪਣੇ ਰੈਸਟੋਰੈਂਟ ਦੇ ਵਿੱਚ ਦੇਖਿਆ ਸੀ ਆਪਣੀਆਂ ਕੁੜੀਆਂ ਇਸ ਤਰ੍ਹਾਂ ਖਾਣਾ ਸਰਵ ਕਰਦੀਆਂ ਫਿਰਦੀਆਂ ਉਹ ਬੱਚੀਆਂ ਨਾਲ ਗੱਲ ਕਰੋ ਕਲੀਡੀਆਂਸ ਕਰਕੇ ਆਈ ਹੈ ਕੋਈ ਕਿਸ ਤਰ੍ਹਾਂ ਆਈ ਹੈ ਕੋਈ 20 ਸਾਲ ਦੀ ਹੈ ਕੋਈ 22 ਸਾਲ ਦੀ ਕੋਈ 24 ਸਾਲ ਦੀ ਹੈ ਬਣੂ ਕੀ ਇਹ ਵਕਤ ਦੇ ਮਾਰੇ ਸਾਲ ਬਣੇ ਜਿਹੜਾ ਫਾਰਮ ਤੇ ਤਰਸ ਜੇ ਆਪਾਂ ਤਰਸ ਦਾ ਕਲੰਗੀਆਂ ਵਾਲੇ ਨੇ ਕਰਨਾ ਅਸੀਂ ਮਦਦ ਕਰਨੀ ਹੈ ਨੰਗੇ ਧੜ ਢੁੰਡ ਕੱਢ ਕੇ ਨਹੀਂ ਨਾਲੇ ਕਰਨੀ ਇਹ ਕਿਸੇ ਕਾਰਨ ਕਰਕੇ ਵੀ 20 ਸਾਲ ਦਾ ਉਹ ਬੱਚਾ ਹੈ ਕਿੰਨੀ ਕੋ ਨੂੰ ਸੋਜ ਹੈ ਉਹ ਇੱਥੇ ਆ ਗਿਆ ਮਾਪਿਓ ਮਰ ਗਿਆ ਮਾਂ ਨੇ ਘਲਤਾ ਉੱਥੇ ਕੋਈ ਉਹਨੂੰ ਬਿਮਾਰੀ ਇਹ ਜੀ ਕੋਈ ਲਤ ਲੱਗੀ ਆ ਕੇ ਉਹ ਇਸ ਗੱਲ ਤੇ ਪਹਗਾ ਜਾਂ ਟੁੱਟ ਗਿਆ ਇੱਥੇ ਹੱਥ ਨਾ ਪਈਏ ਪਿਆ ਕਿਸੇ ਪਾਸਿਓ ਹੈ ਕੌਣ ਸਹੂਲਤ ਤੁਸੀਂ ਸੜਕਾਂ ਤੇ ਤੁਰੇ ਘਰਦੇ ਖੜੇ ਜਵਾਗ ਬੱਸ ਸਟੈਂਡ ਤੇ ਅਸੀਂ ਉਹਨਾਂ ਨੂੰ ਇੱਕ ਰਾਹਿਤ ਨਹੀਂ ਆਫਰ ਕਰ ਸਕਦੇ ਕੋਈ ਪੁੱਛਦਾ ਇਸ ਦੁਨੀਆ ਦੇ ਵਿੱਚ ਇਸ ਦੇਸ਼ ਦੇ ਵਿੱਚ ਕਿਉਂਕਿ ਸਾਰੇ ਆਪ ਭੱਜੇ ਫਿਰਦੇ ਆ ਉਹ ਬੱਚੇ ਤੁਰੇ ਫਿਰਦੇ ਆ ਕੋਈ ਕਿਤੇ ਪ੍ਰਸ਼ਾਦਾ ਛਕਿਆ ਗੁਰੂ ਘਰ ਜਾਂ ਬਸ ਚੜ ਕੇ ਕਦੇ ਇੱਧਰ ਚੜ ਕੇ ਗਲ ਚ ਬੈਗਪੈਕ ਇਹਨੇ ਮੂਹਰੇ ਲੱਕ ਤੋੜਤਾ ਉਹਨਾਂ ਦਾ ਉਹ ਦੀ ਲੋੜ ਹੈ ਜੇ ਜਿੰਨੀ ਵੀ ਮਦਦ ਹੋ ਸਕਦੀ ਹੈ ਬੱਚਿਆਂ ਦੀ ਕਰੋ ਜੇ ਭਵਿਕ ਤੁਸੀਂ ਆਪਾ ਮਦਦ ਉਨੀ ਉਹ ਕਰ ਸਕਦੇ ਜਿੰਨੀ ਅਸੀਂ ਕਰ ਸਕਦੇ ਆ ਪੰਜਾਬ ਲਈ ਦਿਨ ਰਾਤ ਅਸੀਂ ਤੜਫਦਿਆਂ ਵੋਟਾਂ ਉੱਥੇ ਦੀਆਂ ਜੀ ਆ ਹੋ ਗਿਆ ਜੀ ਉਹ ਹੋ ਗਿਆ ਇਹ ਉੱਥੇ ਦੇ ਲੱਕ ਤੇ ਜ਼ਿਗਰ ਉੱਥੇ ਦੇ ਲੱਕ ਤੇ ਜ਼ਿਗਰ ਨੇ ਭੇਜੇ ਹੋਏ ਨੇ ਤੁਹਾਡੇ ਕਰਕੇ ਭੇਜੇ ਹੋਏ ਨੇ ਕਦੇ ਉਸ ਬੂਟ ਦੇ ਵਿੱਚ ਪੈਰ ਪਾ ਕੇ ਵੇਖਿਓ ਜਿਹੜੇ ਗੱਲਾਂ ਕਰਦੇ ਨੇ ਕ੍ਰਿਟਿਕ ਨੇ ਵੀ ਤੁਸੀਂ ਕਿਤੇ ਪਟਿਆਲੇ ਜ਼ਿਲ੍ਹੇ 'ਚ ਬੈਠੇ ਹੋਮੋ ਤੁਹਾਡਾ ਕੱਲਾ-ਕੱਲਾ ਪੁੱਤ ਹੋਵੇ ਤੁਸੀਂ ਵਕਤ ਦੇ ਮਾਰੇ ਉਹਨੂੰ ਇੱਥੇ ਨੂੰ ਭੇਜੋ ਤੇ ਉਸ ਦੀ ਡੈਥ ਹੋ ਜਾਵੇ ਤੇ ਫਿਰ ਜਦ ਤੁਹਾਡੀ ਕੋਈ ਮਦਦ ਕਦੇ ਤੁਸੀਂ ਕਿਉਂ ਨਾ ਮਦਦ ਨਾ ਕਰਿਓ ਨਸ਼ੇ ਨਾਲ ਮਰ ਗਿਆ ਫਿਰ ਵੇਖਿਓ ਕਾਲਜ ਤੇ ਹੱਥ ਰੱਖ ਕੇ ਗੱਲ ਕੀ ਬਣਦੀ ਬਿਨਾ ਮਤਲਬੋਂ ਜਿਹੜਾ ਬੁਖਾਦ ਹੈ ਉਹਦਾ ਨਹੀਂ ਕੋਈ ਫਾਇਦਾ ਜੇ 20 ਡਾਲਰ ਕਿਤੇ ਵੀਜ਼ੇ ਤੇ ਦੇਤੇ ਤੇ ਦੇਉ ਤਾਂ ਹੀ ਜੇ ਦਿਲ ਕਰਦਾ ਨਹੀਂ ਦੇ ਕੇ ਬਾਲ ਦੀ ਖਲ ਨਾ ਲਾਹੋ ਅਮਰਜੀਤ ਸਿੰਘ ਜੀ ਲਾਈਨ ਨੰਬਰ 3 ਬਾਈ ਜੀ ਸਤਿ ਸ਼ਕਾਲ ਜੀ ਜੀ ਭਾਈ ਜੀ ਮੈਂ ਕਮੈਂਟ ਨਹੀਂ ਕਰਨਾ ਮੇਰਾ ਇੱਥੇ ਸਾਡਾ ਰਹਿੰਦੇ ਉਹਨਾਂ ਨੇ ਤੁਹਾਡੇ ਬਾਰੇ ਦੱਸਿਆ ਸੀਗਾ ਤੇ ਅੱਜ ਤੁਹਾਡਾ ਪ੍ਰੋਗਰਾਮ ਲੜਨਾ ਇਹਨੂੰ ਕਹਿੰਦੇ ਆ ਮਿਹਰਬਾਨੀ ਧੰਨਵਾਦ ਜੀ ਥੈਂਕ ਯੂ ਸੋ ਮਚ ਕੋਈ ਇਹ ਨਹੀਂ ਹੈ ਇਹ ਆਪਣਾ ਕੰਮ ਹੈ ਮੈਂ ਕੱਲ ਮੈਂ ਨਿੱਜੀ ਤੌਰ ਤੇ ਯੂਟੀਏ ਦੇ ਦਫ਼ਤਰ ਦੇ ਵਿੱਚ ਗਗਨ ਸਿੰਘ ਉਹਦੇ ਮਿੱਤਰ ਰਾਣੀ ਹੁਣੀ ਸਾਰੇ ਦੋਸਤ ਬੈਠੇ ਸੀ ਚੰਗਾ ਨਹੀਂ ਲੱਗਿਆ ਜੇ ਮੈਂ ਤੁਸੀਂ ਮੇਰੀ ਗੱਲ ਪੁੱਛਾਂ ਮੈਂ ਕੱਲ ਉਦਾਸ ਹੋਇਆ ਉੱਥੇ ਜਿਨ੍ਹਾਂ ਲਈ ਮੈਨੂੰ 3 ਸਾਲ ਹੋ ਗਏ ਰੌਲਾ ਪਾਉਂਦੇ ਉਹਨਾਂ ਨਾਲ ਦਾ ਇੱਕ ਭਾਈ ਮਰ ਗਿਆ ਯਾਰ ਤੁਸੀਂ ਪੈਸੇ ਵੀ ਨਹੀਂ ਦੇ ਸਕਦੇ 20 50 ਡਾਲਰ ਜੇਬ ਚੋਂ ਬੈਠੇ ਬੈਠੇ ਬੋਤਲ 'ਚ ਫੂਕ ਮਾਰ ਕੇ ਦੋ ਕੁੱਕੜ ਖਾ ਕੇ 50 ਰੁਪਏ ਢਿੱਡ ਤੇ ਹੱਥ ਫੇਰ ਕੇ ਤੁਸੀਂ ਤੁਰ ਜਾਨੇ ਹੋ ਨਾਲ ਦਾ ਤੁਹਾਡਾ ਬੰਦਾ ਯਾਰ ਕਿਉਂ ਨਹੀਂ ਕਰਦੇ ਮਦਦ ਇਹੀ ਸਮਾਂ ਹੁੰਦਾ ਰਾਜਨੀਤਿਕਾਂ ਦੇ ਥਾਪੜੇ ਹੋ ਕੇ ਇਕੱਠੇ ਜੀ ਚਲੋ ਜੀ 30 ਇਧਰ ਨੂੰ ਚੱਲ ਗਏ 40 ਉਧਰ ਨੂੰ ਚੱਲ ਗਏ ਆਥਨੇ ਦੋ ਪੀਜ਼ੇ ਖਾ ਲਏ ਜੀ ਦਾਲੂ ਪੀ ਲਿਆ ਤੈਨੂੰ ਵੋਟਾਂ ਪਾ ਦਾਂਗੇ ਉਸ ਮੇਲੇ ਇਕੱਠੇ ਹੋ ਜਾਨੇ ਹੋ ਜਾਂ ਕੋਈ ਫ੍ਰੀ ਮੇਲਾ ਹੋਵੇ ਖਬੀ ਲੱਤ ਤੇ ਭੰਗੜਾ ਪਾਉਣ ਲਈ ਵਿੱਚ ਲੱਗਦੇ ਫਿਰਦੇ ਉਹ ਨਾਲੇ ਪੂਰੇ ਰੱਜੇ ਹੁੰਨੇ ਹੋ ਇਹ ਹਜੇ ਸਮਾਂ ਹੁੰਦਾ ਹੈ ਵੀਵਨ ਤੁਹਾਡੇ ਟਰਕਿੰਗ ਇੰਡਸਟਰੀ ਤੋਂ ਬਾਹਰ ਵਾਲੇ ਭਾਈਚਾਰੇ ਨੂੰ ਵੀ ਚਾਹੀਦਾ ਮਦਦ ਕਰੋ ਪਰਿਵਾਰ ਹੈ ਕੋਈ ਤੁਹਾਡੇ 20 ਦੇ ਨਾਲ ਤੱਕ ਨਹੀਂ ਆਪਾਂ ਨੂੰ ਫਰਕ ਪੈਣਾ ਕਿਸੇ ਪਰਿਵਾਰ ਨੂੰ 5-10000 20000 ਡਾਲਰ ਹੋ ਕੁਛ ਨਹੀਂ ਹਰ ਰੋਜ਼ ਨਹੀਂ ਨਾਲੇ ਕੋਈ ਮੰਗਦਾ ਫਿਰਦਾ ਰੱਬ ਨਾ ਕਰੇ ਹਜੇ ਵਕਤ ਨਾ ਪਵੇ ਜਦ ਇਹ ਪੈਂਦਾ ਤਾਂ ਮਦਦ ਕਰਨ ਦੀ ਲੋੜ ਹੈ ਨੰਬਰ 2 ਖੁਸ਼ ਤੁਸੀਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਪੀਕਲ ਭਾਈ ਜੀ ਗੱਲ ਹੋਈ ਪਿਛਲੀ ਵਾਰੀ ਤੇ ਤੁਹਾਡੀ ਬਹੁਤ-ਬਹੁਤ ਤੁਹਾਡਾ ਥੈਂਕ ਯੂ ਤੁਸੀਂ ਜਿੱਦਣ ਆਪਾਂ ਨੂੰ ਟਾਈਮ ਦਿੱਤਾ ਸੀ ਤੇ ਤੁਸੀਂ ਅਪੀਲ ਕੀਤੀ ਕਮਿਊਨਿਟੀ ਡਾਲਰ ਇਕੱਠਾ ਕਰਤਾ ਸੀਗਾ ਜੀ ਕਮਿਊਨਿਟੀ ਨੇ ਤੇ ਬਾਕੀ ਅੱਜ 1 ਵਜੇ ਦੀ ਦੁਪਹਿਰੇ ਐਵਲਨ ਫਿਨਰਲ ਹੋਮ 132 ਤੇ 108 ਤੇ ਉਹਦੀ ਬੋਡੀ ਅੱਜ ਉੱਥੇ ਰੱਖਣਗੇ ਅੱਧੇ ਘੰਟੇ ਵਾਸਤੇ ਲੋਕਾਂ ਵਾਸਤੇ ਤੇ ਜਿਹੜੇ ਕੋਈ ਵੀਰ ਭਾਈ ਨੇ ਉਹਨੂੰ ਉੱਥੇ ਸ਼ਰਦਾ ਦੇ ਫੁੱਲ ਪੇਂਟ ਕਰਨੇ ਜੀ ਆ ਸਕਦੇ ਨੇ ਤੇ ਉਸ ਤੋਂ ਬਾਅਦ ਜੀ ਸ਼ੁੱਕਰਵਾਰ ਤੱਕ ਸ਼ਾਇਦ ਫਾਰਮੈਲਿਟੀ ਪੂਰੀ ਕਰਕੇ ਇੰਡੀਅਨ ਕੌਂਸਲੇਟ ਨਾਲ ਉਹਦੀ ਬੋਡੀ ਸ਼ਿਪ ਕਰਨਗੇ ਹਫਤੇ ਦੇ ਅਖੀਰ ਤੱਕ ਈ ਡੀਲ ਹੋ ਟੋਡਾ ਬਾਈ ਜੀ ਬਹੁਤ ਬਹੁਤ ਤੁਹਾਡੇ ਰੇਡੀਓ ਸਟੇਸ਼ਨ ਦਾ ਧੰਨਵਾਦ। ਅੱਛਾ ਖੁਸ਼ ਜਿਹੜੇ ਇਹ ਤਾਂ ਇੱਕ ਤਾਂ ਪੀਡੀ ਕੈਨੇਡਾ ٹرسٹ ਚ ਜੀ ਨੂੰ ਤੁਸੀਂ ਕੰਟਰੋਲ ਕਰ ਰਹੇ ਹੋ ਉੱਥੇ ਇਕੱਠਾ ਹੋਇਆ ਜਿਹੜਾ ਗੋ ਫੰਡ ਫॉर ਮੀ ਹੈ ਉਸ ਅਕਾਊਂਟ ਨੂੰ ਕਿਹਨੇ ਕੀਤਾ ਮਨੀ ਜਾਏਗੀ ਕਿਵੇਂ ਜਾਏਗੀ ਉਹ ਮਾਤਾ ਨੂੰ ਕਿਵੇਂ ਮਿਲੇਗੀ ਉਹਦੇ ਬਾਰੇ ਥੋੜਾ ਜਿਹਾ ਦੱਸੋ ਲੋਕਾਂ ਨੂੰ। ਹਾਂਜੀ ਉਹ ਤਾਂ ਜੀ ਗੋ ਫੰਡ ਵੀ ਆਪਾਂ ਪਹਿਲਾਂ ਤਾਂ ਇਹ ਪਹਿਲੀ ਵਾਰੀ ਇਹ ਚਲੋ ਰੱਬ ਚਲੋ ਉਸ ਆਪਾਂ ਕਹੇ ਦੀ ਹਲਪ ਉਹਦੀ ਮੁੰਡੇ ਨੂੰ ਤਾਂ ਵੈਸੇ ਮੈਂ ਵੀ ਨਹੀਂ ਜਾਣਦਾ। ਪਰ ਮੇਰੇ ਨਾਨਕੇ ਦੇ ਪਿੰਡਾ ਕੋਲੇ ਅਮਰਗੜ ਕੋਲੇ ਪੈਂਦਾ ਹੈ ਨੋਰਾ ਤੇ ਜਿਹੜਾ ਗੋਮੰਡ ਵਾਲਾ ਜੀ ਜਿੰਨੀ ਅਮਾਉਂਟ ਕੱਟੀ ਹੋਈ ਹੈ ਕੱਟਣਗੇ ਤੇ ਹੁਣੇ ਮੇਰੀ ਟੋਰਾਂਟੋ ਵਾਲੇ ਮੁੰਡੇ ਨਾਲ ਗੱਲ ਹੋਈ ਸੀ ਪੈਸਾ ਸਿੱਧਾ ਉਹਦੀ ਮਾਤਾ ਦੇ ਅਕਾਊਂਟ 'ਚ ਟਰਾਂਸਫਰ ਹੋਊਗਾ ਜਿੰਨਾ ਇਕੱਠਾ ਹੋ ਗਿਆ ਉਹ 'ਚੋਂ ਉਹ ਵੈਬਸਾਈਟ ਵਾਲੇ 7% ਕੱਟਣਗੇ ਜੀ ਬਾਕੀ ਸਾਡੀ ਤਾਂ ਕੋਸ਼ਿਸ਼ ਇਹ ਸੀ ਵੀ ਪਹਿਲਾਂ ਜੀ ਉੱਥੇ ਪੈਸੇ ਪਹੁੰਚ ਕੇ ਕਰ ਵੀ ਉਹਦੇ ਕਰਜ਼ਾ ਲਾ ਦਈਏ ਪਰ ਪਰੂਫ ਵੀ ਰੱਖਣਾ ਪੈਂਦਾ ਸਾਰਾ ਜੀ ਵੀ ਰੈਕੋਰਡ ਰੱਖਣਾ ਪੈਂਦਾ ਉਹ ਸਿੱਧਾ ਟਰਾਂਸਫਰ ਕਰਨਗੇ ਉਹਦੀ ਮਾਤਾ ਦੇ ਅਕਾਊਂਟ 'ਚ ਤੇ ਜਿਹੜੇ ਇੱਥੇ ਮੇਰੇ ਅਕਾਊਂਟ 'ਚ ਟੀਡੀ 'ਚ ਪੈਸੇ ਡਾਲਰਾਂ ਦਾ ਬਾਕੀ ਜਿਹੜੇ ਪੈਸੇ ਉੱਪਰ ਵਧਣਗੇ 50000 70 ਲੱਖ 1.5 ਲੱਖ ਉਹ ਆਪਾਂ ਉਹਨਾਂ ਨੂੰ ਭੋਗ ਤੋਂ ਪਹਿਲਾਂ ਪਹੁੰਚਦਾ ਕਰ ਦੇਣਾ ਇੰਡੀਆ ਜਿਹੜੀ ਗੱਲ ਚੱਲਦੀ ਹੈ ਅੰਬੈਸੀ ਆ ਜਿਹੜੀ ਹਾਈ ਕਮਿਸ਼ਨਰ ਸਾਡਾ ਉਹ ਬੋਡੀ ਭੇਜ ਰਿਹਾ ਉਹ ਭੇਜ ਰਿਹਾ ਇਹ ਨਹੀਂ ਜਾਂ ਤੁਸੀਂ ਕੋਲੋਂ ਪੈਸੇ ਦੇ ਰਹੇ ਹੋ ਮੈਂ ਜੀ ਉਹ ਵੀ ਤੁਹਾਨੂੰ ਗੱਲ ਕਲੀਅਰ ਕਰ ਦੇਣਾ ਜਿਹੜੇ ਵਾਲਾ ਮੁੰਡਾ ਜਿਨ੍ਹਾਂ ਨੇ ਤੇ ਉਹਦੀ ਵਾਈਫ ਨੇ ਤੇ account ਸੈੱਟ ਕੀਤਾ ਗੋਪਾੰਡਲ ਉਹਦੇ ਮੰਮੀ ਡੈਡੀ ਆਏ ਹੋਏ ਨੇ ਆਪਾਂ ਪਿੱਛੇ ਵੀ ਦੱਸਿਆ ਸੀ ਉਹ ਉੱਥੋਂ ਜਾਣ ਪਛਾਣ ਕਰਕੇ ਉਹਨਾਂ ਦੀ ਹੈਗੀ ਥੋੜੀ ਜੀ ਉਹਨਾਂ ਨੇ ਪ੍ਰਨੀਤ ਕੌਰ ਨੇ ਫੋਨ ਕਰਤਾ ਸੀ ਇੰਡੀਅਨ ਕਨਸੂਲਟੇਟ ਨੂੰ ਮਹਾਰਾਣੀ ਪ੍ਰਨੀਤ ਕੌਰ ਨੇ ਉਹਨਾਂ ਨੇ ਇਹ ਕਿਹਾ ਸੀ ਜੇ ਤੁਹਾਡੇ ਤੋਂ ਨਾ ਹੋਏ ਪੈਸੇ ਇਕੱਠੇ ਅਸੀਂ ਹੈਲਪ ਕਰਾਂਗੇ ਉਨੀਕਾ ਰੇ ਪੁੱਤ ਉਹਨਾਂ ਨੇ ਪੇਪਰ ਵਰਕ ਡਾਕੂਮੈਂਟੇਸ਼ਨ ਜੋ ਹੈਲਪਾ ਹੁਣ ਉਹ ਕਰਨਗੇ ਕਿਉਂਕਿ ਪੈਸੇ ਆਪਣੇ ਕੋਲੇ ਪਹਿਲਾਂ ਹੀ ਇਕੱਠੇ ਹੋ ਗਏ ਜੇ ਪੈਸੇ ਘਟਦੇ ਉਹਨਾਂ ਨੇ ਵਾਦਾ ਕੀਤਾ ਸੀ ਵੀ ਅਸੀਂ ਹੈਲਪ ਕਰ ਦਾਂਗੇ ਤੁਸੀਂ ਕਰ ਲਓ ਪੈਂਦਾ ਜਿੰਨਾ ਤੁਹਾਡੇ ਕੋਲ ਹੁੰਦਾ ਜੇ ਘਟਣਗੇ ਅਸੀਂ ਹੁਣ ਆਪਾਂ ਆਪਣੇ ਕ੍ਰੈਡਿਟ ਹੀ ਪੈਸੇ ਬਹੁਤ ਇਕੱਠੇ ਕਰਦੇ ਜੀ ਹੁਣ ਅੱਜ ਵਜੇ ਦੁਪਹਿਰੇ 132 ਤੇ 108 ਤੇ ਫਿਨਲ ਹੋਮ ਆ ਜੀ ਤੇ ਉੱਥੇ ਬੋਡੀ ਉਹਨਾਂ ਨੇ ਰੱਖਣੀ ਹੈ ਵੀ ਆਪਣੇ ਪਬਲਿਕ ਵਾਸਤੇ 1 ਵਜੇ ਦੁਪਹਿਰੇ ਜੀ ਉਦਹੀਂ ਉਥੇ ਠੀਕ ਹੈ ਜਮਾਨ ਠੀਕ ਹੈ ਛੋਟੇ ਭਾਈ ਪੂਰਾ ਖਿਆਲ ਦੇ ਨਾਲ ਪੈਸੇ ਦਾ ਜ਼ਿੰਮੇਵਾਰੀ ਉੱਤੇ ਆ ਪਰਿਵਾਰ ਤੱਕ ਪਹੁੰਚਣ ਤੇ ਮੈਨੂੰ ਬਾਅਦ ਚ ਆ ਕੇ ਇਹ ਤੇ ਸਾਰਿਆਂ ਨੂੰ ਲੋਕਾਂ ਨੂੰ ਦੱਸਿਓ ਕਿ ਵਕਤ ਦੁਆਰਾ ਨਾ ਪਵੇ ਕਿਸੇ ਤੇ ਕੋਈ ਵੀ ਬਿਦਵਾਰ ਅਜਿਹਾ ਨਾ ਆਵੇ ਸੋ ਆਪਾਂ ਵਧੀਆ ਤਰੀਕੇ ਨਾਲ ਹਿਸਾਬ ਕਿਤਾਬ ਲੋਕਾਂ ਨੂੰ ਦੱਸ ਕੇ ਕਿਤੇ ਗਾਂਹ ਨੂੰ ਵੀ ਭਾਈਚਾਰਾ ਨਾਲ ਖੜ ਸਕੇ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਭਾਈ ਤੁਹਾਡਾ ਜਿੰਦੇ ਰਹੋ ਥੈਂਕ ਯੂ ਤੁਸੀਂ ਇਨੀਸ਼ੀਏਟਿਵ ਲਿਆ ਅੱਗੇ ਹੋ ਕੇ ਕੋਈ ਨਹੀਂ ਕੰਮ ਛੱਡ ਕੇ ਟੈਕਸੀ ਡਰਾਈਵਰਾਂ ਮੁੰਡਾ ਉਹ ਆਪਣੇ ਕੰਮ ਛੱਡ ਕੇ ਤੁਰਿਆ ਫਿਰਦਾ ਕਦੇ ਕਿਥੇ ਤੋਂ ਡਾਲਰ ਕਦੇ ਕਿਸੇ ਨੇ ਕਿਹਾ ਕਦੇ ਕਿਸੇ ਨੇ ਕਿਹਾ ਪੈਸਾ ਭਾਈ ਜੀ ਮੇਰਾ ਲਿਖਿਆ ਹੋਇਆ ਐਨ ਥੋੜੀਆਂ ਜੀਆਂ ਬ੍ਰੀਕ ਲਾ ਲੈਣੇ ਕਦੇ ਕਦੇ ਆਪ ਅਮਰੀਕ ਸਿੰਘ ਸਿੱਧੂ ਜੀ ਲਾਈਨ ਨੰਬਰ 3 ਐਸ ਕੋਸਾ ਜੀ ਲਾਈਨ 4 ਹਾਂਜੀ ਸਬਸਕ੍ਰਾਈਬ ਆ ਜੇ ਮੈਂ ਆ ਮੁੰਡੇ ਦੀ ਡੈਥ ਹੋਈ ਆ ਕਿਵੇਂ ਆਪਰੋਂ ਆਏ ਹੁੰਦਾ ਵੀ ਉਹ ਉਥੇ ਆਦਤ ਲੱਗੀ ਕੇ ਉਹਨੂੰ ਆਦਤ ਪਈ ਆ ਪਰ ਜਿੰਨਾ ਮੇਰਾ ਰਿਸਰਚ ਸ਼ੋ ਕਰਦਾ ਪਿਛਲੇ ਅਸੀਂ ਅਰਾਊਂਡ ਕੋਈ ਮਾਨਸਿਕ ਰੋਗ ਹੁੰਦਾ ਆ ਮੁੰਡੇ ਦਾ ਸਿਚੁਏਸ਼ਨ ਡੈਥ ਹੋਈ ਆ ਥੋੜੇ ਚਿਰ ਪਹਿਲਾਂ ਰਾਈਟ ਹੁਣ ਸਾਲਾਂ ਦੇ ਮੁੰਡੇ ਦੀ ਪੈਂਡ ਡੈਥ ਹੋਈ ਆ ਯਾਰੇ ਆਪਣੋ ਤਰਸ ਕਰਨਾ ਚਾਹੀਦਾ ਵੀ ਇਹ ਵਿਚਾਰਾ ਇੱਥੇ ਆਣ ਕੇ ਮਾਰ ਗਿਆ ਨਾ ਕਿ ਵੀ ਉਹ ਨਸ਼ਾ ਖਾਂਦਾਈ ਉਹ ਕਿਹੜਾ ਕੋਈ ਵੈਲੀ ਪੁੱਤ ਸੀ ਤਰਸ ਕਰਨਾ ਚਾਹੀਦਾ ਇਹ ਕਿਹੜਾ ਕੋਈ ਵੈਲੀ ਗੈਂਗਸਟਰ ਮੁੰਡਾ ਸੀ ਇਹਦਾ ਬਹੁਤ ਦਰਦਨਾਕ ਕਹਾਣੀ ਆ ਵੀ ਉਹਦਾ ਪਿਓ ਮਰ ਗਿਆ ਪਿੱਛੇ ਕਰਜ਼ਾ ਆਇਆ ਇੱਥੇ ਆਇਆ ਹੁਣ ਇੱਥੇ ਬਾਈ ਆਪਾਂ ਜੋ ਮਹੀਨਾ ਇੰਡੀਆ ਲਾ ਕੇ ਆਏ ਦੋ ਦਿਨ ਪ੍ਰੈਸ਼ਰ ਨਹੀਂ ਹੁੰਦੀ ਆਣ ਉਹ ਬਚਾਰੇ ਮੁੰਡੇ ਨੇ ਕੀ ਕੀਤੀ ਹੋਗੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਇਹ ਗੱਲ ਠੀਕ ਹੈ ਸੌਖਾ ਨਹੀਂ ਹੈ ਕੰਮ ਬਹੁਤ ਔਖਾ ਹੈ ਇਹ ਜਦ ਵਕਤ ਨਾ ਕਿਸੇ ਤੇ ਪਵੇ ਬਸ ਇਹੀ ਕਹਿੰਦੇ ਆ ਪਰ ਜਦ ਤੁਸੀਂ ਮਦਦ ਕਰਨੀ ਹੈ ਦਿਲ ਖੋਲ ਕੇ ਕਰਨੀ ਇੱਕ ਉਹ ਸਾਡੇ ਤਾਂ ਬਜ਼ੁਰਗ ਜਦ ਬੋਂਦੇ ਬੀਜ ਦੇ ਹੁੰਦੇ ਬੀਜਣ ਤੇ ਪੋਰ ਦੇ ਵਿੱਚ ਮੁਠੀ ਪਾਉਣ ਪਹਿਲਾਂ ਛਿੱਟਾਂ ਦੇ ਰਾਹੀ ਪਾਂਦੀ ਦੇ ਨਾਂਉ ਚਿੜੀ ਜਨੌਰ ਦੇ ਨਾਂਉ ਇਹ ਉਹ ਕੌਮ ਆ ਜਿਹੜੇ ਸਰਬੱਤ ਦਾ ਭਲਾ ਮੰਗਦੀ ਆ ਆਪਣੇਾਂ ਤੇ ਨਹੀਂ ਸ਼ੱਕ ਕਰਨੀ ਰਾਜ ਲਾਈਨ ਨੰਬਰ 2 ਸੱਚੀ ਕਾ ਜੀ ਸੱਚੀ ਕਾਲ ਜੀ ਇਹ ਕਿੱਡੀ ਗੱਲ ਹੋ ਗਈ ਜੇ ਉਹਨੇ ਡਰਗ ਖਾ ਲਈਦਾ ਇਨਸਾਨੀਅਤ ਵੀ ਰੱਖਣੀ ਚਾਹੀਦੀ ਬੰਦੇ ਨੂੰ ਹੂੰ ਕੀ ਹੋ ਗਿਆ ਜੇ ਆਪਾਂ ਉਹਨੇ ਡਰਗ ਖਾ ਲਿਆ ਕੇ ਭਲਾ ਹੁੰਦਾ ਓਦਾਂ ਵੀ ਤਾਂ ਸ਼ਾਮ ਨੂੰ ਬੋਤਲ ਲਿਆ ਕੇ ਬੰਦੇ ਵੇਚ ਹੀ ਲੈਂਦੇ ਥੈਂਕ ਯੂ ਇਹ ਤੋਂ ਹੀ ਬਹੁਤ ਜਿਆਦਾ ਕੰਮ ਕਰ ਜੀ ਦੇਣ ਵਾਲੇ ਤਾਂ ਕਦੇ ਵੀ ਨਹੀਂ ਕਹਿੰਦੇ ਜਿਨ੍ਹਾਂ ਨੇ ਕਈ ਵਾਰ ਦੇਣਾ ਨਹੀਂ ਹੁੰਦਾ ਉਹਨਾਂ ਨੂੰ ਸਵਾਲ ਹੁੰਦੇ ਆ। ਕ੍ਰਿਟਿਕ ਜਿਹੜਾ ਇੱਕ ਸ਼ਬਦ ਹੁੰਦਾ ਸ਼ਬਦ ਕ੍ਰਿਟਿਕ ਆ ਨਾ ਹਰ ਵਕਤ ਕਿਸੇ ਗੱਲ ਤੇ ਸ਼ੱਕ ਕਰਨਾ ਉਹ ਆਦਤ ਆ ਇੱਕ। ਗੀਤ ਸੁਣਾਉ ਤੁਹਾਨੂੰ ਨਮਾਜਵੀਰ ਜਵਰੇ ਦਾ ਤੇ ਗੁਰਰਾਉਂਤੇ ਦਾ ਛੋਟੇ ਪੱਖਿਆ। 11 ਕੇ 46 ਮਿੰਟ ਹੋਏ ਨੇ ਜੀ ਖਬਰਾਂ ਦੀ। ਤੁਹਾਡੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਕੁਝ ਕਾਲਰ ਨੇ ਮੇਰੇ ਨਾਲ ਅਮਰਤ ਸਿੱਧੂ ਲਾਈਨ ਨੰਬਰ 3 ਤੇ ਹੋ ਜੀ ਅਮਰਤ ਸਿੱਧੂ ਬਲਜਿੰਦਰ ਸਿੰਘ ਸਾਹਿਬ ਲਾਈਨ ਨੰਬਰ 4 ਕੌਸੀ ਦਾ ਗੱਲਪਾਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਾਲ ਤੁਹਾਡਾ ਥੈਂਕ ਯੂ ਕੱਲ ਸਾਡੇ ਕੋਲ ਆਉਣ ਦਾ ਧੰਨਵਾਦ ਬੇਨਤੀ ਕਰਦਾ ਆਪਣੇ ਡਰਾਈਵਰਾਂ ਨੂੰ ਵੇ ਵੇ ਮਾੜਾ ਸਮਾਂ ਬਸ ਉਥੇ ਆਇਆ ਚਲੇਦੇ ਪਰਵਾ ਲਈ ਬਹੁਤ ਔਖਾ ਆ ਥੋੜੇ ਥੋੜੇ ਆ ਇੱਕ ਵੀਕ ਜੇ ਗੈਸ ਨਾ ਪਾਉ ਉਹ ਆਪਣੇ ਜਿਹੜੇ ਕੈਟਰ ਲਈ ਫਿਰਦੇ ਆ ਜਾਂ ਲੈਂਕਨ ਲਈ ਫਿਰਦੇ ਆ ਟੱਕ ਹੂੰ ਉਹਨਾਂ ਕਿਹਾ ਇੱਕ ਵੀਕ ਗੈਸ ਹੀ ਨਾ ਪਾਉਣ ਤਾਂ ਉਹ ਥੋੜੇ ਥੋੜੇ ਕਰਕੇ ਵਿਚਾਰੇ ਹੈਲਪ ਕਰ ਦੇਣ ਉਹ ਦਾਤ ਜ਼ਰੂਰੀ ਆ ਜੀ ਉੱਥੇ ਬਹੁਤ ਬਹੁਤ ਥਾਣੇ tourne ਫਿਰਦੇ ਆ ਜੇ ਕੋਈ ਲੈਂਡ ਰੋਵਰ ਲਈ ਫਿਰਦਾ ਕੋਈ ਖੋਜ ਲਈ ਫਿਰਦਾ ਉਹ ਗਰੀਬ ਦੀ ਮਦਦ ਜੇ ਹੋ ਜਾ ਕੋਈ ਮਾੜੀ ਗੱਲ ਨਹੀਂ ਥੈਂਕ ਯੂ ਧੰਨਵਾਦ ਜੀ ਸਾਲ ਸਾਹਿਬ ਜਿਹੜੇ ਨੇ ਰੇਂਜ ਰੋਵ ਰਵੀ ਮubarrak ਕੌਮ ਚੜ੍ਹਦੀਆਂ ਕਲਾਂ ਚ ਰਹੇ ਵਧੀਆ ਗੱਡੀਆਂ ਚ ਫਿਰੇ ਇਹ ਨਹੀਂ ਹੈ ਮੈਣਾ ਨਹੀਂ ਹੈ ਕੋਈ ਪਰ ਨਾਲ ਹੀ ਜਦ ਜ਼ਰੂਰਤ ਹੈ ਉਦਨ ਨਾਲ ਖਾਂ ਡੋਨਲਡ 트ੰਪ ਦੇ ਕੈਂਪੇਨ ਮੋਡ ਕਰਕੇ ਇੱਕ ਵੱਡੀ ਪ੍ਰੋਬਲਮ ਹੋ ਗਈ ਕਈ ਵਾਰ ਗਰਮੀ ਚ ਕਬੀਸ਼ਰ ਵੀ ਤੇ ਟਾਡੀ ਵੀ ਕਹਿ ਦਿੰਦੇ ਹੁੰਦੇ ਨੇ ਗੱਲਾਂ ਤੇ ਗੱਲ ਦਾ ਕੋਈ ਨਹੀਂ ਸਾਡੇ ਚੋਂ ਵੀ ਮੂੰਹਾਂ ਚੋਂ ਨਿਕਲ ਜਾਂਦੀ ਗੱਲ ਫਲੋਰੀਡਾ ਦੀ ਰੈਲੀ ਦੇ ਵਿੱਚ ਗਰਮ ਹੋ ਗਿਆ ਸਰਪੰਚ ਕਹਿੰਦਾ ਆ ਵੇਖ ਲੋ ਕਲ ਰਾਤ 스웨ਡਨ ਚ ਕੀ ਹੋਇਆ 스웨ਡਨ ਚ ਹੋਇਆ ਕੱਖ ਨਹੀਂ ਕਿਤੇ ਇਧਰ ਉਧਰ ਜਾ ਲੱਗੀ ਸੁਤਾ ਲੋਕਾਂ ਨੇ ਟਵੀਟ ਕਰਕੇ ਖਲਾਰਾ ਪਾਇਆ ਪਿਆ ਉਹ ਕਹਿੰਦੇ ਕੀ ਪੀਤਾ ਸੀ ਬੋਲਣ ਤੋਂ ਪਹਿਲਾਂ ਕਿਉਂਕਿ ਆਪਾਂ ਨੂੰ ਤਾਂ ਸਵਾਦ ਸਵਾਰ ਕੇ ਪਤਾ ਨਾ ਭਾਈਚਾਰਾ ਇਧਰ ਤਾਂ ਹਲੇ ਸਰਜੰਦਾ ਮੇਨਸਟ੍ਰੀਮ ਚ ਸਾਡੇ ਵਾਲੇ ਪਾਸੇ ਸਾਨੂੰ ਤਾਂ ਪਤਾ ਵਿੰਨੇ ਨੇ ਨਵੇਂ ਚੰਗੀਆਂ ਕਹਿਦੇ ਇੱਕ ਮਾੜੀ ਕਹਿਦੇ 99 ਛੱਡ ਕੇ ਇੱਕੇ ਫਾਲੜੀਆਂ ਫਿਰ ਪਹੇ ਚ ਕਢਾਉਂਦੇ ਆ ਨਾਲੇ ਭਈ ਇੱਥੇ ਖੜ ਅਸੀਂ ਬਣਾਗੇ ਜੱਜ ਤੇ ਤੂੰ ਬੈਠ ਫਤਵਾ ਕਰਦੇ ਆ ਡੋਲਰ ਟ੍ਰੰਪ ਦੀ ਬਸ ਕਰਾਈ ਪਈ ਐ ਲੋਕਾਂ ਨੇ ਤੇ ਇਹ ਹੋ ਗਿਆ ਉਹ ਅਸਲ ਤੇਜ਼ੀ ਕੁਛ ਨਾ ਕੁਛ ਨਾ ਹੈ ਕਹਾਣੀ ਕੱਲ ਉਹਦੀ ਇੱਕ ਵੇਖਿਓ ਸਨਟਾਈ ਜਿਹੜੀ ਸੀਬੀਸੀ ਤੇ ਹੁੰਦੀ ਐ ਉਸਤੇ ਜਦ ਤੁਸੀਂ ਉਸ ਨੂੰ ਵੇਖਦੇ ਹੋ ਉਹਦੀ ਜ਼ਿੰਦਗੀ ਉਹਦੇ ਦਾਦੇ ਤੋਂ ਲੈ ਕੇ ਉਹਦੇ ਪਿਤਾ ਤੋਂ ਲੈ ਕੇ ਵੇਖ ਲਓ ਹੈਰਾਨੀ ਹੋ ਗਈ ਕਿ ਉਹ ਬੰਦਾ ਇੱਕ ਭਾਈ ਇਹਦੀ ਬਿਲਡਿੰਗ 'ਚ ਮੇਨਟੇਨੈਂਸ ਵਰਕਰ ਦੇ ਤੌਰ ਤੇ ਕੰਮ ਕਰਦਾ ਰਿਹਾ ਕਹਿੰਦਾ ਨਾ ਉਹਨੇ ਨਹੀਂ ਮਿਹਨਤ ਕੀਤੀ ਮੈਂ ਉਹਨੂੰ ਹਾਰ ਮੰਨਣੀ ਪਹਿਲੇ ਦਿਨੋਂ ਪਸੰਦ ਨਹੀਂ ਤੇ ਤਰੱਕੀਆਂ ਵੀ ਕੀਤੀਆਂ ਇਹ ਜੀ ਕੱਲ ਨਹੀਂ ਬਿਲੀਅਨਸ ਆਫ ਡਾਲਰ ਇਕੱਠੇ ਕੀਤੇ ਹੁਣ ਰੋਲਾ ਕੀ ਪੈ ਰਿਹਾ ਇੰਗਲੈਂਡ ਦੇ ਵਿੱਚ ਵਿਜ਼ਿਟ ਕਰਨ ਜਾਣਾ ਤੇ ਉੱਥੇ 18 ਲੱਖ ਦੇ ਕਰੀਬ ਲੋਕਾਂ ਨੇ ਸਟੇਟ ਵਿਜ਼ਿਟ ਤੇ ਵੀ ਇਹ ਬੰਦਾ ਇੰਗਲੈਂਡ ਚ ਨਹੀਂ ਆਉਣਾ ਚਾਹੀਦਾ 18 ਲੱਖ ਨੇ ਦਸਤਕਤ ਕਰ ਦਿੱਤੀ ਤੇ 3 ਲੱਖ ਨੇ ਹੱਕ ਚ ਦਸਤਕਤ ਕਰਤੇ ਤੇ ਲੱਖ ਤੋਂ ਵੱਧ ਜੇ ਸਾਈਨ ਹੋ ਜਾਣ ਤਾਂ ਹਾਊਸ ਆਫ ਕਾਮਨਸ ਦੇ ਵਿੱਚ ਡਿਬੇਟ ਦਾ ਇਹ ਵਿਸ਼ਾ ਹੁੰਦਾ ਹੈ ਸਪੀਕਰ ਜਿਹੜਾ ਹਾਊਸ ਆਫ ਕਾਮਨਸ ਦਾ ਉੱਥੇ ਉਹ ਵਿਗੜ ਗਿਆ ਜੋਨ ਵਸੋਸ ਦਾ ਨੌਆ ਉਹ ਕਹਿੰਦਾ ਨਾ ਇਹਨੂੰ ਬਿਲਕੁਲ ਥੇ ਮਾਈਕ ਮਿਲਣਾ ਚਾਹੀਦਾ ਪਾਰਲੀਮੈਂਟ ਨੂੰ ਵਿੱਚ ਬੋਲਣ ਲਈ ਇੰਗਲੈਂਡ ਦਫਾੜ ਹੋਇਆ ਬੈਠਾ ਇਸ ਦੀ ਵਿਜ਼ਿਟ ਕਰ ਕਈ ਵਾਰ ਹੋਊਗਾ ਜ਼ਿੰਦਗੀ ਮੇਰੇ ਖਿਆਲ ਬਹੁਤ ਘੱਟ ਹੁੰਦਾ ਪਰ ਪਹਿਲਾਂ ਵੀ ਉੱਥੇ ਵਿਜ਼ਿਟ ਲੋਕ ਕਰਦੇ ਰਹੇ ਨੇ ਰਾਣੀ ਕਹਿੰਦੀ ਮੈਂ ਰਾਤਰੀ ਰਾਤ ਦਾ ਖਾਣਾ ਖਿਲਾਉਣਾ ਤੇ ਇੰਗਲੈਂਡ ਦੇ ਵਿੱਚ ਇਹ ਗੜਬੜ ਵੱਡੀ ਹੋਈ ਹੋਈ ਹੈ ਦੇ ਨਾਲ ਵੀਡੀਓ ਇੱਕ ਜਿਹੜੀ ਮਲੇਸ਼ੀਆ ਦੇ ਵਿੱਚੋਂ ਪ੍ਰਾਪਤ ਹੋਈ ਕੋਲਾਲੰਪੁਰ ਦੇ ਵਿੱਚ ਨਾਰਥ ਕੋਰੀਆ ਦੇ ਰਾਜੇ ਦੇ ਭਾਈ ਨੂੰ ਹਾਫ ਬ੍ਰਦਰ ਨੂੰ ਜਦ ਕਿਸਤਰੀ ਨੇ ਆ ਕੇ ਜ਼ਹਿਰ ਉਹਦੇ ਮੂੰਹ ਤੇ ਮੜਿਆ ਉਹ ਵੀਡੀਓ ਵੇਖ ਲਈ ਉਹ ਪਿੱਛੋਂ ਆਉਂਦੀ ਆ ਉਹ ਮੂਹਰੇ ਖੜਾ ਤੇ ਉਹ ਹੱਥ ਦੇ ਨਾਲ ਉਹਦੇ ਮੂੰਹ ਤੇ ਕੋਈ ਮੜ ਜਾਂਦੀ ਤੇ ਉਹਦੇ ਨਾਲ ਹੀ ਮੌਤ ਹੋ ਜਾਂਦੀ ਐਨੀ ਜ਼ਹਿਰੀਲਾ ਕੁਝ ਉਹ ਮੂੰਹ ਤੇ ਉਹਦੇ ਮੜ ਹੋ ਗਈ ਹੋ ਗਈ ਪਰ ਹੁਣ ਨੌਰ ਉਰੀਆ ਵਾਲੇ ਨੇ ਕੀ ਮੰਨਣਾ ਇਸ ਗੱਲ ਨੂੰ ਉਸ ਨੇ ਇਸ ਗੱਲ ਤੇ ਨਹੀਂ ਆਉਣਾ ਸਾਊਥ ਚਾਈਨਾ ਸੀ ਦੇ ਵਿੱਚ ਬੜੀ ਗਰਮੀ ਹੈ ਅੱਜ ਕੱਲ ਕਿਉਂਕਿ ਯੂ ਐਸ ਨੇਵੀ ਦਾ ਏਅਰਕ੍ਰਾਫਟ ਕੈਰੀਅਰ ਕਾਲ ਵਿਨਸਨ ਉਸ ਖਿੱਤੇ ਦੇ ਵਿੱਚ ਇੰਟਰਨੈਸ਼ਨਲ ਵਾਟਰ ਨੇ ਉਹ ਇੰਟਰਨੈਸ਼ਨਲ ਵਾਟਰ ਦੇ ਵਿੱਚ ਹੈ ਪਰ ਸਾਊਥ ਚਾਈਨਾ ਸੀ ਦੇ ਵਿੱਚ ਖੁਦ ਲਈ ਚੀਨ ਲੜ ਰਿਹਾ ਔਰ ਉਸਨੇ ਮੈਨ ਮੇਡ ਆਈਲੈਂਡਸ ਉੱਤੇ ਬਣਾ ਲੀਆਂ ਤੇ ਉੱਥੇ ਅੱਡੇ ਬਣਾ ਦਿੱਤੇ ਬਹੁਤ ਵੱਡੇ ਖਣਿਜ ਪਦਾਰਥ ਨੇ ਉੱਥੇ ਗੈਸ ਓਇਲ ਬਿਲੀਅਨਸ ਆਫ ਡਾਲਰ ਦੇ trillions of dollars ਦਾ ਉੱਥੇ ਧਰਤੀ ਦੀ ਕੁੱਖ ਰੁਕਿਆ ਉਸ ਦੀ ਖੁਦ ਮੁਖਤਿਆਰੀ ਦਾ ਰੌਲਾ ਸਾਊਥ ਕੋਰੀਆ ਲੜ ਰਿਹਾ ਭਾਰਤ ਵਾਲੇ ਵੀ ਵਿੱਚ ਪੰਜਾ ਮਾਰਦੇ ਆ ਤੇ ਬਹੁਤ ਵੱਡਾ ਉਹ ਇੱਕ ਵਿਸ਼ਾ ਤੇ ਅਮਰੀਕਾ ਦਾ ਇਹ ਜਿਹੜਾ ਲਿਮਿਟਸ ਦੇ ਬਰਾਬਰ ਦਾ ਏਅਰਕ੍ਰਾਫਟ ਕੈਰੀਅਰ ਆ ਊਰਜਾ ਨਾਲੇ ਚੱਲਦਾ ਐ ਇਹ ਸੋਚਿਆ ਨਸੀ ਦੇ ਵਿੱਚ ਐ ਹੁਣ ਉਹ ਯੂ ਐਸ ਐ ਕਾਲ ਵਿਨਸਨ ਉਸਦੇ ਕੱਲ ਦੀਆਂ ਫੋਟੋਆਂ ਜਿਹੜੀਆਂ ਛਾਪੀਆਂ ਇਸ ਕਰਕੇ ਚੀਨ ਨੂੰ ਇਹ ਹੁਣ ਮਨਜ਼ੂਰ ਨਹੀਂ ਉਹ ਕਹਿੰਦਾ ਵੀ ਸਾਡੇ ਪਾਣੀਆਂ ਦੇ ਵਿੱਚ ਇਹ ਜਹਾਜ਼ ਕੀ ਕਰਦਾ ਫਿਰਦਾ ਅਸ਼ੀਦ ਵਧੀ ਹੋਈ ਐ ਉਧਰ ਮੋਸਲ ਦੇ ਵਿੱਚ ਆਖਰੀ ਹੱਲਾ ਵੈਸਟਰਨ ਪਾਰਟ ਦੇ ਵਿੱਚ ਬੋਲਿਆ ਅਮਰੀਕਾ ਦੀ ਨਾਲ ਮਿਲਟਰੀ ਹੈ ਮੈਡ ਡੌਗ ਮੈਟਿਸ ਜਨਰਲ ਉਸਨੇ ਅਚਨਚੇਤ ਬਗਦਾਦ ਦਾ ਦੌਰਾ ਕੀਤਾ ਮੋਸਲ ਦੇ ਪੱਛਮੀ ਹਿੱਸੇ ਦੇ ਵਿੱਚ 7 ਲੱਖ ਲੋਕ ਨੇ ਤੇ 3.5 ਲੱਖ ਉਹਦੇ ਵਿੱਚ ਬੱਚੇ ਨੇ ਤੇ ਆਈਸਿਸ ਦੇ ਅਤਵਾਦੀਆਂ ਨੇ ਉਹਨਾਂ ਬੱਚਿਆਂ ਨੂੰ ਤੇ ਉਹਨਾਂ ਘਰਾਂ ਨੂੰ ਆਪਣੇ ਤੌਰ ਤੇ ਰੋ ਵਰਤ ਰਹੇ ਨੇ ਤੇ ਪਰਿਵਾਰਾਂ ਨੂੰ ਵਰਤ ਰਹੇ ਨੇ ਬਹੁਤ ਵੱਡਾ ਨੁਕਸਾਨ ਉਸ ਦੇ ਵਿੱਚ ਹੋਣਾ ਲੋਕ ਚਾਰ ਲੱਖ ਦੇ ਕਰੀਬ ਮੋਸਲ ਦੇ ਉਸ ਹਿੱਸੇ ਚੋਂ ਭੱਜਣਗੇ ਇਹ ਪੇਸ਼ੰਗੋਈ ਕੀਤੀ ਜਾ ਰਹੀ ਆ ਬੱਚੇ ਬਹੁਤ 70 ਲੱਖ ਦੇ ਵਿੱਚੋਂ 3.5 ਲੱਖ ਜਵਾਕ ਹੈ ਤੇ ਬਹੁਤ ਸਟਰੋਂਗ ਹੋਲਡ ਆਈਸਿਸ ਮਿਲਟਰੀ ਨੇ ਹੁਣ ਆਖਰੀ ਹੱਲਾ ਅੱਜ ਸ਼ੁਰੂ ਰਾਤ ਦਾ ਕੱਲ ਦਾ ਕੀਤਾ ਮਾਛਮੀ ਪਾਸੇ ਰਾਕ ਦੀ ਜੰਗ ਨੇ ਬਹੁਤ ਦੁਨੀਆ ਨੂੰ ਕੁਚਲਿਆ ਸੀਰੀਆ ਦੀ ਸ਼ੁਰੂ ਹੋ ਗਈ ਉਧਰੋਂ ਗਦਾਫੀ ਵਾਲਾ ਛੇਤੀ ਨਿਬੜ ਗਿਆ ਸੀ ਕੰਮ afghanistan ਦੇ ਵਿੱਚ ਤਾਂ ਫਰਕੇ ਕੋਈ ਨਹੀਂ ਉਹ ਨਾਲ ਹੀਰੋ ਹੌਂਡ ਤੇ ਚੜੇ ਜਾਂਦੇ ਨਾਲ ਬੰਮ ਫਟ ਜਾਂਦਾ ਝਾਕਦੇ ਵੀ ਨਹੀਂ ਪਿੱਛੇ ਨੂੰ ਘੁੰਮ ਕੇ ਵੀ ਕੋ ਖੜਾਕ ਹੋਇਆ ਯੂਜ਼ ਟੂ ਨੇ ਇਹ ਮਰ ਗਏ ਜਿੰਨੇ ਖੱਪ ਕੇ ਅੱਧਿਆਂ ਦਾ ਪਤਾ ਲੱਗ ਜਾਂਦਾ ਅੱਧਿਆਂ ਦਾ 10 ਦਿਨ ਲੈਂਦੇ ਨੇ ਤਾਲਿਬਾਨ ਬਹੁਤ ਜ਼ੋਰ ਪਿਆ ਤਾਲਿਬਾਨ ਨਹੀਂ ਦੱਬ ਹੋਇਆ 2001 ਦਾ ਹਮਲਾ ਕੀਤਾ 15 16 ਸਾਲ ਹੋ ਗਏ ਔਰ ਨਾ ਹੀ ਦੱਬੀ ਦਿਆ ਉਹ ਤਾਂ ਵੱਡਾ ਦੇਸ਼ ਹੈ ਤੇ ਭਾਰਤ ਦੀ ਖਾਸੀ ਭੂਮਿਕਾ ਉੱਥੇ ਹੁਣ ਕਿਉਂਕਿ ਪਾਕਿਸਤਾਨ ਨਾਲ ਵਿਗੜਦੀ ਅਪਰਲੇ ਬੰਨੇ ਉਹਨਾਂ ਦੀ ਬਣਦੀ ਹੈ ਤੇ ਕਿਸੇ ਵੀ ਮਿਟਰੀ ਤੋਂ ਉਹ ਗੱਲ ਕੰਟਰੋਲ ਨਹੀਂ ਹੋ ਰਹੀ ਪਤਾ ਹੀ ਨਹੀਂ ਲੱਗਦਾ ਉੱਥੇ ਕੌਣ ਕਿੱਧਰ ਨੂੰ ਲੰਘ ਗਿਆ ਜਿਹੜਾ ਬੰਦਾ ਕਿੱਥੇ ਹੈ ਘਰਾਂ ਦੇ ਵਿੱਚ ਹੀ ਹੋ ਰਹਿੰਦੇ ਆ ਜੇ ਤਾਂ ਚੁੱਕੇ ਹੋਇਆ ਨਾ ਉਹਨਾਂ ਦਾ ਕੋਈ ਪਤਾ ਨਾ ਸਕੂਲ ਸਿਸਟਮ ਹੈ ਨਾ ਕੋਈ ਮੈਡੀਕਲ ਦਾ ਸਿਸਟਮ ਹੈ ਇਹ ਨਿਕਲਣਾ ਉਥੋਂ ਲੜਾਈਓਂ ਨਿਕਲੀਆਂ ਕਿੜੇ ਆਪ ਜਦਾ ਰਾਮ ਹੁੰਦਾ ਕਬੀਲੇ ਲੜਨ ਲੱਗ ਜਾਂਦੇ ਆ ਬਹੁਤ ਕਟਪੁਤਲੀਆਂ ਸਰਦਾਰਾਂ ਕਟਪੁਤਲੀ ਜਿਹੜੇ ਪਪਟ ਰਾਸ਼ਟਰਪਤੀ ਵੈਸਟ ਨੇ ਬਣਾਏ ਨੇ ਪਰ ਕੱਖ ਨਹੀਂ ਬਣਿਆ ਕੁਛ ਨਹੀਂ ਕੰਟਰੋਲ ਕਰ ਸਕਿਓ ਅਖੀਰ ਉਹ ਮਾਰੇ ਗਏ ਜਾਂ ਜਲਾਵਤਨ ਹੋ ਗਏ ਕੱਖ ਨਹੀਂ ਹੋਇਆ ਹਰਜੀਤ ਸਿੰਘ ਦੇ ਨਾਲ ਤੁਸੀਂ ਸ਼ਾਮਲ ਹੋ ਜਿੱਥੇ ਵੀ ਦੁਨੀਆ ਦੇ ਵਿੱਚ ਬੈਠੇ ਹੋ ਧੰਨਵਾਦ ਹੈ ਬ੍ਰਿਸਬਨ ਦੇ ਵਿੱਚ ਸਵੇਰ ਦੇ 6 ਵਜੇ ਬਾਹਲਾ ਸੰਦੇਹ ਹੈ। ਇਦੋਂ ਪਹਿਲਾਂ ਵੀ ਉੱਠਦੇ ਆ ਲੋਕ। ਪਰ ਤੁਹਾਡਾ ਇਹ ਪਿਆਰ ਹੈ। ਬਾਹਲਾ ਵੀ ਨਾ ਤੰਕਰਿਆ ਕਰੋ ਆਪਣੇ ਆਪ ਨੂੰ ਪ੍ਰੋਗਰਾਮ ਸੇਵ ਕਰਦੇ ਆ ਬਾਅਦ ਚ ਸੁਣ ਲਿਆਕ। ਥੈਂਕ ਯੂ ਪਰ ਜਿੱਥੇ ਵੀ ਬੈਠੇ ਹੋ ਇੰਗਲੈਂਡ ਦੇ ਵਿੱਚ ਜਰਮਨ ਦੇ ਵਿੱਚ ਫਿਨਲੈਂਡ ਦੇ ਵਿੱਚ ਹਲਸਿੰਗੀ ਦੇ ਵਿੱਚ ਖੈਰਾ ਸਾਹਿਬ ਮਿੱਤਰ ਨੇ ਸਾਡੇ ਤੇ ਜਿਉਂਦੇ ਬਸਦੇ ਰਹੋ ਤੁਸੀਂ ਪ੍ਰੋਗਰਾਮ ਸੁਣਦੇ ਹੋ ਤੇ ਨਾਲੇ ਆਪਣਾ ਯੋਗਦਾਨ ਪਾਉਂਦੇ ਹੋ ਦੱਸਦੇ ਹੋ ਜੇ ਕਿੱਥੋਂ ਕਿਤੋਂ ਚੂਲ ਢਿੱਲੀ ਐ ਉਹ ਕਸੀ ਕਿਵੇਂ ਜਾਉ ਥੈਂਕ ਯੂ ਖਬਰਾਂ ਜੜੀਆਂ ਹੋਰ ਸਾਂਝੀਆਂ ਕਰਾਂ 1 2 ਕੋਈ ਐ ਕਿ ਸਾਇੰਸ ਦੇ ਪਾਸੇ ਟੈਕਨੋਲੋਜੀ ਦੇ ਪਾਸੇ SpaceX ਨੇ ਬਹੁਤ ਝੰਡੇ ਗੱਡੇ ਐ ਇਲਾਨ ਮਸਕ ਜਿਹੜਾ ਬੰਦਾ ਹੈ ਉਸਨੇ PayPal ਤੋਂ ਲੈ ਕੇ ਬਹੁਤ ਬਾਰੂ ਦੀਆਂ ਗੱਲਾਂ ਆਪਾਂ ਕੀਤੀਆਂ Tesla ਤੇ SpaceX ਬੂਸਟਰ ਜਿਹੜੇ ਰੌਕਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਕੈਪਸੂਲ ਜਿਹੜੇ ਕਹਿੰਦੇ ਸੀ ਉੱਪਰ ਗਏ ਹੋਏ ਮੁਰਦੇ ਨਾ ਜਿਹੜੇ ਵੱਡੇ ਥੱਲੋਂ ਬੂਸਟ ਕਰਦੇ ਛੱਡਦੇ ਰੌਕਟਾਂ ਨੂੰ ਉਹ ਦੁਆਰਾ ਵਰਤੇ ਨਾ ਜਾਂਦੇ ਮਹਿੰਗੀ ਪੈੜੀ ਟੈਕਨੋਲੋਜੀ ਖਾਸ ਤੌਰ ਤੇ SpaceX ਕੰਪਨੀ ਸੀ ਜਿਹੜੀ ਸਾਡਾ ਜਿਹੜਾ ਪੁਲਾਰ ਦੇ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈ ਉਹਦੇ ਵਿੱਚ ਸਪਲਾਈ ਭੇਜਣੀ ਤੇ ਜੰਗ ਕੋਥੇ ਦਾ ਲੈ ਕੇ ਆਉਣਾ ਜਿਹੜੇ ਪੁਲਾੜੀ ਨੇ ਵਿਗਿਆਨੀ ਨੇ ਉਹ ਤਾਂ ਐਪਸਿਊਲ ਦੇ ਵਿੱਚ ਜਾਂਦੇ ਹੈ ਡੌਕ ਕਰਦੇ ਆ ਤੇ ਇੱਕ ਹਰ ਵਕਤ ਉਥੇ ਰੌਕਟ ਹੈ ਜਿਹੜਾ ਐਪਸਿਊਲ ਹੈ ਜਿਹੜਾ ਹਰ ਵਕਤ ਡੌਕ ਰਹਿੰਦਾ ਕੋਈ ਗੱਲ ਹੋ ਜੇ ਤਾਂ ਉੱਤਰਦੇ ਨੇ ਦੇ ਵਿੱਚੋਂ ਉੱਡਦੇ ਆ ਉੱਥੇ ਉਤਰਦੇ ਆ SpaceX ਨੇ ਇੱਕ ਨਮੀ ਪਲਾਹਾਂਗੇ ਇਸ ਵੱਲ ਨੂੰ ਲਈ ਸੀ ਕਿ ਬੂਸਟਰ ਨੂੰ ਵਾਪਸ ਧਰਤੀ ਤੇ ਲਾ ਲਈਏ ਤਾਂ ਉਹਦਾ ਹੀ ਬਾਲਾ ਖਰਚ ਕੱਲ ਇੱਕ ਉਹਨਾਂ ਨੇ ਹੋਰ ਸਪਲਾਈ ਭੇਜੀ ਜਦ ਧਰਤੀ ਦੀ ਗੁਰੂਤਾ ਸ਼ਕਤੀ ਤੋਂ ਬਾਹਰ ਨਿਕਲ ਜਾਂਦਾ ਤੇ ਬੂਸਟਰ ਅਲੱਗ ਹੋ ਜਾਂਦਾ ਹੈ ਅਲੱਗ ਹੋ ਜਾਂਦਾ ਫਿਰ ਉਹ ਘੁੰਮਦਾ ਘੁੰਮਦਾ ਫਿਰ ਸੇਮ ਤੀਬਰਤਾ ਦੇ ਵਿੱਚ ਜਾ ਕੇ ਉਸ ਨੂੰ ਉਸੇ ਤਰੀਕੇ ਨਾਲ ਛੱਡਿਆ ਜਾਂਦਾ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਨੇੜੇ ਮਿਰਦਾ ਮਿਰਦਾ ਮਿਰਦਾ ਮਿਰਦਾ ਚੱਕਰ ਕੜਦਾ ਕਰਦਾ ਕਰਦਾ ਨੇੜੇ ਜਾ ਲੱਗਦਾ ਤੇ ਡਾਕ ਹੋ ਜਾਂਦਾ ਕੱਲ ਉਹਨਾਂ ਨੇ ਛੱਡ ਕੇ ਐਪਸੂਲ ਛੱਡਿਆ ਤੇ ਦੁਬਾਰਾ ਜਿਹੜਾ ਬੂਸਟਰ ਧਰਤੀ ਤੇ ਉਤਰਿਆ ਬਹਿ ਜਾ ਬਹਿ ਜਾ ਵੱਜ ਗਈਆਂ ਪਿਛਲੇ ਦਿਨ ਹੀ ਸੈਟੇਲਾਈਟਸ ਜਿਹੜੀਆਂ ਕੱਖੀਆਂ ਛੱਡੀਆਂ ਸੀ ਭਾਰਤ ਦੇ ਵਿੱਚੋਂ ਵੀ 60-70 ਦੇ ਕਰੀਬ ਸੈਟੇਲਾਈਟਸ ਜਿਹੜੀਆਂ ਛੱਡੀਆਂ ਉੱਧਰ ਵੀ ਤਰੱਕੀ ਹੋ ਰਹੀ ਹੈ ਜੇ ਤੁਸੀਂ 47 ਤੋਂ ਬਾਅਦ ਇਸਲੇ 60 ਸਾਲਾਂ ਦੀ 68 ਸਾਲਾਂ ਦੀ ਗੱਲ ਕਰਦੇ ਹਾਂ ਬਹੁਤ ਵੱਡੀ ਗੱਲ ਹੈ ਤੇ 70 ਸਾਲ ਹੋ ਗਏ ਬਹੁਤ ਕੰਮ ਹੋ ਰਿਹਾ ਇੱਕ ਦੇਸ਼ ਆਜ਼ਾਦ ਹੋਇਆ ਠੀਕ ਹੈ ਮੁਸ਼ਕਲਾਂ ਬਹੁਤ ਨੇ ਬਹੁ ਪਛਾਵੀ ਬਹੁਤ ਵੱਡੀ ਗਿਣਤੀ ਦਾ ਦੇਸ਼ ਹੈ 1.5 ਅਰਬ ਦੇ ਕਰੀਬ ਲੋਕ ਰਹਿੰਦੇ ਆ ਉੱਥੇ ਤੇ 22-24 ਬੋਲੀਆਂ ਤੇ ਕਿੰਨੇ ਰਾਜ ਨੇ ਖੁਦਮਖਤਿਆਰੀ ਦਾ ਰੌਲਾ ਪੈਂਦਾ ਤੇ ਵਿਚੇ ਹੀ ਦਬੜੂ ਕੁਸੜੂ ਔਕਣੇ ਚੱਲੀ ਜਾਂਦਾ ਪਰ ਰੱਬ ਹੀ ਰਾਖਾ ਕਿਵੇਂ ਚਲਾਈ ਜਾਂਦਾ ਇੱਕ ਮੰਨੇ ਡੇਢ ਕਰੋੜ ਦੀ ਗੱਡੀ ਸੜਕ ਤੇ ਜਾਈ ਜਾਂਦੀ ਹੈ ਇੱਕ ਸੜਕ ਤੇ ਬੈਠਾ ਡੇਢ ਰੁਪਈਆ ਮੰਗ ਰਿਹਾ ਹੈ ਹੈਰਾਨੀ ਹੋਈ ਹੈ ਹੋਏ ਹੈ ਸਪੇਸਐਕਸ ਦੀ ਇੱਕ ਨਵੀਂ ਜਿਹੜੀ ਪੁਲਾਹਗ ਹੈ ਜਿਵੇਂ ਦੱਸਿਆ ਸੀ ਡਿਫੈਂਸ ਸਕੱਰੇਟਰੀ ਮੈਡ ਡੌਗ ਮੈਟਸ ਜਿਹੜਾ ਹੈ ਉਹ ਪਹੁੰਚਿਆ ਇਰਾਕ ਦੇ ਵਿੱਚ ਉਹ ਕਹਿੰਦਾ ਅਸੀਂ ਤੁਹਾਡੇ ਤੇਲ ਲਈ ਨਹੀਂ ਆਏ ਤੇ ਹੋਰ ਕਾਦੇ ਲਈ ਆਏ ਇਹ ਨਹੀਂ ਪਤਾ ਲੱਗਿਆ ਅਮਰਤ ਸਿੱਧੂ ਲਾਈਨ ਨੰਬਰ 2 ਤੁਸੀਂ ਇਰਤੇਓ ਸਤਿਕਾਰਯੋਗ ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿਉਦ ਜੀ ਭਾਈ ਮੈਂ ਆਪਣਾ ਥੋੜੀ ਸਟੂਡੈਂਟ ਗੱਲ ਕਰਨਾ ਚਾਹੁੰਦਾ ਜਿਹੜਾ ਸਾਨੂੰ ਇਹ ਸਾਲ ਹੋ ਗਏ ਨੇ ਆਸਟ੍ਰੇਲੀਆ ਇਹਨੂੰ ਤੇ ਅਸੀਂ ਸਟੂਡੈਂਟ ਹੀ ਆਏ ਸੀਗੇ ਤੇ ਆ ਜਿਹੜਾ ਵਾ ਤੇਰਾ ਤੇ ਹੁੰਦਾ ਪਿਆ ਕੈਨੇਡਾ ਦੇ ਵਿੱਚ ਸਾਡੇ ਇੱਥੇ ਦੇ ਸੁਣਿਆ ਤੱਕ ਨਹੀਂ ਗਾ ਤੇ ਸਾਡੇ ਤੇ ਆਪਣਾ ਮਨਮੀਤ ਵਾਲੀ ਦੀ ਡੈਥ ਹੋਈ ਸੀਗੀ ਜੀ ਤੇ ਹਾ ਦਾ ਨਰਾ ਸਾਰ ਆਸਟ੍ਰੇਲੀਆ ਚ ਹੋਇਆ ਕਿ ਆਪਣੀ ਕਮਿਊਨਿਟੀ ਐਕਟ ਹੋ ਗਈ ਸੀ ਹੁਣ ਜਿੱਦਾਂ ਤੁਸੀਂ ਦੱਸਦੇ ਪਿਓ 2003 ਦੇਕ ਹੋ ਜਾਣੇ ਸਟੂਡੈਂਟ ਦੀਆਂ ਤੁਹਾਡੇ ਨਾਲ ਸਹੀ ਹੈ ਭਾਜੀ ਕਿ ਉਹ 17 18 ਸਾਲ ਦੀ ਉਮਰ ਦੇ ਨੇ ਤੇ ਮੈਨੂੰ ਇਹ ਨਹੀਂ ਸਮਝ ਲੱਗਦੀ ਭਾਜੀ ਮੇਰੀ 40 ਬੁੱਧੀ ਹੁੰਦੇ ਮੈਨੂੰ ਉਨੀ ਸਮਝ ਲੱਗਦੀ ਲੱਗਦਾ ਕਿ ਜਿਹੜੀ ਜਿਹੜੀ ਆਸਟ੍ਰੇਲੀਆ ਚ ਵੀ ਮਿਲਦੀ ਹੈ ਠੀਕ ਹੈ ਇੱਥੇ ਅਜੇ ਤੱਕ ਨਹੀਂ ਕਦੀ ਸੁਣਿਆ ਵੀ ਐਦਾਂ ਦੀ ਡੈਥ ਹੋ ਗਈ ਆ ਆਪਣੇ ਕਿਸੇ ਸਟੂਡੈਂਟ ਦੀ ਪੰਜਾਬੀ ਦੀ ਕਿਸੇ ਵੀ ਤੁਸੀਂ ਸੁਣਿਆ ਆ ਇਹ ਕੈਨੇਡਾ ਦੇ ਵਿੱਚ ਵੀ ਕਿਉਂ ਐਦਾਂ ਹੁੰਦਾ ਪਿਆ ਇਹ ਐ ਮੈਨੂੰ ਬੜੀ ਮੇਰੇ ਦਿਲ ਨੂੰ ਟੱਚ ਕੀਤੀ ਗੱਲ ਇਸ ਕਰਕੇ ਭਾਜੀ ਮੈਂ ਫੋਨ ਕੀਤਾ ਹਾਲਾ ਕਿ ਮੈਂ ਪਿਛਲੇ ਭਾਜੀ 3-4 ਮਹੀਨਿਆਂ ਤੋਂ ਕਰਨਾ ਪਿਆ ਸੜਨਾ ਨਾਲ ਕਿਉਂਕਿ ਮੇਰਾ ਡਾਇਰੈਕਟ ਫੋਨ ਨਹੀਂ ਸੀ ਮਿਲਦਾ ਆਸਟ੍ਰੇਲੀਆ ਤੋਂ ਫਿਰ ਮੈਂ ਅਮਰੀਕਾ ਕਾਨਫਰੈਂਸ ਕਰਕੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਇਹ ਨੰਬਰ ਡਾਇਰੈਕਟ ਕਰੋ ਫਿਰ ਮੈਂ ਡਾਇਰੈਕਟ ਕੀਤਾ ਤੇ ਅੱਜ ਹੋ ਗਈ ਗੱਲ ਤੇ ਭਾਜੀ ਬੜਾ ਬੜਾ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਤੁਸੀਂ ਕਮਿਊਨਿਟੀ ਵਾਸਤੇ ਨਾ ਵੱਡਾ ਕੰਮ ਕਰਦੇ ਹੋ ਭਾਜੀ ਉੱਥੇ ਬੈਠ ਕੇ ਜਿਹਦਾ ਇਹ ਮਿੰਟੂ ਬਰਾੜਾ ਜੀ ਤੇ ਹਮਨਸੀਦੋ ਜੀ ਨੇ ਕਾਪੜਾ ਵਸੀਲੇ ਕੀਤਾ ਉਹਦਾ ਭਾਈ ਤੁਸੀਂ ਕਰ ਦਿਓ ਸਾਡਾ ਬਹੁਤ ਬਹੁਤ ਬਹੁਤ ਧੰਨਵਾਦ ਲੈ ਕੇ ਸਾਨੂੰ ਮੈਨੂੰ ਜਿਹੜੀ ਮਤਲਬ ਕਿ ਜਾਣਕਾਰੀ ਮਿਲਦੀ ਸਕਦਾ ਖੁਦ ਰੱਡੂਆ ਆਪਣੇ ਕਬੀਲਦਾਰੀਆਂ ਦੇ ਵਿੱਚ ਫਸੇ ਪਏ ਆ ਲੇਕਿਨ ਜੋ ਇਨਫੋਰਮੇਸ਼ਨ ਦੁਨੀਆ ਦੇ ਤੁਸੀਂ ਦਿੰਦੇ ਹੋ ਸਾਨੂੰ ਤੁਹਾਡੇ ਤੋਂ ਸਿੱਖਿਆ ਮਿਲਦੀ ਹੈ ਔਰੇ ਬਾਰੇ ਭਾਜੀ ਮੈਂ ਕਿਸ ਤਰ੍ਹਾਂ ਵੀ ਤੁਹਾਡਾ ਧੰਨਵਾਦ ਨਹੀਂ ਕਰ ਸਕਦਾ ਬੜਾ ਬੜਾ ਧੰਨਵਾਦ ਤੁਹਾਡਾ ਸਿੱਧੂ ਸਾਹਿਬ ਧੰਨਵਾਦ ਬਹੁਤ ਵੱਡੇ ਸ਼ਬਦ ਤੁਸੀਂ ਵਰਤੇ ਆ ਮੈਂ ਇਸ ਦੇ ਕਾਬਲ ਨਹੀਂ ਬਹੁਤ ਵਾਰ ਕਹਾਂ ਨਾ ਪੈਰ ਮਾਉ ਓਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਇੱਕ ਜਿਹੜੀ ਰਗ ਹੈ ਸਰੀਰ ਦੇ ਵਿੱਚ ਉਹ ਇਹ ਹੈ ਕਿ ਭਾਈਚਾਰੇ ਲਈ ਜਿਉਣਾ ਭਾਈਚਾਰੇ ਦੇ ਵਿੱਚੇ ਰਹਿਣਾ ਭਾਈਚਾਰੇ ਤੋਂ ਬਿਨਾ ਕੱਖ ਨਹੀਂ ਮਾੜੀਆਂ ਚੰਗੀਆਂ ਵੱਧ ਘੱਟ ਭਾਈਚਾਰੇ ਦੇ ਵਿੱਚੇ ਸਹਾਰਨੀਆਂ ਭਾਈਚਾਰੇ ਦੇ ਨਾਲ ਹੀ ਰਹਿਣਾ ਹਾਂ ਜਿਹੜਾ ਸਾਡੇ ਨਾਲ ਖਲਵਾੜ ਕਰੂ ਭਾਈਚਾਰੇ ਚ ਵੀ ਹੋ ਸ਼ਮਕਾਂ ਵੀ ਉਹਦੇ ਐਨ ਖੜਾ ਕੇ ਪਏ ਚ ਮਾਰਨੀ ਜਾਂ ਤਾਂ ਛੱਡ ਕੇ ਭੱਜੂ ਨਹੀਂ ਸਿੱਧਾ ਹੋ ਧੰਨਵਾਦ ਤੁਹਾਡਾ ਸਿੱਧੂ ਸਭ ਐਡੀ ਕੋਈ ਕਹਾਣੀ ਨੀ ਮੈਂ ਐਕਸੈਸਿਬ ਆ ਹਰਜੀਤ ਸਿੰਘ ਗਿੱਲ ਫੇਸਬੁੱਕ ਤੇ ਤੇ ਸੈੱਲ ਨੰਬਰ 6047291224 ਇਹਨੂੰ ਐਡ ਕਰੋ ਤੇ ਨਾਲ ਰਿਹਾ ਕਰੋ WhatsApp ਤੇ ਕਨੈਕਟਰ ਆ 6047291224 ਇਹ ਨੰਬਰ ਹੈ ਧੰਨਵਾਦ ਤੁਹਾਡਾ ਥੈਂਕ ਯੂ ਸੋ ਮੱਚ ਸਿਸਟਮ ਸਿਸਟਮਿਕ ਪ੍ਰੋਬਲਮ ਆ ਜੀ ਫੇਲਰ ਸਾਡੇ ਬੱਚੇ ਹੀ ਨਹੀਂ ਸਾਡੇ ਤਾਂ 2-3 ਕਿਨੇ 900 ਬੰਦਾ ਬੀਸੀ ਦੇ ਵਿੱਚ ਪਿਛਲੇ ਸਾਲ ਚ ਮਰਿਆ 350 ਦਿਨਾਂ ਦੇ ਵਿੱਚ ਧਰਤੀ ਹੱਲੀ ਪਈ ਹੈ ਸਾਡੇ ਜਿਹੜਾ ਤੁਹਾਡਾ ਦੇਸ਼ ਹੈ ਜਿੱਥੇ 22 ਡਾਲਰ ਘੱਟੋ-ਘੱਟ ਉਜਰਤ ਹੈ ਤੁਹਾਡੇ ਨਾਲ ਸਾਨੂੰ ਕੰਪੇਅਰ ਨਾ ਕਰੋ ਇੱਥੇ ਹੋਰ ਕਹਾਣੀ ਹੈ ਇੱਥੇ ਤਾਂ ਸਾਡਾ ਜ਼ੋਰ ਲੱਗਿਆ ਹੋਇਆ ਵੀ ਅਸੀਂ ਰਿਫਿਊਜੀ ਲਿਆਉਣੇ ਆ 50000 ਸਾਡੇ ਜਿਹੜੇ ਬੈਠਿਆ ਐਲੀਆ ਚ ਮਰੀ ਜਾਣ ਚਾਹੇ ਉਹ ਡਰਗ ਜਿਹੜਾ ওভারਡੋਜ਼ ਹੋ ਉਹ ਫੈਂਟਨਿਲ ਆਉਂਦੀ ਕਿੱਥੋਂ ਚੀਨ ਵਾਲੇ ਪਾਸਿਓ ਉਹ ਕਿੱਥੇ ਉਤਰਦੀ ਹੈ ਕਾਸਟੇ ਜਾਂਦਾ ਕੋਈ ਇਹ ਬੰਦਰਗਾਹ ਤੇ ਉੱਤ ਵੀ ਹੈ ਜਹਾਜ਼ਾਂ ਤੇ ਉੱਤ ਵੀ ਹੈ ਸਾਡੇ ਕੋਲ ਬੰਦੇ ਹੈ ਨਹੀਂ ਸੱਤੇ ਸਕਰੀਨ ਨਹੀਂ ਹੋ ਰਿਹਾ ਕੰਮ ਤੁਸੀਂ ਟਾਪੂ ਇੱਕ ਤੁਸੀਂ ਬਹੁਤ ਕੰਟਰੋਲ ਕੀਤਾ ਤੁਹਾਡੇ ਦੇ ਵਿੱਚ 20 ਬਾਈ ਡਾਲਰ ਘੰਟੇ ਦੇ ਮਿਲਦੇ ਆ ਮਿਨੀਮਮ ਵੇਜਸ ਨੇ ਔਰ ਤੁਸੀਂ ਕਿਸਮਤ ਵਾਲੇ ਹੋ ਇਸ ਤੇ ਇਸ ਕਮਿਊਨਿਟੀ ਦੇ ਵਿੱਚ ਜਿੱਥੇ ਤੁਸੀਂ ਰਹੇ ਨੇ ਉਹ ਵਧੀਆ ਕਰੋ ਮਿਹਨਤ ਕਰੋ ਨਾ ਤੁਸੀਂ ਪੂਰ ਪਿਛਲੇ 20 ਸਾਲਾਂ ਚ ਪੜ੍ਹੇ ਲਿਖੇ ਮੁੰਡੇ ਆਏ ਹੋ ਨਾਲ ਤੁਹਾਡੀਆਂ ਜੀਵਨ ਸਾਥਣਾ ਜੀਵਨ ਸਾਥਣਾ ਦੇ ਨਾਲ ਜੀਵਨ ਸਾਥੀ ਆ ਗਏ ਸਾਰੇ ਬਹੁਤ ਵਧੀਆ ਤੁਹਾਡੇ ਤੇ ਸੰਭੋ ਆਪਣੇ ਦੇਸ਼ ਨੂੰ মিডিਆ ਤੁਹਾਡਾ ਵਧੀਆ ਹੋ ਰਿਹਾ ਮਿਹਨਤ ਕਰੋ ਇਹਨਾਂ ਮਿੰਟੂ ਗਾਰਡ ਵਰਗੇ ਮਰੇ ਤੁਸੀਂ ਨਾਂ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵਧੀਆ ਹੋਊਗਾ ਥੈਂਕ ਯੂ ਸੋ ਮੱਚ ਔਰ ਇੱਥੇ ਦੀ ਕਮਿਊਨਿਟੀ ਦੇ ਨਾਲ ਤੁਸੀਂ ਵੀ ਨਾਲ ਹੋ ਮੇਰੇ ਸਦਾ ਤੁਹਾਡੀ ਮੈਂ ਗੱਲ ਕਰਦਾ ਜਿਉਂਦੇ ਬਸਦੇ ਰਹੋ ਸ੍ਰੀ ਮਨਜੀਤ ਸਿੰਘ ਸੋਹੀ ਗੱਲ ਦਾ ਸਾਸੀ ਕਾਲ ਦੀ ਮਨਜੀਤ ਸਿੰਘ ਸੋਹੀ ਬੋਲਦਾ ਹਾਂ ਮੈਂ ਬਸ ਫੋੜ ਤੋਂ ਮੈਂ ਪਹਿਲੀ ਗੱਲ ਮਾਫੀ ਮੰਗਦਾ ਹਾਂ ਤੁਹਾਤੋਂ ਆਪਣੇ ਬੱਚੇ ਦੀ ਸੂਟੇਟ ਦੀ ਡੈਥ ਹੋਈ ਮੈਂ ਆਪਣੇ ਨਾਲ ਐਵਰਸਫੋਰਡ ਦਾ ਜਿਹੜਾ ਫਿਊਨਰਲ ਹੌਮ ਆ ਤੁਹਾਡੇ ਪੈਸਿਆਂ ਨਾਲ ਲੋਕਾਂ ਦੇ ਪੈਸਿਆਂ ਨਾਲ ਬਣਿਆ ਹੋਇਆ ਜੇ ਕਦੀ ਕਦੀ ਜ਼ਰੂਰਤ ਪੈਂਦੀ ਹੁੰਦੀ ਕਦੀ ਭੀੜੀ ਪੈ ਜਾਂਦੀ ਇਹੋ ਜੀ ਤਾਂ ਸਾਨੂੰ ਜੂਰ ਫੋਨ ਕਰਕੇ ਦੱਸੋ ਅਸੀਂ ਕੁਛ ਨਾ ਕੁਛ ਕੁਛ ਨਾ ਕੁਛ ਹੱਲਪ ਜ਼ਰੂਰ ਕਰ ਸਕਦੇ ਆ ਜੀ। ਨਹੀਂ ਭਾਈ ਜੀ ਅੱਗੇ ਨੂੰ ਤੁਹਾਨੂੰ ਦੱਸਾਂਗੇ ਸੋਈ ਸਾਹਿਬ ਦੱਸਾਂਗੇ। ਜੀ ਜੀ ਜੀ ਤੋਂ ਆਪਣੇ ਹਾਲੀ ਵੀ ਜੇ ਜਿਹੜੇ ਆਪਣੇ ਭਾਈ ਸਾਹਿਬਾਂ ਨਾਲ ਲੋਕਾਫਰ ਕਰਦੇ ਰੇ ਚਾਹੇ ਤੁਸੀਂ ਉਹਨਾਂ ਨੂੰ ਮੇਰਾ ਨੰਬਰ ਦੇ ਦਿਓ। ਚਾਹੇ ਉਹ ਨੂੰ ਮੈਨੂੰ ਦਾ ਨੰਬਰ ਮੈਨੂੰ ਦੇ ਦਿਓ ਅਸੀਂ ਜੋ ਆਪਣੀ ਸੁਸਾਇਟੀ ਵੱਲੋਂ ਕਿਉਂ ਇਹ ਲੋਕਾਂ ਦੀ ਸੁਸਾਇਟੀਆਂ ਲੋਕਾਂ ਦੇ ਪੈਸਾ ਨਾ ਬਣੀਆਂ ਲੋਕਾਂ ਦੇ ਫਾਇਦੇ ਵਾਸਤੇ ਬਣੀਆਂ ਜੀ। ਅਸੀਂ ਜੋ ਵੀ ਕੁਝ ਜਿਵੇਂ ਵੀ ਕੁਝ ਸਕਦੇ ਹੋਣੀ ਮਦਦ। ਕਿਉਂ ਇਹ ਨਾਨ-ਪ੍ਰੋਫਿਟ ਹੋਣ ਕਰਕੇ ਸਾਨੂੰ ਇਸ ਸੁਸਾਇਟੀ ਦਾ ਮਤਲਬ ਬਿਜ਼ਨਸ ਹੁੰਦਾ ਜੋ ਇਸ ਤਰ੍ਹਾਂ ਬਾਡੀ ਲੈ ਕੇ ਜਾਣੀ ਉਹਦੇ ਅਰੇਂਜਮੈਂਟਸ ਕਰਨੀ ਜਾਂ ਬਾਮੀ ਵਗੈਰਾ ਕਰਨੀ ਬਹੁਤ ਗੱਲਾਂ ਨੇ ਜਿਹੜੀਆਂ ਮਾਰਕੀਟ ਦੇ ਨਾਲੋਂ ਬਾਹਰੋਂ ਚਲੋ ਆਪਣੇ ਈਜ਼ੀ ਹੋ ਸਕਦੀਆਂ ਨੇ ਬਾਕੀ ਜੇ ਕਿ ਕ੍ਰਾਈਟੇਰੀਆ ਇਹ ਵੀ ਹੈਗਾ ਜੇ ਕੁਝ ਦੇ ਵਿੱਚ ਸਾਡੇ ਜਿਹੜੇ ਬਾਇਲਰਸ ਦੇ ਵਿੱਚ ਫਿੱਟ ਆ ਜਵੇ ਤੇ ਇਹੋ ਜਿਹਾ ਕੁਝ ਪੂਰੀ ਦੀ ਪੂਰੀ ਵੀ ਮਦਦ ਹੋ ਜਾਂਦੀ ਪਰਿਵਾਰ ਦੀ ਨੈਕਸਟ ਮਾਲਕਨਗਰ ਦੇ ਜਿਹੀ ਘਟਨਾ ਹੋਵੇ ਜੇ ਹੋਵੇ ਤਾਂ ਮੈਂ ਤੁਹਾਨੂੰ ਨਾਲ ਗੱਲ ਜ਼ਰੂਰ ਕਰਾਂਗਾ ਥੈਂਕ ਜੀ ਜੀ ਤੇ ਆ ਜਿਹੜੇ ਭਾਈ ਸਾਹਿਬ ਲੋਕ ਆਫਟਰ ਕਰਦੇ ਸੀ ਤੇ ਇਹਨਾਂ ਨੂੰ ਜੇ ਤੇ ਤੁਹਾਨੂੰ ਹੈ ਜੀ ਠੀਕ ਹੈ ਥੈਂਕ ਯੂ ਕਿਸ਼ਾ ਸੋਹੀ ਦਰਸ਼ਨ ਸ਼ਰਮਾ ਮਨਜੀਤ ਸਿੰਘ ਸੋਹੀ ਰੱਲ ਕੇ ਬਹੁਤ ਵਧੀਆ ਕਮਿਊਨਿਟੀ ਦੀ ਇੱਕ ਜਗ੍ਹਾ ਬਣੀ ਐ ਨਹੀਂ ਤੁਹਾਨੂੰ ਬਹੁਤ ਦੂਰ ਆਉਣਾ ਪੈਂਦਾ ਸੀ ਜਾਂ ਮਿਸ਼ਨ ਤੇ ਜਾਂ ਫਿਰ ਇੱਧਰ ਆਉਣਾ ਪੈਂਦਾ ਸੀ ਡੈਲਟਾ ਦੇ ਵਿੱਚ ਵਧੀਆ ਕੀਤਾ ਤੁਸੀਂ ਆਪਣੀ ਚੀਜ਼ ਬਣਾ ਕੇ ਅਗਲੀ ਕਹਾਣੀ ਸੋਮਾਲੀਆ ਦੀ ਮੈਂ ਦੱਸਣੀ ਚਾਹੁੰਦਾ ਮੋਗਾਦੀਸ਼ੂ ਦੇ ਵਿੱਚ ਇੱਕ ਮਾਰਕੀਟ ਦੇ ਵਿੱਚ ਮਾਰਕੀਟ ਕਾ ਦੀਆਂ ਟੀਮ ਦਿਆਂ ਚਾਦਰਾਂ ਪਾਈਆਂ ਤੇ ਉੱਥੇ ਬੰਬ ਜਿਹੜਾ ਇੱਕ ਫਟਿਆ 34 ਜਣੇ ਮਾਰੇ ਗਏ ਨਵਾਂ ਪ੍ਰੈਜ਼ੀਡੈਂਟ ਮੁਹੰਮਦ ਅਬਦੁੱਲਾ ਫਰਮਾਜ਼ੋ ਉੱਥੇ ਹੋਇਆ ਤੇ ਅਲਸ਼ਵਾਬ ਵਾਲੇ ਕਹਿੰਦੇ ਸਾਨੂੰ ਇਹ ਸੂਤ ਨਹੀਂ ਬੈਠੀ ਮੋਗਾਦੀਸ਼ੂ ਤੇ ਮੋਗਾਦੀਸ਼ੂ ਤੇ ਸਮਾਲੀਆ ਨੂੰ ਵੇਖਣਾ ਹੋਵੇ ਬਲੈਕ ਹਾਕ ਡਾਊਨ ਇੱਕ ਫਿਲਮ ਹੈ ਅੰਗਰੇਜ਼ੀ ਦੀ ਆਪਣੇ ਇੱਥੇ ਹਾਲੀਵੁੱਡ ਦੀ ਉਹ ਵੇਖਣ ਵਾਲੀਆ ਦੇਖਿਓ ਬੰਦੇ ਇਹੋ ਜਿਹਾ ਜਦ ਉੱਪਰੋਂ ਉਹ ਆ ਨਾ ਥੱਲੇ ਅਮਰੀਕਨ ਮਿਲਟਰੀ ਦਾ ਚਾਪਰ ਬਲੈਕ ਤੇ ਕਿਵੇਂ ਉਹਨੂੰ ਫਿਲਮਾਇਆ ਫਿਲਮ ਇੱਥੇ ਥੱਲੇੋਂ ਕਾਲੀਆਂ ਜੀਪਾਂ ਵਿੱਚੇ ਸਰੋਂ ਦਾ ਤੇਲ ਲਈ ਖੜੇ ਆ ਤੇ ਉੱਪਰ ਏਅਰਕ੍ਰਾਫਟ ਐਂਟੀਅਰਕ੍ਰਾਫਟ ਗਨਸ ਨੇ ਉਹਨਾਂ ਦੇ ਕੋਲ ਜਾਂ ਨਿਕਲਦੇ ਆ ਪਤਾ ਹੀ ਨਹੀਂ ਕਿਵੇਂ ਫਿਲਮਾਂ ਬਣਾਉਂਦੇ ਨੇ ਸਾਡੇ ਵਾਲਿਆਂ ਨੂੰ ਨਹੀਂ ਪਰਾਂ ਤੇ ਬੰਦਾ ਕਿਤੇ ਗਿਰਦਾ ਹੈ ਫਿਲਮ ਜੇ ਵੇਖਣੀ ਹੁੰਦੀ ਹੈ ਇਹ ਵੇਖ ਕਿ ਪਤਾ ਲੱਗਦਾ ਕਿ ਫਿਲਮ ਦੇਖਣ ਵਾਲੀ ਫਿਲਮ ਹੈ ਉਹ ਉਹੀ ਮੌਗ ਦਾ ਇਸ਼ੂ ਦੇ ਵਿੱਚ ਇਹ ਲੜਾਈ ਹੋਈ ਸੀ ਤੇ ਉੱਥੇ ਇਹ ਬੰਬ ਫਟਿਆ 34 ਜਣੇ ਮਾਰੇ ਗਏ ਤੇ ਖਖੜੀਆਂ ਕਰੇਲੇ ਕੀਤੀ ਪਈਆ ਮਾਰਕੀਟ ਕਾਦੀ ਐ ਟੀਮ ਦੀਆਂ ਚਾਦਰਾਂ ਸੀ ਖਿੰਡ ਤੇ ਮਰਗੇ ਲੋਕੇ ਇਹਨਾਂ ਦੇਸ਼ਾਂ ਦੇ ਵਿੱਚ ਜਿਵੇਂ ਮਸਕਟ ਅਰਬ ਦੇਸ਼ ਨੇ ਸ਼ੁੱਕਰਵਾਰ ਨੂੰ ਇੱਥੇ ਜਿਹੜੀਆਂ ਨੇ ਮੋਸਟਲੀ ਜਿਵੇਂ ਆਪਣੇ ਇੱਥੇ ਸੰਡੇ ਨੂੰ ਮਾਰਕੀਟ ਲੱਗਦੀ ਐ ਫ੍ਰੀ ਮਾਰਕੀਟ ਜਿਹਨੂੰ ਕਹਿੰਦੇ ਐ ਉਸ ਤਰ੍ਹਾਂ ਦੀ ਦੀ ਆਹੋ ਜੇ ਕਿਸਮ ਦੀਆਂ ਇਹ ਮਾਰਕੀਟਾਂ ਦੇ ਵਿੱਚ ਲੱਗਦੀਆਂ ਤੇ ਛੋਟੀਆਂ ਛੋਟੀਆਂ ਦੁਕਾਨਾਂ ਤੇ ਉੱਥੇ ਲੋਕ ਆ ਕੇ ਸਾਮਾਨ ਖਰੀਦਦੇ ਸ਼ੁੱਕਰਵਾਰ ਨੂੰ ਸਾਰਾ ਦਿਨ ਉਹ ਇੱਕ ਸਿਸਟਮ ਹੁੰਦਾ ਇਹੋ ਜਿਹੀ ਜਿਹੜੇ ਛੋਟ ਸਾਡੇ ਸੂਬੇ ਨੇ ਕਲਕੱਤਾ ਸੋਰੀ ਬੰਗਾਲ ਉੜੀਸਾ ਬਿਹਾਰ ਉੱਥੇ ਵੀ ਐਤਵਾਰ ਨੂੰ ਛੋਟੀਆਂ ਛੋਟੀਆਂ ਦੁਕਾਨਾਂ ਉਸ ਤਰ੍ਹਾਂ ਹੀ ਜਿਵੇਂ ਆਪਾਂ ਛਪਾਰ ਦੇ ਮੇਲੇ ਜਾਂਦੇ ਉਸ ਤਰ੍ਹਾਂ ਬੈਠੇ ਪਕੌੜੇ ਛੋਟੇ ਛੋਟੇ ਤਲੀ ਜਾਂਦੇ ਆ ਉਸਰੇ ਮਿੱਟੀ ਪਈ ਜਾਂਦੇ ਲੋਕ ਚੱਪਲਾਂ ਤਿੰਜੀ ਪਾ ਕੇ ਜਾਂਦੇ ਨੇ ਉੱਥੋਂ ਹੀ ਉਹ ਘਰ ਦਾ ਸਮਾਨ ਲੈ ਜਾਂਦੇ ਨੇ ਜਿਹੜੇ ਛੋਟੇ ਬਹੁਤ ਟ੍ਰਾਈਬਲ ਏਰੀਆ ਨੇ ਬਹੁਤ ਕਬੀਲੇ ਨੇ ਬੰਗਾਲ ਦੇ ਵਿੱਚ ਖਾਸ ਤੌਰ ਤੇ ਤੇ ਬੜਾ ਆਲਗ ਕਿਸਮ ਦੀ ਜਗ੍ਹਾ 21 ਸਾਲ ਦਾ ਜੀ ਲੜਕਾ ਜਿਸ ਦੀ ਮੌਤ ਹੋਈ ਹੈ ਦੇ ਵਿੱਚ ਤੇ ਨੌ ਜਿਹੜੇ ਨੇ ਹਲੇ ਕਿਉਂਕਿ ਪੁਲਿਸ ਦੇ ਦੇਣ ਤੋਂ ਪਹਿਲਾਂ ਮੈਂ ਦੇਣੇ ਨਹੀਂ ਚਾਹੁੰਦਾ ਪਰ ਮੈਨੂੰ ਪਤਾ ਲੱਗ ਗਿਆ ਧੰਨਵਾਦ ਹੈ ਕਮਿਊਨਿਟੀ ਜਿਹੜੀ ਅਪਡੇਟ ਕਰਦੀ ਰਹਿੰਦੀ ਹੈ ਬਜਤ ਸਿੱਧੂ ਦਾ ਸਾਡੇ ਦਾ ਧੰਨਵਾਦ ਤੇ ਭਾਈ ਜੋਦੇ ਨੇ ਸੰਦੇਹਾਂ ਹੀ ਸੁੱਖੇ ਨੇ ਸਾਰਿਆਂ ਨੇ ਭਾਈ ਜੀ ਸਤਨਾਮ ਉਹਨਾਂ ਨੇ ਸੰਦੇਹਾਂ ਹੀ ਹੁਣੇ ਉਹ ਦੱਸਦੇ ਨੇ ਅਗਲੇ ਹਿੱਸੇ ਦੇ ਵਿੱਚ ਇੱਕ ਐਂਗ ਸਰੀਦ ਨੇ ਸਰਵੇ ਕੀਤਾ ਮੁਸ਼ਕਲ ਜਿਹੜੀ ਵੱਧ ਰਹੀ ਐ ਐਮਰਸਨ ਦੇ ਬਾਰਡਰ ਤੋਂ ਲੋਕ ਤੱਪ ਰਹੇ ਨੇ ਦੋ ਦਿਨਾਂ ਦੇ ਵਿੱਚ 22 ਜਣੇ ਨੌਰਟ ਕੋਟ ਵਾਲੇ ਪਾਸੇ ਐਮਰਸਨ ਬਾਰਡਰ ਟੱਪੇ ਰਿਫਿਊਜੀ ਬੈਕ ਕਾਲੇ ਪਾਸਿਓਂ ਟੱਪ ਰਹੇ ਨੇ ਤੇ ਮੰਜੇ ਬਿਸਤਰੇ ਦਾ ਵਿਨਿਪੈਗ ਦੇ ਵਿੱਚ ਉਹਨਾਂ ਦਾ ਸਿਸਟਮ ਕੀਤਾ ਗਿਆ ਸਲਵੇਸ਼ਨ ਆਰਮੀ ਜਿਹੜੀ ਐ ਸਲਵੇਸ਼ਨ ਆਰਮੀ ਜਿਹੜੀ ਐ ਉਹ ਉਹਨਾਂ ਦਾ ਇੰਤਜ਼ਾਮ ਕਰ ਰਹੀ ਐ ਲੋਕਾਂ ਨੇ ਅੰਗਸਰੀ ਨੇ ਇੱਕ ਸਰਵੇ ਕੀਤਾ ਚਾਰ ਦੇ ਵਿੱਚੋਂ ਇੱਕ ਜਿਹੜਾ ਕੈਨੇਡੀਅਨ ਆ ਉਹ ਇਹ ਗੱਲ ਕਹਿ ਰਿਹਾ ਹੈ ਬ੍ਰੇਕਿੰਗ ਨਿਊਜ਼ ਹੈ ਅੱਜ ਹੀ ਕਿ ਆਰਮੀ ਦਾ ਇੱਕ ਲੈਫਟਨੈਂਟ ਜਨਰਲ ਹੈ ਐਸ ਆਰ ਮੈਕਮਾਸਟਰ ਉਸ ਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾ ਦਿੱਤਾ ਹੈ ਡੋਨਲਡ ਟਰੰਪ ਨੇ ਇਹ ਐਂਕਰ ਦੇ ਵਿੱਚ ਚਾਰਾਂ ਦੇ ਵਿੱਚੋਂ ਇੱਕ ਕੈਨੇਡੀਅਨ ਇਹ ਕਹਿ ਰਿਹਾ ਕਿ ਡੋਨਲਡ ਟਰੰਪ ਦੇ ਵਾਂਗੂ ਬੈਨ ਲੱਗਣਾ ਚਾਹੀਦਾ ਸਾਡੀ ਇਮੀਗ੍ਰੇਸ਼ਨ ਦੇ ਵਿੱਚ ਵੀ ਤੇ ਇਹ ਚੀਜ਼ ਪੋਸੀਬਲ ਹੈ ਜਾਂ ਨਹੀਂ ਇਹ ਤਾਂ ਨਹੀਂ ਗੱਲ ਪੋਸੀਬਲ ਹੈ ਇਹ ਦੇਸ਼ ਦੇ ਵਿੱਚ ਬੈਨ ਵਾਲੀ ਤਾਂ ਗੱਲ ਨਹੀਂ ਹਾਂ ਇੱਕ ਜ਼ਰੂਰ ਕਿ ਕੁਝ ਨਾ ਕੁਝ ਬਦਲਣਾ ਪੈਣਾ ਹੈ ਅੰਗਸਰੀ ਦੇ ਫਰਵਰੀ 6 ਤੋਂ 9 ਨੂੰ ਵਿੱਚ 1508 ਐਡਲਟ ਕੈਨੇਡੀਅਨ ਤੇ ਸਰਵੇ ਕੀਤਾ ਹੈ ਅੱਗੇ ਵੀ ਦੱਸਿਆ ਸੈਂਪਲ ਲੈਂਦੇ ਆ ਸੈਂਪਲ ਦੇ ਵਿੱਚ ਫਿਰ ਦਿੰਦੇ ਆ ਉਹ ਸਾਰਿਆਂ ਨੂੰ ਤਾਂ ਹੁਣ ਕਰੋੜ ਨੂੰ ਨਾ ਕੋਈ ਫੋਨ ਚੱਕਦਾ ਨਾ ਸਰਵੇ 'ਚ ਖਾਸ ਕਰਕੇ ਸਾਡੇ ਜਿਹੜੇ ਸਰਵੇ ਕਹਿ ਦਵੇ ਆਪਾਂ ਦਾ ਫੋਨ ਕ੍ਰੈਡਲ ਦੇ ਵਿੱਚ ਛਾ ਦੇ ਕੇ ਮਾਰੀਦਾ ਨਾਲ ਕਹੀਦਾ ਅੰਗਰੇਜ਼ੀ ਬੋਲਦਾ ਸੀ ਤਾਂ ਇਹ ਹੁਣ ਗੱਲ ਇਹ ਆ ਰਹੀ ਹੈ ਕਿ ਕੈਨੇਡੀਅਨਸ ਨੇ ਜਿਹੜੀ ਹੈ ਗੱਲ ਕਨੇ ਸ਼ੁਰੂ ਕੀਤੀ 47% ਦੇ ਕਰੀਬ ਜਿਹੜੇ ਸਰਵੇ ਕੀਤਾ ਉਹਦੇ ਵਿੱਚੋਂ ਇਹ ਲੋਕ ਕਹਿ ਰਹੇ ਨੇ ਕਿ ਇਹ ਰਾਈਟ ਨੰਬਰ ਨੇ ਰਿਫਿਊਜ਼ ਹੀ ਦੇ 11% ਕਹਿ ਰਹੇ ਨੇ 40000 ਘਟਾ ਹੈ 41% ਕਹਿ ਰਹੇ ਨੇ 17 ਦੇ ਵਿੱਚ 40000 ਦਾ ਕੋਟਾ ਵੱਧ ਹੈ 41% ਮੈਜੋਰਟੀ ਨਹੀਂ ਪਰ ਬਹੁਤ ਵੱਡੀ ਇੱਕ ਗਿਣਤੀ ਹੈ 41% ਜੇ 1500 ਦੇ ਵਿੱਚੋਂ ਹੀ ਸੋਚੀਏ ਚਾਰਾਂ ਦੇ ਵਿੱਚੋਂ ਇੱਕ 1500 ਦੇ ਵਿੱਚੋਂ ਇੱਕ ਚਾਰਾਂ ਦੇ ਵਿੱਚੋਂ ਇੱਕ ਨੇ ਕਿਹਾ ਕਿ ਬੈਨ ਵਗੈਰਾ ਜਿਸ ਤਰ੍ਹਾਂ ਡੋਨਲਡ ਟਰੰਪ ਨੇ ਲਾਏ ਨੇ ਇਹ ਸਾਡੇ ਵੀ ਲੱਗਣੇ ਚਾਹੀਦੇ ਮੈਂ ਬਹੁਤ ਵਾਰ ਕਿਹਾ ਤੁਹਾਨੂੰ ਕਿ ਇਹ ਅਗਲੀ ਜਿਹੜੀ ਇਲੈਕਸ਼ਨ ਹੈ 2019 ਦੀ ਇਮੀਗ੍ਰੇਸ਼ਨ ਦੇ ਬੇਸ ਤੇ ਲੜੀ ਜਾਣੀ ਹੈ ਚਾਲੂ ਲੀਚ ਜਿਹੜੇ ਜਿਨ੍ਹਾਂ ਨੇ ਕੈਨੇਡੀਅਨ ਵੈਲਿਊਜ਼ ਦੀ ਗੱਲ ਕੀਤੀ ਅੱਜ ਕੱਲ ਕੱਲ ਅੱਜ ਕੱਲ ਉਹ ਤੇ ਨੇ ਲੀਡਰਸ਼ਿਪ ਡਿਬੇਟ ਸੈਟਰਡੇ ਨੂੰ ਹੋਈ ਆ ਉਸ ਨੂੰ ক্লোਜ਼ਲੀ ਤੁਸੀਂ ਵੇਖਿਆ ਹੋਵੇ ਪੋਲ ਦੇ ਵਿੱਚ ਮੈਕਸਮ ਵੱਢਣੀ ਡਾਕਟਰ ਤਿੰਨੇ ਹੀ ਲੈਵਲ ਤੇ ਆ ਮੈਕਸਮ ਦੀ ਕਿਊਬੈਕ ਦੇ ਵਿੱਚ ਖਾਸੀ ਬੱਲੇ ਬੱਲੇ ਆ ਤੇ ਇੱਧਰ ਘੱਟ ਹੈ ਅੰਗਰੇਜ਼ੀ ਉਹ ਘੱਟ ਬੋਲਦਾ ਇਸ ਤਰ੍ਹਾਂ ਡਾਕਟਰ ਲੀਚ ਜਿਹੜੇ ਅੰਗਰੇਜ਼ੀ ਤੇ ਫ੍ਰੈਂ ਫ੍ਰਾਂਸੀਸੀ ਬੋਲਦੇ ਐ ਕੈਵਨੋਲੇਰੀ ਫਰਾਂਸ ਰੈਂਚ ਬਿਲਕੁਲ ਨਹੀਂ ਬੋਲਦਾ ਡਾਕਟਰ ਲੀਚ ਨੇ ਜਿਹੜਾ ਕੈਨੇਡੀਅਨ ਵੈਲਿਊਜ਼ ਦੀ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਕੈਨੇਡੀਅਨ ਵੈਲਿਊਜ਼ ਦੀ ਗੱਲ ਮੈਂ ਉਹ ਕੀਤੀ ਕਿ ਸਾਡੀ ਇਮੀਗ੍ਰੇਸ਼ਨ ਦੇ ਲਈ ਫੇਸ ਟੂ ਫੇਸ ਇੰਟਰਵਿਊ ਹੁੰਦੀ ਸੀ 1995 ਤੋਂ ਪਹਿਲਾਂ ਕੋਈ ਵੀ ਬਿਨਾ ਇੰਟਰਵਿਊ ਤੇ ਇੱਥੇ ਨਹੀਂ ਸੀ ਆਉਣਾ 95 ਤੋਂ ਬਾਅਦ ਦਸਾਂ ਦੇ ਵਿੱਚੋਂ ਇੱਕ ਦੀ ਇੰਟਰਵਿਊ ਹੋਣ ਲੱਗੀ ਨੌ ਬਿਨਾ ਇੰਟਰਵਿਊ ਤੇ ਆ ਰਹੇ ਨੇ ਅੱਜ ਤੇ ਯੁੱਗ ਦੇ ਵਿੱਚ ਬਿਨਾ ਇੰਟਰਵਿਊ ਤੋਂ ਇਮੀਗ੍ਰੈਂਟ ਬਣਾਉਣੇ ਬਹੁਤ ਖਤਰਨਾਕ ਕੈਨੇਡੀਅਨ ਵੈਲਿਊਜ਼ ਇਹ ਦਾ ਮਤਲਬ ਡੋਨਲਡ ਟਰੰਪ ਨੂੰ ਉਹਨਾਂ ਨੇ ਵਧਾਈ ਦਾ ਪੱਤਰ ਲਿਖਿਆ ਸੀ ਇਸ ਦੀ ਗੱਲ ਹੋਈ 1970 ਚ ਉਹਨਾਂ ਦਾ ਦੇ ਵਿੱਚ ਤੇ ਫੋਰਟ ਮੈਕਮਰੀ ਦਾ ਤੀਸਰਾ ਹਿੱਸਾ ਘੱਟੋ ਘੱਟ ਸ਼ਹਿਰ ਦਾ ਉਹਨਾਂ ਦੇ ਪਿਤਾ ਨੇ ਬਣਾਇਆ ਰੇਰੀਜ ਦੇ ਵਿੱਚ ਉਹ ਵੱਡੇ ਹੋਏ ਤੇ ਉਸ ਤੋਂ ਬਾਅਦ ਉਹ ਐਮ ਡੀ ਨੇ ਬੱਚਿਆਂ ਦੇ ਰੋਗ ਬੱਚਿਆਂ ਦੇ ਮਾਹਰ ਨੇ ਤੇ ਔਰਥੋ ਦੇ ਸਰਜਨ ਨੇ ਇਹ ਮਿਨਿਸਟਰ ਉਹ ਸਟੇਟਸ ਆਫ ਔਮਨ ਰਹੇ ਤੇ ਮਿਨਿਸਟਰ ਆਫ ਲੇਬਰ ਰਹੇ ਹਰਪਰਦੀ ਸਰਕਾਰ ਦੇ ਵਿੱਚ ਤੇ ਹੁਣ ਉਹ ਐਮਪੀ ਨੇ ਤੇ ਉਹ ਲੜ ਰਹੇ ਨੇ ਲੀਡਰਸ਼ਿਪ ਰੇਸ ਸੋ ਇਹ ਕਹਾਣੀ ਇਹ ਵਿਸ਼ਾ ਜਿਹੜਾ ਲੋਕਾਂ ਦਾ ਬਣ ਰਹੀ ਹੈ ਲੋਕ ਗੱਲਾਂ ਕਰਨੇ ਸ਼ੁਰੂ ਕਰ ਦਿੱਤੀਆਂ ਚਾਰ ਦੇ ਵਿੱਚੋਂ ਇੱਕ ਕੈਨੇਡੀਅਨ ਇਹ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਨੇ ਕਿ ਇਹ ਵੱਡੀ ਗਿਣਤੀ گاਹ ਵੀ ਇਸ ਦੇ ਵਿੱਚ ਹੋਰ ਗੱਲਾਂ ਹੋਈਆਂ 67% ਦੇ ਕਰੀਬ ਇਹ 1500 ਦੇ ਵਿੱਚੋਂ ਲੋਕ ਕਹਿੰਦੇ ਵੀ ਜਿਹੜੇ ਰੈਫਿਊਜੀ ਆਉਂਦੇ ਨੇ ਸਾਡੀ ਮੇਨਸਟ੍ਰੀਮ ਸੁਸਾਇਟੀ ਦੇ ਵਿੱਚ ਜਜ਼ਬ ਨਹੀਂ ਹੋ ਰਹੇ ਕੀ ਇਹ ਸਾਰੀ ਜਿਹੜੀ ਹੈ ਜਿਹੜੀ ਇਹ ਸਰਵੇ ਹੋਇਆ ਇਹ ਸਾਰੇ ਕੈਨੇਡੀਅਨਸ ਨੂੰ ਰਿਪਰੈਜ਼ੈਂਟ ਕਰਦਾ ਹੈ ਮੇਬੀ ਨਾ 1500 ਜਣਿਆਂ ਦਾ ਤੇ ਸਰਵੇ ਹੋਇਆ 40000 ਦੇ ਇਸ ਸਾਲ ਦੇ 57% ਦੇ ਇਹਨਾਂ ਦੇ ਵਿੱਚੋਂ ਕੈਨੇਡੀਅਨਸ ਨੇ ਇਹ ਕਿਹਾ ਕਿ ਫੈਡਰਲ ਗਵਰਨਮੈਂਟ ਨੇ ਬਿਲਕੁਲ ਠੀਕ ਡਿਸੀਜਨ ਕੀਤਾ 트럼ਪ ਦੀ ਲੀਡ ਜਿਹੜਾ ਉਹ ਕਹਿੰਦਾ ਸੀ ਬੈਨ ਤੇ ਸਾਡੀ ਸਰਕਾਰ ਨੇ ਉਹ ਗੱਲ ਨਹੀਂ ਮੰਨੀ ਜਿਹੜਾ ਰੀ ਸੈਟਲਿੰਗ ਆ ਰਿਫਿਊਜੀਆ ਦਾ 40% ਜਿਹੜੇ ਸਟਰੋਂਗਲੀ ਕਹਿੰਦੇ ਆ ਉਹ ਇਹ ਕਹਿ ਰਹੇ ਆ ਕਿ ਉਹਨਾਂ ਦੀ ਰੀ ਜਿਹੜੀ ਆ ਵਧੀਆ ਤਰੀਕੇ ਨਾਲ ਹੋ ਰਹੀ ਆ 61% ਕਹਿ ਰਹੇ ਹੈ 51% ਦੇ ਕਰੀਬ ਉਹਨਾਂ ਦੇ ਵਿੱਚੋਂ ਹੀ ਇਸ ਦੇ ਵਿੱਚੋਂ ਲੋਕ ਕਹਿ ਰਿਹਾ ਕਿ ਉਹ ਵਧੀਆ ਮਿਹਨਤ ਨਹੀਂ ਕਰ ਰਹੇ 메ਨ ਸੋਸਾਇਟੀ ਦੇ ਵਿੱਚ 메ਨ ਸਟ੍ਰੀਮ ਦੇ ਵਿੱਚ ਰਹਿਣ ਦੇ ਪਰ ਉਮਰ ਦੇ ਵਿੱਚੋਂ ਹਾਂ ਤਾਂ 24 ਵਾਲੇ ਠੀਕ ਕਹਿ ਰਹੇ ਨੇ 25 ਤੋਂ 34 ਵਾਲੇ ਕਹਿੰਦੇ ਨਹੀਂ ਇਹ ਕਰ ਨਹੀਂ ਰਹੇ ਇੱਕ ਬਹੁਤ ਵੱਡਾ ਵਿਸ਼ਾ ਜਿਸ ਤੇ ਬਾਰੇ ਆਪਾਂ ਬਹੁਤ ਗੱਲਾਂ ਪਿਛਲੇ ਦਿਨੀ ਕੀਤੀਆਂ ਕਿ ਇਹਨਾਂ ਨੂੰ ਕੰਮ ਦੇ ਲਈ ਇਹਨਾਂ ਨੂੰ ਮਿਹਨਤ ਦੇ ਲਈ ਰਿਫਿਊਜੀ ਜਿਹੜੇ ਆਉਣ ਔਰ ਰਾਜਨੀਤਿਕ ਪੈਂਤੜੇ ਦੇ ਵਿੱਚ ਵੀ ਇਹ ਗੱਲਾਂ ਬਹੁਤ ਚੱਲਣ ਲੱਗੀਆਂ ਉਹਦਾ ਕਾਰਨ ਜਿਸ ਤਰ੍ਹਾਂ ਹੁਣੇ ਹੀ ਅੱਜ ਆਪਾਂ ਜਸ਼ਨ ਸਿੰਘ ਜੀ ਜਾਂ 900 ਬੰਦਿਆਂ ਦੀ ਓਵਰਡੋਜ਼ ਨਾਲ ਮਰਨ ਦੀ ਗੱਲ ਕਰਦੇ ਆਂ ਫੰਡਿੰਗਾਂ ਦੀ ਗੱਲ ਕਰਦੇ ਪੈਸੇ ਤੇ ਦੀ ਗੱਲ ਕਰਦੇ ਆਂ ਉਹ ਚਾਹੇ ਸੂਬਾ ਸਰਕਾਰਾਂ ਨੇ ਚਾਹੇ ਸੈਂਟਰ ਦੀ ਸਰਕਾਰ ਆ ਫੈਡਰਲ ਆ ਜਾਏ ਪਰਵਿੰਸ਼ੀਅਲ ਆ ਪੈਸਾ ਤਾਂ ਪੈਸਾ ਹੀ ਆ ਉਹੀ ਮਨੀ ਆ ਜਿਹੜੀ ਟੈਕਸ ਪੇਅਰ ਦੀ ਉਹਦੇ ਵਿੱਚੋਂ ਕੁਝ ਅੰਕ ਫੈਡਰਲ ਲੈ ਜਾਂਦਾ ਕੁਝ ਪ੍ਰੋਵਿੰਸ਼ੀਅਲ ਲੈ ਜਾਂਦਾ ਤੇ ਰਿੰਗ ਸਟਰੀਟ ਦੇ ਇਸ 1500 ਦੇ ਵਿੱਚੋਂ 14 ਨੇ 14 ਦੇ ਵਿੱਚੋਂ ਇੱਕ ਨੇ ਕਿਹਾ ਇਹ ਇਹ ਜਿਹੜੀ ਗੱਲ ਹੈ ਕਿ ਟਰੰਪ ਸਟਾਈਲ ਟ੍ਰੈਵਲ ਵੈਨ ਆ ਜਿਹੜਾ ਉਹ ਲੱਗਣਾ ਚਾਹੀਦਾ ਟਰੰਪ ਦਾ ਵੀ ਹੁਣ ਸਿੱਧੀ ਉਹਨੇ ਟੱਕਰ ਲਈ ਹੋਇਆ ਸੀਐਨਐ ਨਾਲ ਵਾਸ਼ਿੰਗਟਨ ਉਸ ਨਾਲ ਨਿਊਯਾਰਕ ਟਾਈਮਸ ਦੇ ਨਾਲ ਐਨਵੀ ਐਸ ਐਸ ਸੀਐਨਵੀਸੀ ਨਾਲ ਤੇ ਐਬੀਸੀ ਨਾਲ ਤੇ ਫੌਕਸ ਨਾਲ ਸਾਰਿਆਂ ਨੂੰ ਡਿਸਰਨਸਟੀ ਕ੍ਰੋਪਟ ਤੇ ਪਤਾ ਨਹੀਂ ਕੀ ਕੁਝ ਕਹਿ ਰਿਹਾ ਪਰ ਉਹਦਾ ਜਿਹੜਾ ਵੋਟ ਬੈਂਕ ਹੈ ਉਹਦੋਂ ਜਿਹਨੇ ਵੋਟਾਂ ਪਾਈਆਂ ਉਹ ਏਦਾਂ ਸਟਰੋਂਗ ਹੈ ਉਹਦੇ ਪਿੱਛੇ ਉਹ ਕੰਧ ਵਾਂਗੂ ਖੜਾ ਔਰ ਲੋਕ ਆਮ ਡਰਦੇ ਆ ਵੀ ਜੇ ਇਸ ਨੂੰ ਹਲਾਇਆ ਕੀਤੀ ਇਹਨਾਂ ਬੰਦਿਆਂ ਨੇ ਸੜਕਾਂ ਤੇ ਆ ਕੇ ਤਰਥੱਲੀ ਮਚਾ ਦੇਣੀ ਔਰ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਵੀ ਜੇ ਸਾਡਾ ਬੰਦਾ ਹਾਰ ਗਿਆ ਹਿਲਰੀ ਜਿੱਤ ਗਈ ਅਸੀਂ ਸੜਕਾਂ ਤੇ ਹੋਵਾਂਗੇ ਆਪਾਂ ਖਬਰ ਬਹੁਤ ਵਾਰ ਅਲਾਬਾਮਾ ਦੇ ਵਿੱਚੋਂ ਆਲੂਆਂ ਦੇ ਖੇਤੀ ਕਰਨ ਵਾਲੀ ਇੱਕ ਇਸਤਰੀ ਦੀ ਸਾਂਝੀ ਕੀਤੀ ਉਹ ਕਹਿੰਦੀ ਮੈਂ ਮਸ਼ੀਨ ਗਨ ਲੈ ਕੇ ਸੜਕ ਤੇ ਆਉਣਾ ਜੇ ਮੇਰਾ ਬੰਦਾ ਹਾਰ ਗਿਆ ਹੁਣ ਵੀ ਇਹ ਗੱਲਾਂ ਚੱਲ ਰਹੀਆਂ ਕਿ ਉਸ ਦੀ ਮਾਨਸਿਕ ਸਿਹਤ ਠੀਕ ਨਹੀਂ ਕੁਝ ਕੋ ਨੂੰ ਸਿੰਡਰੋਮ ਨੇ ਜਿਹਦੇ ਵਿੱਚ ਉਹ ਆਪਣੀ ਹਾਰ ਨਹੀਂ ਮੰਨਦਾ ਆਪਣੇ ਕ੍ਰਿਟਿਕ ਨੂੰ ਆਪਣੀ ਗਲਤੀ ਨੂੰ ਨਹੀਂ ਮੰਨਦਾ ਦੂਜਿਆਂ ਨੂੰ ਗਲਤ ਫੈਰ ਇਹ ਚੀਜ਼ਾਂ ਦੀ ਗੱਲ ਚੱਲ ਰਹੀ ਹੈ ਤੇ ਇਸ ਦਾ ਲੋਕਾਂ ਨੂੰ ਸੰਦੇਹ ਆ ਵੀ ਹੋ ਸਕਦਾ ਸਿਹਤ ਦੇ ਕਾਰਨ ਕਰਕੇ ਉਸ ਸਾਈਡ ਤੇ ਨਾ ਕਰਦਣ ਪਰ ਇਹ ਜਿਆ ਨਹੀਂ ਹੋਣ ਵਾਲਾ ਜਿਹੜੀ ਮਿੱਟੀ ਦਾ ਡੋਨਲਡ ਟਰੰਪ ਬਣੇ ਹਾਰ ਉਹਦੇ ਦਾਈ ਦੇ ਵਿੱਚ ਨਹੀਂ ਹੋਈ ਹੁੰਦਾ-ਫੁੰਦਾ ਤਾਂ ਫਿੱਟਾ-ਫਿੱਟਾ ਤਾਂ ਹੋ ਜੂ ਬੂੰਦੀ ਤਾਂ ਉੜ ਜੂ ਪਰ ਉਹ ਨਹੀਂ ਗੱਲ ਮਤਲਬ ਹਾਰ ਨਹੀਂ ਮੰਨ ਸਕਦਾ ਕਰੇਲੇ ਜਿਹੜੀ ਕੋਈ ਮਰਜ਼ੀ ਹੋ ਜਵੇ ਪਹਿਲਾਂ ਉਹਦੇ ਬਿਜ਼ਨਸ ਪੋਰਟਫੋਲੀਓ ਦੇ ਵਿੱਚ ਵੀ ਇਹੀ ਸਾਰਾ ਕੁਝ ਹੀ ਪਿਤਾ ਦੇ ਮਰਨ ਤੋਂ ਬਾਅਦ ਜੈੱਟ ਲੈ ਉਸ ਤੋਂ ਬਾਅਦ ਵੱਡੀ ਜਾਤ ਲੈ ਤੇ ਪੈਸਾ ਢੇਲਾ ਉਹਨੇ ਹਜ਼ਾਰਤਾ ਤੇ ਪੈਸੇ ਮੁੱਕ ਗਏ ਕਸੀਨੋ ਖੋਲਤੇ ਤੇ ਬਿਲਕੁਲ ਜ਼ੀਰੋ ਤੇ ਆ ਗਿਆ ਫਿਰ ਆਪਣੀ ਬ੍ਰਾਂਡਿੰਗ ਸ਼ੁਰੂ ਕੀਤੀ ਬ੍ਰਾਂਡਿੰਗ ਕਰਕੇ ਫਿਰ ਤਹਿ ਬਣਾ ਗਿਆ ਉਹ ਬਹੁਤ ਸਟਰੋਂਗ ਦਿਲ ਦਾ ਬੰਦਾ ਤੇ ਹੁਣ ਉਹ ਜਿਹੜੀਆਂ ਗੱਲਾਂ ਕਰ ਰਿਹਾ ਉਹਨੇ ਸਿੱਧਾ ਆਡਾ ਲਿਆ ਹੋਇਆ ਕਿਉਂਕਿ ਲੋਕ ਨਾਲ ਨੇ اپੋਜੀਸ਼ਨ ਵਾਲੀਆਂ ਪਾਰਟੀਆਂ ਦੇ ਵਿੱਚ ਲਿਬਰਲ ਤੋਂ ਐਂਡੀਪੀ ਨੇ ਤਾਂ ਇਹ ਕਰਨਾ ਨਹੀਂ ਕੰਸਰਵੇਟਿਵ ਦੇ ਵਿੱਚ ਪਹਿਲਾਂ ਵੀ ਐਂਟੀ ਇਮੀਗ੍ਰੇਸ਼ਨ ਦੀ ਜਿਹੜੀ ਗੱਲ ਚੱਲਦੀ ਰਹੀ ਤੇ ਕੈਨੀ ਦੇ ਉੱਪਰ ਇਹ ਗੱਲਾਂ ਚੱਲਦੀਆਂ ਰਹੀਆਂ ਡਾਕਟਰ ਲੀਚ ਨੇ ਇਹ ਇਨੀਸ਼ੀਏਟਿਵ ਲਿਆ ਉਹ ਕਹਿੰਦੀ ਵੀ ਇਹ ਜਿਹੜੀ ਕਨਿਨ ਵੈਲਿਊਜ਼ ਦੀ ਗੱਲ ਮੈਂ ਕਰ ਰਹੀ ਆ ਉਹ ਇਹ ਕਰ ਰਹੀ ਆ ਕਿ ਜਿਹੜਾ ਵੀ ਕੋਈ ਸਾਡੇ ਦੇਸ਼ ਚ ਆਵੇ ਲਈ ਸਾਡੇ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਉਹ ਫੇਸ ਟੂ ਫੇਸ ਇੰਟਰਵਿਊ ਲੈਣ ਅਜ ਦੇ ਯੁੱਗ ਦੇ ਵਿੱਚ ਇਸ ਤਰ੍ਹਾਂ ਨਹੀਂ ਬੰਦੇ ਆ ਸਕਦੇ ਵੀ ਉਹਨਾਂ ਨੂੰ ਬਿਨਾਂ ਵੇਖੇ ਤੁਸੀਂ ਵੀਜ਼ਾ ਦੇ ਦਿਓ। ਇਹ ਉਹਨਾਂ ਦੀ ਪੋਲ ਜਿਹੜੀ ਹੈ ਉਹਨਾਂ ਦੇ ਹੱਕ 'ਚ ਜਿਹੜੇ ਲੋਕ ਨੇ ਉਹ ਬਹੁਤ ਨੇ ਇਹਦਾ ਮਤਲਬ ਫਿਰ ਲੋਕ ਕੈਨੇਡੀਅਨ ਇਸ ਗੱਲਬਾਤ ਨੂੰ ਝੁਕ ਰਹੇ ਨੇ, ਲੀਨ ਹੋ ਰਹੇ। ਔਰ ਇਹ ਵੀ ਗੱਲ ਕਿੱਥੇ ਤੱਕ ਵਾਜਬ ਹੈ ਕਿ ਨਾਲ ਦੇ ਦੇਸ਼ ਨੇ ਜਦ ਬੰਦੇ ਧੱਕ ਤੇ ਲੀਗਲ ਇਮੀਗਰੈਂਟ ਫੜਨ ਲੱਗ ਗਏ ਤੇ ਲੋਕ ਸੜਕਾਂ ਟੱਪ ਕੇ ਐਮਰਸਨ ਦੇ ਉੱਪਰ ਕੋਈ ਸਿਕਿਉਰਿਟੀ ਪੋਸਟ ਨਹੀਂ ਤੇ ਲੋਕ ਸੜਕ ਟੱਪ ਕੇ ਨਾ ਉੱਥੇ ਕੰਡੇ ਦਾ ਤਾਰ ਨਾ ਕੋਸ਼ਾ ਤੇ ਉੱਥੇ ਟੱਪ ਕੇ ਅਗਲੇ ਕੰਦੇ ਸਿੱਧੇ ਰਾਸੀ ਸ਼ਰਨੀ ਜਿਹੜੀ ਹੈ ਉਹ ਅਰਜੀ ਤਾਂ ਸੌਖ ਬਹੁਤ ਹੋਗੀ ਸ ਇਦਾ ਮਤਲਬ ਜੇ ਹੁਣ 2 ਦਿਨਾਂ 'ਚ 22-24 ਆਏ ਨੇ ਗਾਂ-ਗਾ ਜਿਉਂ-ਜਿਉਂ ਜਿਵੇਂ ਜਿਸ ਤਰ੍ਹਾਂ ਨੈਸ਼ਨਲ ਗਾਰਡ ਦੀ ਗੱਲ ਕਰ ਰਿਹਾ ਜਿੰਨਾ ਉਧਰ ਤੇਜ਼ੀ ਹੋਊ ਲੋਕ ਫੇ ਇੱਧਰ ਨੂੰ ਆਉਣਗੇ ਇੱਧਰ ਨੂੰ ਆਉਣਗੇ 40 ਹਜ਼ਾਰ ਤਾਂ ਵੈਸੇ ਕੋਠੇ 'ਚ ਰੱਖੀ ਬੈਠੇ ਆ ਤੇ 25-30 ਹਜ਼ਾਰ 40 ਹਜ਼ਾਰ ਹੋਰ ਆਜੂ ਲੱਖ ਬੰਦੇ ਨੂੰ ਸੈਟਲ ਕਰਨਾ ਸੌਖ ਨਹੀਂ ਹੈ ਉਹਦੇ ਤੋਂ ਬਾਅਦ ਹੋਰ ਇਮੀਗ੍ਰੇਸ਼ਨ 10 ਹਜ਼ਾਰ ਬਜ਼ੁਰਗਾਂ ਨੇ ਆਉਣਾ ਚਲੋ ਮੀਨ ਇਮੀਗ੍ਰੇਸ਼ਨ ਦੇ ਸਿਸਟਮ ਦੇ ਵਿੱਚ ਤਾਂ ਉਹ ਆ ਕੇ ਸਿਸਟਮ ਦੇ ਵਿੱਚ ਆਉਣਗੇ ਕੰਮ ਕਰਨਗੇ ਤੇ ਟੈਕਸ ਪੇ ਕਰਨਗੇ ਇੱਧਰ ਸਾਰਾ ਕੁਝ ਇਹ ਕਰਨਾ ਪੈਣਾ ਸਾਰਾ ਕਾਸ਼ੀ ਸਿਖਾਉਣਾ ਪੈਣਾ ਉਹ ਇੱਕ ਬਹੁਤ ਵੱਡੀ ਬਹਿਸ ਦਾ ਮੁੱਦਾ ਅਗਲੀ ਗੱਲ ਜਿਹੜੀ ਮੈਂ ਕਰਾਂ ਬੀਸੀ ਦੇ ਵਿੱਚ ਵਿਕਟੋਰੀਆ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਬਹੁਤ ਹਵੇਲਾ ਪਾ ਤੇ ਸਰਕਾਰ ਨੇ ਗੱਲ ਨੂੰ ਬਜਟ ਪੇਸ਼ ਕਰਨਾ ਸ਼ਰਤ ਤੋਂ ਬਿਨਾ ਰਗ ਟ੍ਰੈਸਕਰ ਇੱਕ ਜੱਜ ਨੇ ਬਾ ਇਜ਼ਤ ਬਰੀ ਕਰ ਦਿੱਤਾ ਕਿਉਂਕਿ ਉਹਦੇ ਸੈੱਲ ਤੋਂ ਅਦਾਲਤ ਦੇ ਵਿੱਚ ਸੈੱਲ ਤੋਂ ਉਸ ਨੂੰ ਲਿਉਣ ਦੇ ਲਈ ਸ਼ਰਤ ਨਹੀਂ ਸੀ ਹੈ ਉਹ ਕਹਿੰਦਾ ਬਿਨਾਂ ਸ਼ਰਤ ਤੋਂ ਮੈਂ ਇੱਥੇ ਬੰਦਾ ਨਹੀਂ ਆਉਣ ਦੇਣਾ ਤੇ ਡਿਫੈਂਸ ਤਿਆਰ ਸੀ ਕ੍ਰਾਉਨ ਤਿਆਰ ਸੀ ਤਾਂ ਜੱਜ ਕਹਿੰਦਾ ਨੋ ਬਿਨਾਂ ਸ਼ਰਤ ਤੋਂ ਇਹ ਬੰਦਾ ਨਹੀਂ ਆ ਸਕਦਾ ਰਿਚਰਡ ਡੀ ਅਲੇਜੈਂਡਰੋ ਜਿਹੜਾ ਕੋਖੀਨ ਦੇ ਟ੍ਰੈਸਟਿੰਗ ਦੇ ਵਿੱਚ ਜਿਸ ਤੇ ਦੋਸ਼ ਸੀ ਬਾਇਜ਼ਤ ਬਰੀ ਜਸਟਿਸ ਰੌਬਰਟ ਜੌਨਸਟਨ ਨੇ ਕਿਹਾ ਕਿ ਇਹ ਗੱਲ ਨਹੀਂ ਹੋ ਸਕਦੀ ਸੋ ਡਿਸੀਜ਼ ਸ਼ੈਰ ਨੂੰ ਕੌਣ ਕੰਟਰੋਲ ਕਰਦਾ ਸਰਕਾਰ ਸਰਕਾਰ ਦੇ ਕੋਲ ਇੰਨੀ ਫੰਡਿੰਗ ਨਹੀਂ ਹੈ ਕਿ ਉਹਦੇ ਕੋਈ ਸ਼ੈਰਫ ਨੇ ਜਿਹੜੇ ਉਹ ਅਦਾਲਤ ਚ ਦਿੱਤੇ ਜਾਣ ਤੇ ਅਦਾਲਤ ਦੇ ਵਿੱਚ ਇੱਕ ਦੋਸ਼ੀ ਆ ਜਿਹੜਾ ਉਹਨੂੰ ਉਹਦੇ ਸੈਨ ਲੈ ਕੇ ਅਦਾਲਤ ਦੇ ਕਮਰੇ ਤੱਕ ਲਿਉਣ ਲਈ ਬੰਦੇ ਹੈ ਨਹੀਂ ਸੀ ਤਾਂ ਉਹਦੇ ਕਰਕੇ ਜੱਜ ਨੇ ਉਹਨੂੰ ਬਾਇਜ਼ਤ ਬਰੀ ਕੀਤਾ ਜੱਜ ਕਹਿੰਦਾ ਇਹ ਟੋਟਲੀ ਆ ਆ ਅਸੀਂ ਇਸ ਲਈ ਪ੍ਰਪੇਅਰ ਨਹੀਂ ਕਿਉਂਕਿ ਅਸੀਂ ਇਹਦੀ ਟ੍ਰਾਇਲ ਕੀਤੀ ਜਾਵੇ ਉਹਦੀ ਬਿਨਾ ਐਬਸੈਂਸ ਦੇ ਵਿੱਚ ਨਾ ਟ੍ਰਾਇਲ ਨਹੀਂ ਕਰਨਾ ਚਾਹੁੰਦਾ ਉਹਨੂੰ ਇੱਥੇ ਲਿਉਣ ਲਈ ਸ਼ਹਿਰਫ ਹੈ ਨਹੀਂ ਸ਼ਹਿਰਫ ਤੋਂ ਬਿਨਾ ਇਹ ਗੱਲ ਨਹੀਂ ਚੱਲ ਸਕਦੀ ਬਾਇਜ਼ਤ ਬਰੀ ਇਸ ਬੰਦੇ ਕੋਲੋਂ ਉਹ ਕੇਨ ਜਿਹੜੀ ਫੜੀ ਗਈ ਜਿਹੜੀ ਮੈਂ ਅੱਗੇ ਲਜਾਣੀ ਸੀ ਤੇ ਉਹ ਬੰਦਾ ਦੇਖੋ ਵਕੀਲ ਦੋਨੇ ਧਿਰ ਕਰੋਨ ਦੇ ਵਕੀਲ ਡਿਫੈਂਸ ਦੇ ਵਕੀਲ ਜੱਜ ਬੈਠਾ ਗੱਦੀ ਤੇ ਬੰਦਾ ਨਹੀਂ ਆ ਸਕਿਆ ਕਿਉਂਕਿ ਸ਼ਰਫਾ ਨਹੀਂ ਸੀ ਉਹਨੂੰ ਲਿਓ ਉਸ ਬਿਲਡਿੰਗ ਜਿੱਥੇ ਕੋਰਟ ਹੈ ਉੱਥੇ ਇੱਕ ਵਾਰ ਨਹੀਂ ਬਹੁਤ ਵਾਰ ਇਹ ਗੱਲਾਂ ਹੋਈਆਂ ਤੇ ਇਸ ਦਾ ਕਾਰਨ ਸਿਰਫ ਇਹੀ ਹੈ ਗਵਰਨਮੈਂਟ ਇਸ ਦੇ ਲਈ ਕੰਮ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਇਹ ਤਾਂ ਨਹੀਂ ਮੈਨੂੰ ਪਤਾ ਪਰ ਇਹ ਗੱਲ ਜ਼ਰੂਰ ਹੋਈ ਹੈ ਕਿ ਇੱਕ ਬੰਦਾ ਜਿਹੜਾ ਉਹ ਛੱਡਿਆ ਜੱਜ ਜਿਸ ਦੀ ਕੁਆਟਰ ਮਿਲੀਅਨ ਦੇ ਕਰੀਬ ਜਿਹੜੀ ਤਨਖਾਹ ਹੈ ਤਿੰਨ ਦਿਨ ਵਿਕਟੋਰੀਆ ਦੇ ਵਿੱਚ ਸ਼ਰਫ ਨਾ ਹੋਣ ਕਰਕੇ ਆਪਣੀ ਟ੍ਰਾਇਲ ਨਹੀਂ ਕਰ ਸਕਿਆ ਉਹ ਇਹ ਇੱਕ ਮੁੱਦਾ ਹੈ ਹੁਣ ਇੱਥੇ ਸਰਕਾਰ ਫੇਲ ਹੋਈ ਹੈ ਓਬਵੀਅਸਲੀ ਬਹੁਤ ਵੱਡੀ ਗੱਲ ਹੈ ਤੇ ਜੇ ਤੁਸੀਂ ਇਸ ਨੂੰ ਖੋਲ ਕੇ ਵੇਖੋਗੇ ਖਬਰ ਨੂੰ ਇਹਦੇ ਵਿੱਚ ਸੈਲਰੀਜ਼ ਦੇ ਨਾਲ ਬ੍ਰੇਕ ਕਰਕੇ ਖਰਚਿਆਂ ਦੀ ਗੱਲ ਉਹਨਾਂ ਨੇ ਕੀਤੀ ਹੋਈ ਹੈ ਇਹ ਮੈਨੂੰ ਇਉਂ ਲੱਗਦਾ ਵੀ ਜੱਟ ਗੰਨਾ ਨਹੀਂ ਦਿੰਦਾ ਭੇਲੀ ਦਿੰਦਾ ਇਉਂ ਲੱਗਿਆ ਹੋਇਆ ਵੀ ਇਹਦੇ ਵਿੱਚ ਅੱਜ ਤੇ ਸਰਕਾਰੀ ਵਕੀਲ ਉਹਦੇ ਬਾਰੇ ਇਨਫਰਾਸਟ੍ਰਕਚਰ ਕੀ ਕੀ ਕੁੱਸ਼ਾ ਹੈ ਇਹਦੇ ਵਿੱਚ ਤੋ ਇਹ ਹੁਣ ਜੱਜਸ ਨੇ ਜਿਹੜੇ ਉਹ ਜਸਟਿਸ ਹੈ ਜਿਹੜਾ ਉਹ ਬਰਾਬਰ ਜੇ ਤੁਸੀਂ ਵੀ ਇੱਥੇ ਹੁੰਨੇ ਹੋ ਤੁਸੀਂ ਕਿਸੇ ਡਿਸਪਿਊਟ ਕਰਦੇ ਹੋ ਕੋਈ ਟਿਕਟ ਉਥੇ ਜੇ ਪੁਲਿਸ ਕਨਸਟੇਬਲ ਜਿਹੜਾ ਜਿਸ ਟਿਕਟ ਲਿਖੀ ਹੋ ਨਹੀਂ ਹੁੰਦਾ ਤੁਹਾਨੂੰ ਬਾਇਜਤਬਰੀ ਕਰਦਾ ਉਹ ਇਹਦੇ ਕਰਕੇ ਹੀ ਇਹ ਦੇਸ਼ ਮਹਾਨ ਨੇ ਹੋਏ ਖਬਰ ਕੱਲ ਦੀ ਬਹੁਤ ਘੁੰਮ ਰਹੀ ਹੈ ਕਿ ਸ਼ਰਫ ਤੋਂ ਬਿਨਾ ਇੱਕ ਅਪਰਾਧੀ ਬਾ ਇੱਜ਼ਤ ਬਰੀ ਹੋ ਗਿਆ ਵਪਾਰਕ ਸੰਦੇਸ਼ ਇਸ ਦੇ ਵਿੱਚ ਖਬਰ ਦੇ ਵਿੱਚ ਦੇਖਿਆ ਕਿ ਸ਼ਰਫ ਨੂੰ 55000 ਪਿਆਰ ਦਿੰਦੇ ਆ ਪ੍ਰੋਵਿੰਸ਼ਲ ਜੱਜ 2 ਲੱਖ ਲੈਂਦਾ ਹੈ 56000 ਦੇ ਖਾਤਰ ਜੱਜ ਜਿਹੜਾ 2.5 ਲੱਖ ਕਮਾਉਣ ਵਾਲਾ ਉਹ ਬਹਿਲਾ ਬੈਠਾ ਬੁੱਧਵਾਰ ਨੂੰ ਦੋ ਅਦਾਲਤਾਂ ਬੰਦ ਕਰਨੀਆਂ ਪਈਆਂ ਨੈਕਸਟ ਬੈਚ ਜਿਹੜਾ ਜਸਟਿਸ ਇੰਸਟੀਚਿਊਟ ਜੂਨ ਦੇ ਵਿੱਚ ਨਿਕਲ ਰਿਹਾ ਹੈ ਦੀ ਸ਼ਾਰਟੇਜ ਹੈ ਸਾਨੂੰ ਤਾਂ ਕਦੇ ਨਹੀਂ ਕਿਸੇ ਨੇ ਦੱਸਿਆ ਸ਼ਰਫਾਂ ਦੀ ਘਾਟ ਹੈ ਬਹੁਤ ਭਾਈਚਾਰੇ ਦੇ ਵਿੱਚ ਸਾਹੀ ਮੁੰਡੇ ਐ ਹੁਣ RCMP ਦੇ ਵਿੱਚ 1100 ਦੀ ਭਰਤੀ ਹੋਣੀ ਐ ਕੋਸ਼ਿਸ਼ ਕਰੋ ਜੇ RCMP ਵੱਲ ਮੰਨ ਐ ਤੇ ਤੁਸੀਂ ਹੁਣ ਬਹੁਤ ਸੌਖਾ ਐ ਸਿਟੀਜ਼ਨ ਵੀ ਨਹੀਂ ਤੁਸੀਂ ਹੋਣੇ ਚਾਹੀਦੇ ਤੁਸੀਂ ਇਮੀਗ੍ਰੈਂਟ ਦੇ ਤੌਰ ਤੇ ਵੀ ਅਪਲਾਈ ਕਰ ਸਕਦੇ ਹੋ ਬਹੁਤ ਵੱਡੀ ਭਰਤੀ RCMP ਚ ਹੋਣ ਜਾ ਰਹੀ ਐ ਰਿਕਾਇਰਮੈਂਟ ਬਹੁਤ ਹੋ ਰਹੀ ਐ ਪਰ ਵੀ ਲੋਕਲ ਨੌਜਵਾਨ ਮੁੰਡੇ ਐ ਜਿਹੜੇ ਮ्युनਿਸਪਲ ਪੁਲਿਸ ਨੂੰ ਤਰਜੀਹ ਦਿੰਦੇ ਹੈ ਬਸਪੋਰਟ ਪੁਲਿਸ ਵੈਨਕੂਵਰ ਵੈਸਟਮਿਸਟਰ ਪੋਰਟ ਮੂਡੀ ਤੇ ਖਾਹਾਂ ਨੇ ਵੱਧ ਨੇ RCMP ਦੇ ਕਾਂਸਟੇਬਲ ਨੂੰ ਲੱਖ ਤੋਂ ਥੱਲੇ ਮਿਲਦਾ ਉਸ ਨੂੰ ਲੱਖ ਤੋਂ ਉੱਪਰ ਮਿਲਦਾ ਬੜੇ ਚੱਕਰ ਨੇ ਪਰ ਐਨੀਵੇਜ਼ ਸ਼ਰਫ ਹੈ ਜਿਹੜਾ ਵਿਕਟੋਰੀਆ ਦਾ ਵਕੀਲ ਇੱਕ ਟੌਮ ਮਰੀਨੋ ਹੈ ਉਹ ਕਹਿੰਦਾ ਵੀ ਸਾਡੀ ਮੇਰਾ ਟ੍ਰਾਇਲ ਜਿਹੜੇ ਦੋ ਕ੍ਰਿਮੀਨਲ ਟ੍ਰਾਇਲ ਨੇ ਜਿਹੜੇ ਅਡਜਰਨ ਹੋਏ ਨੇ 30 ਸਾਲਾਂ ਚ ਮੈਂ ਕਦੇ ਇਹ ਜਾਨੀ ਦੇਖਿਆ ਸ਼ੁਕਰ ਹੈ ਕਿ ਮੇਰਾ ਜਿਹੜਾ ਕਲਾਇੰਟ ਹੈ ਉਹ ਜੇਲ੍ਹ ਦੇ ਵਿੱਚ ਨਹੀਂ ਹੈ। ਵਿਕਟੋਰੀਆ ਦੇ ਵਿੱਚ ਤੇ ਜਾਂ ਲੋਕਲ ਲੋਰਮੈਨ ਲੈਣ 56000 ਨਾਲ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਤੇ ਲੋਕ ਜਿਹੜੇ ਨੇ ਉਹ ਘਟ ਗਏ। RCMP ਦੇ ਕਨਸਟੇਬਲ ਦੀ ਲੱਗਦੀਆਂ ਤਨਖਾਹ 50000 ਹੈ। 3 ਸਾਲਾਂ ਦੇ ਵਿੱਚ 82000 ਹੋ ਜਾਂਦੀ ਵਿਕਟੋਰੀਆ ਪੁਲਿਸ ਦੇ ਵਿੱਚ ਲੱਗਦਾ ਹੀ ਪ੍ਰਵੇਸ਼ਨ ਦੇ ਉੱਪਰ ਕਨਸਟੇਬਲ ਹਜਾਰ 5 ਸਾਲਾਂ ਬਾਅਦ 92000 ਰਾਜੇਡ ਪੁਲਿਸ ਦਾ ਜਿਹੜਾ ਰਿਕਰੂਟ ਹੈ ਉਹ 65000 ਲੈਂਦਾ 10 ਸਾਲ ਦਾ ਤਜਰਬੇ ਵਾਲਾ 94000 ਮਿਲਦਾ 20 20 ਸਾਲ ਚ ਰਾਜੇਡ ਪੁਲਿਸ ਅਫੀਸਰ 1 ਲੱਖ ਡਾਲਰ ਬਣਾਉਂਦਾ ਔਰ ਰਾਜੇਡ ਪੁਲਿਸ ਨੂੰ ਭੋਰਾ ਵੀ ਡਰ ਨਹੀਂ ਕੱਖ ਨਹੀਂ ਕਰਨਾ ਨਾ ਗਸ਼ਟ ਕਰਨੀ ਹੈ ਨਾ ਕਿਤੇ ਮੌਤ ਦਾ ਕੋਈ ਡਰ ਹੈ ਸੋ ਇਹੋ ਜਿਹਾ ਕੁਛ ਹੈ ਫੁਰਜ਼ ਹੋਣੇ ਵਾਲਾ ਸਰਜੀਤ ਕੌਰ ਜੀ ਲਾਈਨ ਨੰਬਰ 3 ਹੈਲੋ ਭਾਜੀ ਮੈਂ ਤੁਹਾਡੇ ਨਾਲ ਆਫ ਦਾ ਹੈਰ ਗੱਲ ਕਰਨੀ ਸੀਗੀ। ਥੋੜ੍ਹਾੰ ਤੋਂ ਬਾਅਦ ਕਰ ਲਿਓ ਜੀ। ਮੈਨੂੰ ਤੁਹਾਡਾ ਸੈੱਲ ਹੈਗਾ। ਮੈਂ ਲਿਖੋ ਜੀ 604 ਇੱਕ ਮਿੰਟ। ਹਾਂਜੀ। 7291224 72912 24 24 ਰਿਕਸ ਥੈਂਕ ਯੂ। ਠੋਕੇ ਭੈਣ ਜੀ ਥੈਂਕ ਯੂ। ਕਾਨੂੰ ਬਜਟ ਦਾ ਦੇਣਾ ਇਸ ਬਜਟ ਦੇ ਵਿੱਚ ਹੁਣ 3 ਮਹੀਨੇ ਨੂੰ ਇਲੈਕਸ਼ਨਾਂ ਦੇ ਸਬੰਧੀ ਬਹੁਤ ਕੁਝ ਦੇਖਣ ਨੂੰ ਮਿਲੂ ਅੱਜ ਗੱਲਾਂ ਚੱਲ ਰਹੀਆਂ ਅਸੀਂ ਮੇਨਸਟ੍ਰੀਮ ਤੇ ਵੀ ਹੋ ਸਕਦਾ ਅੱਧਾ ਪੁਆਇੰਟ ਪ੍ਰੋਵਿੰਸ਼ੀਅਲ ਟੈਕਸ ਘਟ ਜੇ ਐਮਐਸਪੀ ਘਟ ਜੇ ਕੁਝ ਨਾ ਕੁਝ ਹੋਊਗਾ ਅੱਧਾ ਪਰਸੈਂਟ ਘਟ ਗਿਆ ਤਾਂ ਲੋਕਾਂ ਨੇ ਲੱਗਣਾ ਹੈ ਖਾਸਾ ਫਾਇਦਾ ਹੋ ਗਿਆ ਪਰ ਪੈਸੇ ਤੁਹਾਡੇ ਹੀ ਨੇ ਜਦੋਂ ਕੱਟੇ ਦਾ ਬਜਟ ਹੋਊ ਫਿਰ ਫੇਰ ਲੈ ਲੈਣਗੇ ਤੁਹਾਤੋਂ ਸਥਾਈ ਹੱਲ ਇਹ ਨਹੀਂ ਹੈ ਪਰ ਦੂਜੇ ਬੰਨੇ ਐਨਡੀਪੀ ਜਿਹਦੇ ਇਤਿਹਾਸ ਹੈ ਉਹਦੇ ਵਿੱਚ ਵੀ ਇਨਸਾਨੀਅਤ ਦੀਆਂ ਜਿਹੜੀਆਂ ਅੜਾਈਆਂ ਜਾ ਰਹੀਆਂ ਹਨ ਟਿੰਬਰ ਗ੍ਰੀਨ ਟਿੰਬਰ ਦੇ ਵਿੱਚ ਨਾਮੀਨੇਸ਼ਨ ਸੁਹੈਮਲ ਨੇ ਆਪਣੇ ਬਹੁਤ ਕਲੋਜ਼ ਜਿਹੜੇ ਜਿਹੜੇ ਉਹਦੇ ਨਾਲ ਰਹਿਣ ਵਾਲੇ ਰਚਨਾ ਸਿੰਘ ਨੂੰ ਡੈਲਟਾ 'ਚ ਰਹਿਣ ਵਾਲੇ ਨੂੰ ਧੱਕੇ ਦੇ ਨਾਲ ਉਹਨਾਂ ਨੇ ਉਸ ਨੂੰ ਉਹਦੀ ਬਰੋਤਾ ਬਹੁਤ ਹੋਈ ਨਾਮਿਨੇਟ ਕਰਵਾਇਆ ਔਰ ਬਹੁਤ ਖਿਆਲ ਨਾਲ ਜਗਜੀਤ ਸਿੰਘ ਉਹਨਾਂ ਨੂੰ ਸਿੱਖ ਚਿਹਰੇ ਨੂੰ ਲਿਆ ਕੇ ਬ੍ਰੈਂਟਨ ਤੋਂ ਉਹਨਾਂ ਤੋਂ ਉਹ ਕਰਵਾਇਆ ਉਹਨਾਂ ਤੋਂ ਅਨਾਉਂਸ ਕਰਾਇਆ ਇਸਤਰੀਆਂ ਤੇ ਮਰਦ ਕਿ ਮੈਨੂੰ ਬਣਨਾ ਸਾਰਿਆਂ ਨੂੰ ਹੀ ਮੁੰਡੇ ਦਿੰਦੀ ਰਹੀ ਵੀ ਤੈਨੂੰ ਐਮਐਲਏ ਮੈਂ ਅਗਲਾ ਬਣਾਉਣਾ ਤੈਨੂੰ ਐਮਐਲਏ ਬਣਾਉਣਾ ਇਉਂ ਹੁੰਦਾ ਸੋ ਇਹ ਜਦ ਅਹਿਜਾ ਕੁਸ਼ ਹੁੰਦਾ ਹੈ ਫਿਰ ਐਨਡੀਪੀ ਵੱਲ ਵੀ ਲੋਕ ਅੱਖਾਂ ਫੇਰਦੇ ਆ ਵੀ ਯਾਰ ਤੁਸੀਂ ਕਹਿੰਦੇ ਹੋ ਅਸੀਂ ਧਰਮ ਹੱਕ ਤੇ ਖੜਨ ਵਾਲੇ ਬੰਦੇ ਆ ਸੌਰੀ ਧਰਮ ਦੀ ਗੱਲ ਕਹਿ ਤੀ ਹੱਕ ਤੇ ਖੜਨ ਵਾਲੇ ਬੰਦੇ ਤੁਸੀਂ ਤਾਂ ਖੜਦਾ ਹੀ ਕਿਸੇ ਗੱਲ ਇਹ ਤਾਂ ਨਹੀਂ ਉੜੀਆਂ ਦੂਜੇ ਬੰਨੇ ਲਿਬਰਲ ਨੂੰ ਕਹਿੰਦੇ ਉਹ ਤਾਂ ਅਮੀਰਾਂ ਦੀ ਪਾਰਟੀ ਹੋ ਗਈ ਉਹ ਪੈਰਾਸ਼ੂਟ ਕਰਦੇ ਆ ਜਿੰਨੂੰ ਮਰਜ਼ੀ ਕਰਨ ਪਰ ਤੁਸੀਂ ਵੀ ਇਹ ਹਜੇ ਕੁਛ ਕੀਤਾ ਹੋਰਗਨ ਤੱਕ ਇਹ ਗੱਲ ਗਈ ਸਾਰੇ ਬੰਦੇ ਦੇ ਚ ਇਨਵੋਲਵ ਹੋਏ ਤੇ ਫੇਰ ਹੁਣ ਇਹ ਲੀਡਰ ਨੂੰ ਤਫਸ਼ੀਸ ਗਲਤੀ ਸਹਿਣੀ ਪਊ ਅੱਗੇ ਵੀ ਮੈਂ ਕਿਹਾ ਸੀ ਵੀ ਐਨਡੀਪੀ ਦੀਆਂ ਸਾਰੀਆਂ ਸੀਟਾਂ ਤੇ ਸੜੀ ਦੇ ਵਿੱਚ ਇਸ ਦੀ ਮੁਟਲਾਊਗੀ ਉਹ ਤੁਹਾਡੇ ਸਾਹਮਣੇ ਆ ਵੇਖ ਲਿਓ ਇਹ ਇਸ ਤਰ੍ਹਾਂ ਤੁਸੀਂ ਖੇਸੀ ਦੇ ਵਿੱਚ ਮੂੰਹ ਕਰਕੇ ਗੱਲਾਂ ਕਰਨੀਆਂ ਲਲਕੜਾ ਮਾਰਨਾ ਇਹ ਗੱਲਾਂ ਠੀਕ ਨਹੀਂ ਦੋ ਨੋਮੀਨੇਸ਼ਨ ਦਾ ਜੇ ਤੁਸੀਂ ਲਿਬਰਲਸ ਕਰਦੇ ਹੋ ਉਹਨਾਂ ਨੂੰ ਤੁਸੀਂ ਨੰਗੇ ਧੜਕੜ ਖਿੱਚਦੇ ਹੋ ਕਿ ਤੁਹਾਡੀ ਅਮੀਰਾਂ ਦੀ ਪਾਰਟੀ ਜੇ ਤੁਹਾਡੀ ਅਨਸ਼ਾਸਨ ਵਾਲਿਆ ਵੀ ਪਾਰਟੀ ਆ ਤੁਸੀਂ ਨੋਮੀਨੇਸ਼ਨ ਕਿਉਂ ਨਾ ਕਰਾਈ ਵੇ ਗ੍ਰੀਨ ਚ ਸੋਰ ਸ਼ਾਟ ਹੈ ਉੱਥੇ ਦਾ ਗ੍ਰੀਨ ਟਿੰਬਰ ਦੇ ਵਿੱਚ ਐਨਡੀਪੀਆਰ ਦੀ ਬਹੁਤ ਵੱਡੀ ਗਿਣਤੀ ਹੈ ਉੱਥੋਂ ਬੰਦਿਆਂ ਨੂੰ ਚੰਦੇ ਜਿਹੜੇ ਪੁਰਾਣੇ ਮੈਂਬਰ ਸੀ ਸੂਹ ਹੈ ਮਿਲਦੇ ਉਹਨਾਂ ਨੂੰ ਦਿੰਦੇ ਚਾਂਸ ਉਹਨਾਂ ਚੋਂ ਕੋਈ ਜਿੱਤ ਜਾਂਦਾ ਨੋਮੀਨੇਸ਼ਨ ਕਰਾਉਂਦੇ ਨਾ ਡੈਲਟਾ ਤੋਂ ਕਿਸੇ ਨੂੰ ਤੁਸੀਂ ਆਪਣੇ ਚਹੇਤੇ ਨੂੰ ਚੁੱਕਦੇ ਹੋ ਯੂਨੀਅਨ ਦੇ ਵਿੱਚ ਰਜਨਾ ਸਿੰਘ ਕੰਮ ਕਰਦੇ ਨੇ ਹੈਰੀ ਬੈਂਸ ਉਹਨਾਂ ਨੇ ਵੀ ਇਸ ਦੇ ਵਿੱਚ ਮਦਦ ਕੀਤੀ ਆ ਪੂਰੀ ਇਹ ਵੀ ਗੱਲ ਬਾਹਰ ਨਿਕਲ ਰਹੀ ਹੈ ਗੱਲਾਂ ਜਿਹੜੀਆਂ ਇਹ ਠੀਕ ਨਹੀਂ ਹੈ ਜੇ ਤੁਸੀਂ ਕਿਸੇ ਨੂੰ ਭੰਡਦੇ ਆ ਉੱਥੇ ਆ ਹੁੰਦਾ ਉੱਥੇ ਆ ਹੁੰਦਾ ਆਪੋਜੀਸ਼ਨ 'ਚ ਬੈਠ ਕੇ ਤੁਸੀਂ ਧੱਕਾ ਕਰਦੇ ਹੋ ਤੁਹਾਡੇ ਚ ਅਨਸਾਸ਼ਨ ਲਿਬਰਲ ਵਾਲੇ ਉਹ ਕੋਈ ਨਹੀਂ ਤੁਸੀਂ ਮਰਦੀਆਂ ਕਰਦੇ ਹੋ ਪੈਸੇ ਵਾਲਿਆਂ ਦੀ ਦਾ ਪਲੇਟ ਵੇਖਦੀ ਆ 10000 ਦੀ ਬੇੜਕਦੀ ਆ ਤੁਸੀਂ ਵੀ ਇਹ ਕਰਦੇ ਹੋ ਕੋਈ ਨਹੀਂ ਹੈ ਫਿਰ ਹੁਣ ਬੀਸੀ ਦੇ ਲੋਕ ਲੈਸਰੀਵਲ ਚੁਣਨਗੇ ਇਹੀ ਦੇਖੀ ਜਾਊ ਫਿਰ ਹੋਰ ਤਾਂ ਕੋਈ ਫਰਕ ਹੈ ਹੀ ਇਹ ਖਲਤ ਦੀ ਆਵਾਜ਼ ਵੀ ਤੁਸੀਂ ਸੁਣਦੇ ਇਹ ਗੱਲਾਂ ਦਾ ਰੌਲਾ ਜੱਪਿਆ ਤੁਸੀਂ ਸੁਣਦੇ ਨਹੀਂ ਐਡੀ ਜਗ੍ਹਾ ਤੇ ਜਾ ਕੇ ਤੁਸੀਂ ਕਿਹ ਨਾਲ ਆਪਣੀ ਮਰਜ਼ੀ ਨਾਲ ਚੁਣਦੇ ਆਂ ਔਰ ਉਹ ਐਮਐਲਏ ਨੂੰ ਤੁਸੀਂ ਅਕਾਊਂਟੇਬਲ ਨਹੀਂ ਕਰਦੇ ਜਿਹੜੀ ਐਮਐਲਏ ਇਹ ਨਹੀਂ ਦੱਸ ਰਹੀ ਕਿ ਉਹਨੇ ਸਟੈਪ ਡਾਊਨ ਹੋਣਾ ਔਰ ਬਿਲਕੁਲ ਟਾਈਮ ਤੇ ਜਾ ਕੇ ਉਹ ਸਟੈਪ ਡਾਊਨ ਹੁੰਦੀ ਹੈ ਇਹਦੇ ਵਿੱਚੋਂ ਕੀ ਨਿਕਲਦਾ ਫਿਰ ਇਹਦਾ ਮਤਲਬ ਉਹੀ ਗੱਲ ਹੋ ਗਈ ਨਾ ਵੀ ਜਿਹਦੀ ਤੁਸੀਂ ਮਦਦ ਕਰਨੀ ਹੈ ਮੇਰਾ ਜਾਨਸ਼ੀਨ ਕੌਣ ਹੋਊ ਫੇ ਬਾਦਲਾ ਨੂੰ ਕਾਹਨੂੰ ਪਿੱਟਦੇ ਆਂ ਆਪਾਂ ਉਹਨਾਂ ਦਾ ਹਾਂ ਸੁਖਬੀਰ ਬਾਦਲਾ ਸੁਖਬੀਰ ਗਾਹਾਂ ਪੁੱਤ ਬਣਾ ਦੂ ਜਿੱਦਣ ਉਦੋਂ ਨੂੰ ਝਾਕਦੇ ਆਂ ਉਦੋਂ ਬੜਾ ਕੁਝ ਹੁੰਦਾ ਪਰ ਸਾਡੀ ਨੱਕ ਥੱਲੇ ਕੀ ਕੁਝ ਹੋ ਰਿਹਾ ਉਹਨੂੰ ਨਹੀਂ ਅਸੀਂ ਵੇਖਦੇ ਕਦੀ ਖੁੱਲਾ ਚਾਂਸ ਕਿਉਂ ਨਾ ਮਿਲਿਆ ਕਿਸੇ ਨੂੰ ਕਿਉਂ ਅੰਦਰਖੰਤ ਦੇ ਜਿਹੜੀਆਂ ਪਹਿਲਾਂ ਮੈਂਬਰਸ਼ਿਪ ਬਣਨੀਆਂ ਸ਼ੁਰੂ ਕੀਤੀਆਂ ਤੇ ਆਪ ਬਿਲਕੁਲ ਮੌਕੇ ਤੇ ਜਾ ਕੇ ਜਨਵਰੀ ਦੇ ਵਿੱਚ ਸਟੈਪ ਡਾਊਨ ਹੋਈ ਹੈ ਸੁਹ ਹੈਮਲ ਕੇ ਮਹੀਨੇ ਆ ਜਿਹੜੇ ਉਹ ਅਪ੍ਰੈਲ ਚ ਹੁੰਦੇ ਨੇ ਅਪ੍ਰੈਲ ਚ ਨੋਮੀਨੇਸ਼ਨ ਜੇ ਹੁੰਦੀ ਆ ਤਾਂ ਮਈ ਦੀ ਇਲੈਕਸ਼ਨ ਨੂੰ ਸਮਾਂ ਘੱਟ ਆ ਲਓ ਜੀ ਖਤਮ ਕਹਾਣੀ ਮੈਂ ਆਪਣੇ ਵੱਲੋਂ ਰਚਨਾ ਸਿੰਘ ਦਾ ਨਾਮ ਕਰਦੀ ਹਾਂ ਪੇਸ਼ ਤੇ ਉਹਨੂੰ ਪੁੱਛਿਆ ਵੀ ਤੇ ਵੀ ਗੱਲ ਹੈ ਸੀ ਅੰਦਰ ਕਹਿੰਦੇ ਨਾ ਮੈਨੂੰ ਤਾਂ ਇਹ ਗੱਲ ਦਾ ਪਤਾ ਨਹੀਂ ਹੋਰ ਕੀ ਗੱਲ ਸੀ ਫਿਰ ਔਰ ਕਿਨੇ ਕਰਤਾ ਖੜਾ ਆ ਕੇ ਬਣਾ ਤਿਆ ਰਚਨਾ ਸਿੰਘ ਓ ਇਹੋ ਜਿਹੇ ਜਿਹੜੇ ਦੋਸ਼ ਨੇ ਪੋਲਿਟਿਕਲ ਪਾਰਟੀਆਂ ਸਾਰੀਆਂ ਹਮਾਮ ਚ ਕੋਜੀਆਂ ਔਰ ਇਸ ਔਰ ਇਸ ਦੇ ਲਈ ਲਿਬਰਲ ਦੇ ਹੱਕ ਦੇ ਵਿੱਚ ਗ੍ਰੀਨ ਟੈਂਬਰ ਦੇ ਵਿੱਚੋਂ ਲੋਕ ਭੁਗਤ ਰਹੇ ਨੇ ਇਸ ਵਾਰ ਐਨਡੀਪੀਰ ਗੁੱਸੇ ਹੋ ਰਹੇ ਔਰ ਤੁਸੀਂ ਦੇਖਿਓ ਇਹ ਗੱਲ ਜਿਹੜੀ ਕਹਿ ਰਹੇ ਹੋ ਨਾ ਵੀ ਪੱਕੀ ਸੀਟ ਹੈ ਐਨਡੀਪੀ ਦੀ ਗ੍ਰੀਨ ਟੈਂਬਰ ਇਹ ਵਕਤ ਆਉਣ ਤੇ ਹੁਣ ਪਤਾ ਲੱਗੋ ਵਿਪਾਰ ਖੰਦੇਸ਼ अगले हिस्से ਦੇ ਵਿੱਚ ਦੋ ਛਾਂਤੇ ਮੈਂ ਕਰਨੀ ਹੈ ਜੀ ਇੱਕ ਤਾਂ ਮਾਂ ਬੋਲੀ ਦਿਵਸ ਹੈ ਪੰਜਾਬੀ ਦੇ ਬਾਰੇ ਤੇ ਇੱਕ ਨਾਲ ਹੀ ਪੰਜਾਬ जाट ਅੰਦੋਲਨ ਸਿਖਰਾਂ ਤੇ ਹੈ ਤੇ ਉਧਰੋਂ ਚਟਾਲਿਆਂ ਨੇ लाल ਲਾਲ ਦੇ ਉੱਤੇ ने, ਚਟਾਲੇ कहता भी ਕਹਿਤਾ नहर ਅਸੀਂ ਨਹਿਰ ਪਟਣੀ ਆ ਪਟਣੀ ਹਰਿਆਣੇ ਵਾਲੇ ਪਾਸੇ ਆ ਤੇ ਜਿਹੜਾ 50 ਸਾਲ ਹੋ ਕੇ ਵੀ ਹਲੇ ਫੈਡਰੇਸ਼ਨ ਵਾਲਾ ਬੰਦਾ ਹੈ ਪੀਰ ਮੁਹੰਮਦ ਇਹ ਪਹਿਲਾਂ ਕਦੇ ਇਹ ਅਸੀਂ 84 ਦੇ ਮਾਰਚ ਕਰਾਂਗੇ ਜੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਹੁਣ ਉਹ ਕਹਿੰਦਾ ਵੀ ਮੈਂ ਨਹਿਰ ਨਹੀਂ ਅਸੀਂ ਪੱਟਣ ਦੇ ਪਹਿਲੇ ਹਿੱਸੇ ਦੇ ਵਿੱਚ ਮਬੋਲੀ ਦੀ ਗੱਲਬਾਤ ਕਰਨ ਚਾਹੁੰਦਾ ਮਾਂ ਬੋਲੀ ਦੇਸ ਬਹੁਤ ਵਧੀਆ ਸਾਡੀ ਅਮੀਰ ਸਾਡਾ ਵਿਰਸਾ ਤੇ ਅਮੀਰ ਸਾਡੀ ਬੋਲੀ ਹੈ ਔਰ ਵਧੀਆ ਬੋਲੀ ਹੈ ਜਿਹੜੀ ਵਧੀਆ ਉਚਾਰਨ ਕਰਨਾ ਉਹ ਸਾਡਾ ਗਹਿਣਾ ਵਧੀਆ ਸ਼ਬਦ ਜਿਹੜੇ ਬੋਲਣੇ ਉਹਨਾਂ ਦੀ ਲਗਾ ਮਾਤਰਾ ਪੈਰ ਦੇ ਵਿੱਚ ਬਿੰਦੀ ਕਿੱਥੇ ਹੈ ਉਸ ਨੂੰ ਬੋਲਣਾ ਹੋਰ ਵੀ ਮਾਣ ਹੈ ਖਾਸ ਤੌਰ ਤੇ ਅਸੀਂ ਜਿਹੜੇ ਇਸ ਮਾਂ ਬੋਲੀ ਦੇ ਨਾਲ ਆਪਣਾ ਘਰ ਪਾਲਦੇ ਆ ਸਾਡੀ ਤੁਹਾਡੇ ਤੋਂ ਵੱਧ ਬਿਊਟੀ ਬਣਦੀ ਹੈ ਵੱਡੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡਾ ਉਚਾਰਨ ਠੀਕ ਹੋਵੇ ਜਿੱਥੋਂ ਅਸੀਂ ਆਏ ਆ ਜਿਹੜੇ ਮਿੱਟੀ 'ਚ ਅਸੀਂ ਪਲੇ ਆ ਜੋ ਜਿਹਾ ਅਸੀਂ ਉੱਥੇ ਸਿੱਖਿਆ ਉਹ ਜਿਹਾ ਅਸੀਂ ਘਟੋ-ਘਟ ਬੋਲੀਏ ਬਹੁਤ ਰਲਗੱਡ ਅਸੀਂ ਕਰਦੇ ਆ ਸਾਡੇ ਸ਼ਬਦ ਬਹੁਤ ਗਲਤ ਜਿਹੜੇ ਨੇ ਅਸੀਂ ਗਲਤ ਬੋਲਦੇ ਆ ਸੰਸਕ੍ਰਿਤ ਦੇ ਸ਼ਬਦ ਹਿੰਦੀ ਦੇ ਸ਼ਬਦ ਸਾਰੀਆਂ ਭਾਸ਼ਾਵਾਂ ਚੰਗੀਆਂ ਸਭ ਨੂੰ ਮੁਬਾਰਕ ਜਿਹੜੇ ਜਿਹੜੀ ਭਾਸ਼ਾ ਬੋਲਦੇ ਆ ਪਰ ਸਾਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੋਣਾ ਚਾਹੀਦਾ ਸਾਡੇ ਸ਼ਬਦ ਠੀਕ ਹੋਣੇ ਚਾਹੀਦੇ ਤਕੀਆ ਕਲਾਮ ਸਾਡੇ ਬਣ ਜਾਂਦੇ ਐ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਕੀ ਕਹਨੇ ਆ ਹਰ ਗੱਲ ਦਾ ਸਾਹ ਲੈਣਾ ਉਹਦੇ ਤੇ ਕੁਝ ਨਾ ਕੁਝ ਅਸੀਂ ਬੋਲਣਾ ਔਰ ਇੱਕ ਸ਼ਬਦ ਆ ਜਿਹੜਾ ਸਾਡੇ ਮੂੰਹ ਤੇ ਇੰਨਾ ਚੜਿਆ ਔਰ ਤੇ ਔਰ ਤੇ ਔਰ ਤੇ ਔਰ ਤੇ ਔਰ ਖੰੜ ਨਹੀਂ ਅਸੀਂ ਪਤਾ ਨਹੀਂ ਸ਼ਬਦ ਉਹ ਹਿੰਦੀ ਦਾ ਕਾਂਗਰੇਜ਼ੀ ਦਾ ਪਤਾ ਨਹੀਂ ਰੱਬ ਜਾਣੇ ਕਾਹਦਾ ਸ਼ਬਦ ਆ ਪਰ ਬਖਤਾ ਜੇ ਲੋਕਾਂ ਨੂੰ ਸੰਬੋਧਨ ਕਰਦਾ ਉਸ ਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਕਿੰਨੇ ਸ਼ਬਦ ਹੋਣ ਸਾਦੇ ਸ਼ਬਦ ਹੋਣ ਹੌਲੇ ਸ਼ਬਦ ਹੋਣ ਭਾਰੇ ਸ਼ਬਦ ਲੱਭਦੇ ਕਈ ਵਾਰ ਅਸੀਂ ਆਪਣੀਆਂ ਗੱਲਾਂ ਨੂੰ ਤੋਂ ਜਾਂਦੇ ਅਕਸਰ ਹੁੰਦਾ ਦੇ ਵਿੱਚ ਭਾਰੀ ਸ਼ਬਦ ਲੱਭਦੇ ਲੱਭਦੇ ਇਹ ਵਖਤੇ ਨੇ ਆ ਜਿਹੜੇ ਉਹ ਆਪਣੇ ਬਿਲਕੁਲ ਆਪਣੇ عقیده ਤੋਂ ਹਿੱਲ ਜਾਂਦੇ ਆ ਗੱਲ ਜਿਹੜੀ ਕਹਿਣੀ ਉਹ ਛੱਡੇ ਜਾਂਦੇ ਆ ਪਤਾ ਹੀ ਨਹੀਂ ਕਿੱਥੇ ਜਾ ਬੜ ਰਹੇ ਕਿਉਂਕਿ ਇੱਕ ਦੂਜੇ ਨੂੰ ਜਿੱਤਣਾ ਹੁੰਦਾ ਔਰ ਸਾਡੀ ਇਹ ਦਿਖ ਸਾਡੀ ਸ਼ਖਸੀਅਤ ਦਾ ਪ੍ਰਭਾਵ ਅਸੀਂ ਪਾਉਂਦੇ ਆ ਆਪਸ ਵਿੱਚ ਜਿੱਥੇ ਵੀ ਅਸੀਂ ਕਿਸੇ ਇਕੱਠ 'ਚ ਜਾਂਦੇ ਆ ਜਿੱਥੇ ਅਸੀਂ ਪੰਜ ਚਾਰ ਇਕੱਠੇ ਹੋ ਜਾਈਏ ਜਿਹੜੇ ਮਾਂ ਬੋਲੀ ਵਾਲੇ ਆ ਮਤਲਬ ਜਿਹੜੇ ਇਸ ਦੀ ਨੌਕਰੀ ਕਰਦੇ ਆ ਫਿਰ ਉੱਥੇ ਅਸੀਂ ਗੱਡਵੇਂ ਸ਼ਬਦ ਲੱਭਦੇ ਆ ਤੇ ਕਈ ਵਾਰ ਅਸੀਂ ਮضمੂਨ ਤੋਂ ਹੀ ਪਰਾਂ ਹੋ ਜਾਂਦੇ ਆ ਭੁੱਲ ਜਾਂਦੇ ਆ ਅਸੀਂ ਬਕਾਇਕ ਹੀ ਰਹੇ ਸਾਡੇ ਸਾਹਮਣੇ ਮਾਈਕ ਵੇ ਯਾਰ ਮੈਂ ਗਲਤ ਬੋਲਿਆ ਇੱਥੇ ਪੈਰ ਚ ਬਿੰਦੀ ਨਹੀਂ ਪਾਈ ਮੈਨੂੰ ਪਾਉਣੀ ਚਾਹੀਦੀ ਉਹ ਨੂੰ ਜਦੋਂ ਠੀਕ ਕਰ ਲੋ ਤੁਹਾਨੂੰ ਸਤਕਾਰ ਦੇਣਗੇ ਦੂਣਾ ਕਿ ਬਈ ਹਾਂ ਇਹਨੂੰ ਪਤਾ ਸੀ ਬਹੁਤ ਬਾਰ ਬਹੁਤ ਸ਼ਬਦ ਨੇ ਜਿਹੜੇ ਸਾਡੇ ਸਭਾਈ ਸਾਡੀ ਭਾਸ਼ਾ ਚ ਆਵੜੇ ਤੇ ਸਾਨੂੰ ਪਤਾ ਹੀ ਨਹੀਂ ਹੈ ਉਹਨਾਂ ਦਾ ਬਦਲ ਵੀ ਸਾਨੂੰ ਲੱਭਣਾ ਬਹੁਤ ਔਖਾ ਹੋਣ ਕਿਉਂਕਿ ਉਹ ਜਜ਼ਬ ਹੋ ਗਏ ਵਿੱਚ ਅਸੀਂ ਉਸ ਨੂੰ ਬੋਲਦੇ ਪਰ ਕੋਸ਼ਿਸ਼ ਕਰੀਏ ਵਧੀਆ ਆਪਣੀ ਮਾਂ ਬੋਲੀ ਨੂੰ ਬੋਲਿਆ ਜਾਵੇ ਤੇ ਜਿੱਥੇ ਸਾਨੂੰ ਮਾਣ ਹੋਵੇ ਉਸ ਤੋਂ ਸ਼ਬਦਾਂ ਤੋਂ ਫਿਰ ਲੋਕ ਸਿੱਖ ਲੈ ਵਧੀਆ ਵਕਤ ਨੇ ਜਿਹੜੇ ਦੇਖੋ ਕਿਹੜੀ ਕਿਹੜੀ ਜਗ੍ਹਾ ਤੇ ਬੈਠਿਆ ਜਾ ਕੇ ਰਾਜਨੀਤਿਕ ਹਲਕਿਆਂ 'ਚ ਵੇਖ ਲਓ ਵਧੀਆ ਬੋਲਣ ਵਾਲੇ ਨੇ ਜਿਹੜੇ ਉਹ ਬੋਲਣ ਦੇ ਤਰੀਕਿਆਂ ਦੇ ਨਾਲ ਹੀ ਵੱਡੀਆਂ-ਵੱਡੀਆਂ ਗੱਦੀਆਂ ਤੇ ਬਹਿ ਕੇ ਬਹੁਤ ਵੱਡਾ ਇੱਕ ਇਹ ਉਜ਼ਾਰ ਤੁਹਾਡੇ ਹੱਥਾਂ 'ਚ ਪਥਿਆਰਾ ਇੱਕ ਹੱਥ 'ਚ ਜਿਹਦੇ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਕੁਝ ਵੀ ਬਣਾ ਸਕਦੇ ਹੋ ਕੁਝ ਵੀ ਕਰ ਸਕਦੇ। ਪਰ ਇਹ ਮਾਂ ਬੋਲੀ ਦੇ ਵਧੀਆ ਸ਼ਬਦ ਤੁਸੀਂ ਸੁਣਨ ਵਾਲਿਓ ਜੜੇ ਜਦ ਤੁਸੀਂ ਸੁਣਦੇ ਹੋ ਨਾ ਕਿਤੇ ਵੀ ਏਅਰ ਤੇ ਕੋਈ ਪੰਜਾਬੀ ਜਿਹੜਾ ਬ੍ਰੌਡਕਾਸਟਰ ਕੋਈ ਗਲਤ ਬੋ ਰਿਹਾ ਉਹਨੂੰ ਟੋਕਿਆ ਕਰੋ ਵੀ ਆਹ ਯਾਰ ਗਲਤ ਠੀਕ ਨਹੀਂ ਤੁਸੀਂ ਗੱਲ ਕਹੀਏ। ਲੱਗੂ ਤਾਂ ਸਾਨੂੰ ਕਿਹੜੀ ਧੁੰਨੀ 'ਚ ਲੱਗੂ ਤੀਰ ਪਰ ਅਸੀਂ ਸਮਝਾਂਗੇ ਵੀ ਤਾਂ ਹੀ ਵੀ ਆ ਤੁਸੀਂ ਜਿਹੜਾ ਸ਼ਬਦ ਕਿਹਾ ਹੈ ਠੀਕ ਨਹੀਂ ਹੈ। और अंग्रेजी तो ਸਾਨੂੰ ਪੜਾ रहना ਚਾਹੀਦਾ ਸਾਡੇ ਸ਼ਬਦਾਂ ਦੇ ਵਿੱਚ ਪੰਜਾਬੀ ਦੇ ਵਿੱਚ ਅੰਗਰੇਜ਼ੀ ਸ਼ਬਦ ਨਹੀਂ ਸਾਨੂੰ ਵਰਤਣੇ ਚਾਹੀਦੇ ਪੰਜਾਬੀ ਵਿੱਚ ਗੱਲ ਕਰਦੇ ਆ ਪੰਜਾਬੀ ਵਿੱਚ ਠੀਕ ਹੈ ਤੇਈ ਵਾਰ ਸਾਨੂੰ ਪੰਜਾਬੀ ਘੰਟਿਆਂ ਵੱਧੀ ਬੋਲਦੇ ਕਿਸੇ ਅੰਗਰੇਜ਼ੀ ਦੇ ਅੰਗਰੇਜ਼ੀ ਬੋਲਣ ਵਾਲੇ ਬੰਦੇ ਨਾਲ ਗੱਲਬਾਤ ਕਰਨੀ ਪੈਂਦੀ ਸਾਨੂੰ ਅਖਿਆਈ ਆਉਂਦੀ ਆ ਪਰ ਅੱਜ ਬੇਅਖਿਆਈ ਇੱਥੇ ਦੁਨੀਆ ਦੇ ਜਿਹੜੇ ਨੇਤਾ ਨੇ ਉਹ ਦੂਜੇ ਦੇਸ਼ਾਂ ਹਮਕੋ ਤੁਮਕੋ ਤਾਂ ਸਾਡੇ ਵਾਲੇ ਹੀ ਕਰਦੇ ਆ ਪੰਜਾਬ ਦੇ ਵਿੱਚ ਦੇਖਿਓ ਮੂਰੇ ਜੀਟੀਵੀ ਹਿੰਦੀ ਵਾਲਾ ਮਾਈਕ ਦੇਖਾਂ ਨੀ ਹਿੰਦੀ ਲੱਗ ਜਾਂਦਾ ਚੰਦੂ ਦੇ ਬੋਲਣ ਜਦਿ ਮੈਂ ਕਾਟਣਾ تھا ਮੈਂ ਬਾੜਨਾ ਤੇ ਆ ਗਈ ਮੈਂ ਬੱਠਲ ਮੇਰੇ ਸਿਰ ਤੇ ਲਗਾ ਪਤਾ ਨਹੀਂ ਕੀ ਕੋਈ ਕਹਿੰਦਾ ਫਿਰ ਇੱਕ ਨਹੀਂ ਬਹੁਤ ਹਿੰਦੀ ਬੋਲਦੇ ਆ ਤੇ ਚਲੋ ਮਜਬੂਰੀ ਆ ਤੇ ਨਹੀਂ ਤਾਂ ਮੇਰੇ ਖਿਆਲ ਮਜਬੂਰੀ ਵੀ ਕੋਈ ਨਹੀਂ ਹਿੰਦੀ ਬੋਲਣ ਵਾਲੇ ਪੰਜਾਬੀ ਨੂੰ ਪੂਰਾ ਸਮਝ ਲੈਂਦੇ ਆਪਣੀ ਭਾਸ਼ਾ ਨਹੀਂ ਛੱਡਣੀ ਚਾਹੀਦੀ ਵੇਟੇ ਪੰਜਾਬ ਚ ਮਾਈਕ ਹਿੰਦੀ ਦੇ ਇੱਕ ਚੈਨਲ ਦਾ ਦੇਖ ਕੇ ਤੁਸੀਂ ਚਾਰ ਪੰਜਾਬੀਆਂ ਨੂੰ ਸ਼ਾਮਲ ਕਰਕੇ ਹੀ ਬੋਲਣ ਲੱਗ ਜੇ ਆਹੋ ਕੱਲ ਚੱਲਦੀ ਹੈ ਕੋਲਿਆਂ ਵਾਲੀ ਕਾ ਮੀਟਰ ਮੇਰੀ ਗੈਰ ਹਾਜ਼ਰੀ ਮੈਂ ਪਾਟਾ ਗਿਆ ਸੀ ਨਹੀਂ ਤਾਂ ਮੈਨੇ ਬਿਲੀ ਵਾਲਕੇ ਹੱਥ ਲੈਣਾ ਥਾ ਸੀ ਨਾ ਇੱਕ ਵਾਰ ਜਿਆਦਾ ਐਸਓਆਈਐਲ ਤੇ ਖਾਨੀ ਮੇਰੇ ਛੜੀਟ ਪੈ ਗਈ ਪਤਾ ਨਹੀਂ ਕੀ ਖੋਲਿਆ ਮੈਂ ਹੱਥੋਂ ਇਹੋ ਜਿਹਾ ਕੁਝ ਕਿਹਾ ਸੀ ਚੰਨੋ ਮਾਹਰ ਜੀ ਨੇ ਪ੍ਰੋਫੈਸਰ ਸਾਹਿਬ ਨੇ ਉਹ ਵੀ ਸ਼ਬਦ ਜਿਹੜੇ ਨੇ ਮਾਂ ਬੋਲੀ ਦੇ ਔਰ ਘਰ ਦੇ ਵਿੱਚ ਕਈਆਂ ਨੂੰ ਬਹੁਤ ਵਧੀਆ ਗਿਆਨ ਹੁੰਦਾ ਉਹਨਾਂ ਨੂੰ ਮਾਣ ਦੋ ਤੁਹਾਨੂੰ ਸਹੀ ਕਰ ਕਣੋ ਆਪਾਂ ਲਿਖਣਾ ਭੁੱਲ ਗਏ ਪੰਜਾਬੀ ਸਭ ਤੋਂ ਦੁੱਖ ਦੀ ਗੱਲ ਪੰਜਾਬੀ ਸਾਨੂੰ ਲਿਖਣ ਦਾ ਸਮਾਂ ਨਹੀਂ ਹੈ ਕਿਉਂਕਿ ਲਿਖਣਾ ਕਿੱਥੇ ਚਿੱਟੀਆਂ ਮੁੱਕ ਗਈਆਂ ਖਾ ਲਿਆ ਤੇ ਫੋਨ ਤੇ Facebook ਨੇ ਚਿੱਠੀਆਂ ਨੂੰ ਅੰਗਰੇਜ਼ੀ ਅਸੀਂ ਤਾਂ ਕਿਤੇ ਨਹੀਂ ਲਿਖਦੇ ਅੰਗਰੇਜ਼ੀ ਵੀ ਜਿਹੜੀ ਵਧੀਆ ਪੱਟਾਂ ਤੇ ਫੱਟੀਆਂ ਲਖਾ ਲਖਾ ਕੇ ਗੋਲ ਇਹ ਛੋਟਾ ਜਿਹੜਾ ਪਾਉਂਦੇ ਰਹੇ ਮਾਸਟਰ ਤੇ ਉਹ ਵੀ ਅਸੀਂ ਭੁੱਲ ਗਏ ਉਹਦਾ ਕਾਰਨ ਅਸੀਂ ਲਿਖਦੇ ਨਹੀਂ ਕਿਤੇ ਜੇ ਕਿਸੇ ਨੂੰ ਲਿਖਣਾ ਤਾਂ ਅੰਗਰੇਜ਼ੀ ਇਹਦੇ ਵਿੱਚ ਲਿਖਦੇ ਆ WhatsApp ਤੇ ਜਾਂ ਫੋਨ ਤੇ ਜਾਂ ਪੰਜਾਬੀ ਨੂੰ ਅੰਗਰੇਜ਼ੀ ਚ ਅੰਗਜ਼ਾਵੀ ਦੇ ਵਿੱਚ ਲਿਖਦੇ ਆ ਉਹ ਵੀ ਬਹੁਤ ਮਿੱਤਰ ਨੇ ਜਿਨ੍ਹਾਂ ਨੇ ਡਾਊਨਲੋਡ ਕੀਤਾ ਹੈ ਪੰਜਾਬੀ ਦਾ ਕੀਬੋਰਡ ਉਹ ਪੰਜਾਬੀ ਚ ਲਿਖ ਕੇ ਭੇਜਦੇ ਆ ਬਹੁਤ ਸੋਹਣਾ ਲਿਖ ਕੇ ਭੇਜਦੇ ਕੋਸ਼ਿਸ਼ करिए ਕਿ ਵੱਧ ਤੋਂ ਵੱਧ ਅਸੀਂ ਮਾਂ ਬੋਲੀ ਦੀ ਨੂੰ ਵਧੀਆ ਬੋਲ ਸਕੀਏ ਤੇ ਵਧੀਆ ਗੱਲਬਾਤ ਕਰ ਸਕੀਏ ਸ਼ਬਦ ਸਾਨੂੰ ਲੱਭਣੇ ਨਾ ਪੈਣਾ ਆਪ ਮੁਹਾਰੇ ਆਉਣ ਵਧੀਆ ਸ਼ਬਦ ਆਉਣ ਜਿਹੜੇ ਅਸੀਂ ਪਿੰਡ ਦੇ ਵਿੱਚੋਂ ਆਪਣੇ ਸਿੱਖੇ ਆ ਉਹਦੇ ਲਈ ਹੁਣ ਕਈਆਂ ਨੂੰ ਤਾਂ ਇਹ ਡਰ ਹੈ ਕਿ ਸਾਡੀ ਚਾਈ ਦੀ ਨੌਟ ਇਟਲੀ ਹੋ ਜਾਂਦੀ ਹੈ ਜੇ ਬਾਹਲੀ ਦੇਸੀ ਬੋਲਦੇ ਆ ਕਹਿੰਦੇ ਤੂੰ ਦੇਸੀ ਹੈ ਡਾਕ ਤੇ ਨਹੀਂ ਚੜਦਾ ਸਾਡੇ ਖਾਸਾ ਕੁਛ ਨਾ ਖਲਾਰਾ ਜਿਹੜਾ ਬਾਹਰ ਇਕੱਠਾ ਕਰਨਾ ਹੁੰਦਾ ਇੱਕ ਕੰਮ ਨਹੀਂ ਨਾ ਹੈ ਸਾਨੂੰ ਉਹ ਫਿਰ ਉਹਦੇ ਲਈ ਵਧੀਆ ਸ਼ਬਦ ਅਸੀਂ ਪੌਲਿਸ਼ ਲੱਭਦੇ ਆਂ ਬਈ ਹਾਂ ਜਿਹੜਾ ਇਹ ਬੰਦਾ ਯਾਰ ਵਧੀਆ ਲੱਗਦਾ ਪਰ ਮਾਂ ਬੋਲੀ ਛੇਠ ਅੰਦਾਜ਼ੇ ਨਾਲ ਬੋਲਣ ਦੇ ਨਾਲ ਰਤਬਾ ਨਹੀਂ ਘਟਦਾ ਰਤਬਾ ਵੱਧ ਆ ਕਿ ਅਸੀਂ ਮਾਂ ਬੋਲੀ ਦੇ ਫਰਜ਼ੰਦਾ ਆਪਣੀ ਦੇ ਪੁੱਤਾਂ ਜੇ ਇੱਥੇ ਪੁੱਤਾਂ ਕਿਉਂ ਬੋਲਣੀ ਚਾਹੀਦੀ ਵਧੀਆ ਬੋਲਣੀ ਚਾਹੀਦੀ ਆ ਵਧੀਆ ਸ਼ਬਦ ਹੋਣੇ ਚਾਹੀਦੇ ਆ ਤਾਂ ਬੋਲ ਜਾਣ ਪਰ ਸਾਨੂੰ ਜਿਨ੍ਹਾਂ ਦਾ ਤੋਰੀ ਫੁਲਕਾ ਚੱਲਦਾ ਸਾਨੂੰ ਤਾਂ ਖਾਸ ਥਾਂ ਹੋਣਾ ਚਾਹੀਦਾ ਸਰ ਸਰਜੀਤ ਸਿੰਘ ਜੀ ਲਾਈਨ ਨੰਬਰ 2 ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੜੀ ਮਿਹਰਬਾਨੀ ਹੈ ਜੀ ਜਿਹੜਾ ਫੋਨ ਮਰ ਗਿਆ ਮੇਰਾ ਮੈਂ ਗੁਜ਼ਾਰਿਸ਼ ਕਰਦਾ ਤੁਹਾਡੀ ਖਿਦਮਤ ਦੇ ਵਿੱਚ ਇੱਕ ਤਾਂ ਸਾਡੇ ਲੋਕ ਬੋਲ ਜਿਸ ਤਰ੍ਹਾਂ ਚਲੋ خیر ਮੈਂ ਇਸ ਸੜਕਾ ਲਫ਼ਜ਼ ਸੜਕਾ ਚਾਹ ਪੰਜਾਬੀ ਚ ਲਿਖ ਲਾਓ ਚਾਹੇ ਇੰਗਲਿਸ਼ ਵਿੱਚ ਲਿਖੋ ਸੜਕ ਲਫ਼ਜ਼ ਹੈ ਮੋਸਟਲੀ ਲੋਕ ਸੜਕਾਂ ਕਹਿੰਦੇ ਆ ਹੂੰ ਜਦ ਕੇ ਇਹ ਜਿਸ ਨੂੰ ਬੰਦਾ ਬੋਲਦਾ ਸ਼ਮ ਬੰਦੇ ਦੀ ਬੋਲੀ ਤੋਂ ਬੰਦੇ ਦੀ ਅ ਸ਼ਖਸੀ ਦਾ ਪਤਾ ਲੱਗ ਜਾਂਦਾ ਜੀ ਵੀ ਬੰਦਾ ਪੜਿਆ ਲਿਖਿਆ ਆ ਸਿਆਣਾ ਜਾਂ ਬਿਰਿਆ ਇਹ ਸ਼ਬਦ ਤਾਂ ਬਹੁਤ ਆ ਜਿਹੜੇ ਬਹੁਤ ਗਲਤ ਬੋਲਦੇ ਆ ਜਿਹੜੇ ਪੰਜਾਬੀ ਦੇ ਵਿੱਚ ਇੰਨੇ ਸੋਹਣੇ ਲਫ਼ਜ਼ ਆ ਜਦੋਂ ਤੁਸੀਂ ਇਹਨਾਂ ਕੁੱਦਵੀਂ ਤੇ ਸਹੀ ਬੋਲਦੇ ਆ ਉਹਦੇ ਚ ਲੋਟ ਬਹੁਤ ਆ ਤੁਸੀਂ ਉਰਦੂ ਸਹੀ ਧਾਰਾ ਬੋਲੋ ਉਹਦੇ ਚ ਲੋਟ ਬਹੁਤ ਆ ਜਦੋਂ ਤੁਸੀਂ ਇਹਨਾਂ ਸਬਜੀ ਦੋ ਤਿੰਨ ਸਬਜੀ ਬੋਲਦੇ ਆ ਉਹਦਾ ਵੀ ਕੋਈ ਗੱਲਬਾਤ ਨਹੀਂ ਰਹਿੰਦੀ ਨਾ ਜਿਹਦਾਰ ਬੇਕਰ ਆਜਾ ਹੀ ਬੰਦਾ ਹੋ ਜਾਂਦਾ ਨੰਬਰ 2 ਤੁਹਾਡੇ ਜਿੰਨੇ ਵੀ ਹੋਸਟ ਆ ਚਾਹੇ ਇੱਥੇ ਆ ਤੇ ਚਾਹੇ ਇੰਡੀਆ ਜਿਹੜਾ ਉਹਨਾਂ ਨੂੰ ਆ ਕਿ ਮੌਲੀਅਤ ਦਾ ਸ਼ਰਕਤ ਦਾ ਇੱਕ ਇਥੇ ਡਾਕਟਰ ਡਾਕਟਰ ਬੋਲਿਆ ਅਸੌਰੀ ਵਕੀਲ ਕੋਈ ਦਿਨ ਬੋਲਿਆ ਕਿ ਉਥੇ ਸ਼ਰਾਬ ਨੇ ਵੀ ਸ਼ਰਕਤ ਕੀਤੀ ਕੀ ਇਹ ਮਨਰਖੋ ਦੀ ਗੱਲ ਵਕੀਲ ਬੰਦਾ ਵੀ ਸ਼ਰਾਬ ਸ਼ਰਾਬ ਕੋ ਜੀਵੀ ਜੀਦਾ ਜਿਹੜੀ ਸ਼ਰਕਤ ਕਰਨ ਗਈ ਤੇ ਜੋ ਇਦਾਂ ਨਹੀਂ ਚੀਜ਼ਾਂ ਜਿਹੜੀਆਂ ਅਸੀਂ ਕਰਦੇ ਆ ਜਸ ਆਪਣੇ ਆਪ ਨੂੰ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਹਾਲ ਮਫਾਦਲ ਬਣਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਨੁਕਸਾਨ ਹੁੰਦਾ ਔਰ ਆਪਣੀ ਬੋਲੀ ਨਾਲ ਤੁਸੀਂ ਆਪਣੀ ਬੋਲੀ ਚ ਇਨੇ ਸ਼ਬਦ ਆਇਨੇ ਬੜੀ ਬੜੇ ਸ਼ਬਦ ਤੁਸੀਂ ਬੋਲਦੇ ਹੋ ਤੇ ਉਹਦੇ ਨਾਲ ਤੁਹਾਡੀ ਤੁਹਾਡਾ ਬੜਪਣ ਹੁੰਦਾ ਉਹਦੇ ਨਾਲ ਤੁਹਾਡਾ ਜਿੱਦਾ ਸ਼ਖਸੀਅਤ ਜਿਹੜੀ ਚਮਕਦੀ ਹੈ ਮੈਂ ਤਾਂ ਇਹ ਅਰਜ਼ ਕਰਦਾ ਵੀ ਕੋਸ਼ਿਸ਼ ਇਹ ਕੀਤੀ ਜਾਵੇ ਜਿਹੜੀ ਵੀ ਬੋਲੀ ਅਸੀਂ ਬੋਲਦੇ ਆ ਉਹਨੂੰ ਸਹੀ ਤਰੀਕੇ ਨਾਲ ਬੋਲੇ ਜੀ ਉਹਦੇ ਵਿੱਚ ਹੀ ਹੋਰ ਇੱਜ਼ਤ ਆਉਂਦੀ ਤੇ ਬਾਕੀ ਕੋ ਪਹਿਲਾ ਵਿਸ਼ਾ ਸੀਗਾ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੁਕਮ ਨਹੀਂ ਕਰੋ ਆ ਅਰਵੇ ਆ ਭਈ ਪੁੱਛਾ ਤੁਸੀਂ ਰਫੂਜੀਆਂ ਦਾ ਸਮਝ ਨਹੀਂ ਆਉਂਦੀ ਲਿਬਰਲ ਦੇ ਜਿੰਨੇ ਐਮਪੀ ਆ ਐਮਐਲਏ ਆ ਇਹ ਆ ਇਹ ਰੇਡੀਓ ਤੇ ਕੀ ਚਾ ਤੇ ਲੋਕਾਂ ਨੂੰ ਕਹਿੰਦੇ ਸੀ ਜਿਹਦੀ ਬੇਸਮੈਂਟ ਖਾਲੀ ਆ ਸਾਨੂੰ ਦੱਸੋ ਅਸੀਂ ਰਫੂਜੀਓ ਤੇ ਅਸੀਂ ਉੱਥੇ ਵਸਾਉਣੇ ਆ ਇੱਕ ਅਜਿਹਾ ਲੀਡਰ ਆ ਮੈਂ ਨਾਂ ਵੀ ਲੈ ਸਕਦਾ ਸਾਡਾ ਸੱਜਣਾ ਆ ਉਹ ਚੰਪਾਲ ਉਹ ਕਹਿੰਦਾ ਜੀ ਵੀ ਤੁਸੀਂ ਆਪਣੀਆਂ ਹਾਲ ਦੱਸੋ ਮੈਂ ਉਹਨੂੰ ਮਿਲਿਆ ਮੇਰਾ ਦੋਸਤ ਆ ਮੈਂ ਉਹਨੂੰ ਪੁੱਛਿਆ ਤੂੰ ਤੇਰੇ ਕੋਈ ਦਮ ਘਾੜਾ ਤੂੰ ਵੀ ਆਲਮੀ ਦੋਨੋਂ ਰਹਿਨੇ ਆ ਤੇ ਤੂੰ ਦੱਸ ਕਿਹਨੂੰ ਉਹ ਜੀ ਦੱਸ ਉਹਨੇ ਨਹੀਂ ਇਹ ਤਾਂ ਗੱਲਾ ਕਹਿਣ ਦੀ ਹੈ ਵਾਟ ਇਜ਼ ਥਿਸ ਵੀ ਗੱਲਾ ਜਿਹੜੀਆਂ ਕੋਈ ਜਾਇਜ਼ ਆ ਇਹਦਾ ਜਦ ਹੁਣ ਇਹ ਰਫੂਦੀਆ ਦੇ 28-10-10 ਨਿਆਣੇ ਆ ਤੁਸੀਂ ਬੇਸਵਾਰ ਜਿਹੜਾ ਦਾਗ ਨਹੀਂ ਆ ਰਿਹਾ ਤਬਰ ਵਾਲਾ ਹੋਗੇ ਉਹਨੇ ਜਦੋਂ ਮਰਜੀ ਜਾਗ ਲਗਾ ਤੁਸੀਂ ਸੌ ਸਕਦੇ ਹੋ ਮੁੜ ਕੇ ਮੈਂ ਪਰਮਾਤਮਾ ਤੋਂ ਬੱਚੇ ਉਹਨੇ ਨੂੰ ਅੱਛੀ ਥਾਂ ਲਿੰਦੇ ਸਕੀਏ ਅਰਥਾ ਦਸਾਂ ਦੇ ਆਪਣੇ ਨਿਕਰਾਵ ਨਹੀਂ ਆਉਂਦੀਆਂ ਹਾਲਾਂ ਤੇ ਗੱਲਾਂ ਇਹ ਲੋਕ ਜਿਹੜੇ ਉੱਥੋਂ ਆਏ ਆ ਉੱਥੇ ਉਸ ਗਵਰਨਮੈਂਟ ਦੇ ਵਜ਼ੀਫੇ ਲੱਗੇ ਆ ਇਹਨਾਂ ਨੂੰ ਕੰਮ ਕਰਦੇ ਲੋੜ ਨਹੀਂ ਨਾ ਇਹ ਕੰਮ ਕਰਦੇ ਤੁਸੀਂ ਮੈਨੂੰ ਦੱਸੋ ਆ ਤੁਹਾਡੇ ਤੁਸੀਂ ਗਿਲਸਾ ਬਹੁਤ ਫ੍ਰੀਤਰੇ ਬੰਦੇ ਆ ਔਰ ਬਹੁਤ ਤੁਹਾਡੇ ਜਦਾਂ ਗਰੀ ਵਾਫਟ ਔਰ ਕੋਲ ਨੌਲੇਜ ਵੀ ਬਹੁਤ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਮੈਂ ਇਹ ਗੱਲ ਕਰਦਾ ਕਦੀ ਦੇਖਿਆ ਕੋਈ ਕਦੀ ਕੰਮ ਕਰਦਾ ਜਾਂ ਜਿਹੜੇ ਸਾਡੇ ਬੁੱਢੇ ਜਿਹੜੇ ਆ ਵਿਚਾਰੇ ਮੇਰੇ ਵਰਗੇ ਉਹ ਹੋਰ ਹੀ ਕੁਝ ਨਹੀਂ ਦਾ ਦਾ ਕਰਦੇ ਆ ਇਹਨਾਂ ਚੋ ਕੋਈ ਦਾ ਵੀ ਕਰਦਾ ਕਦੀ ਦੇਖਿਆ ਜਾਂ ਕਿਤੇ ਦਿਖਾਲ ਚੋ ਕਿਤੇ ਕਰਦੇ ਕੁਝ ਦਸੋ ਸਹੀ ਵੀ ਫਲਾਣੇ ਨੇ ਆ ਆ ਕਾਰਖਾਨੇ ਚ ਕੰਮ ਕਰਦੇ ਆ ਜਾਂ ਇੱਥੇ ਕਾਰ ਬਣਾਉਂਦੇ ਆ ਉਹ ਇਹਨਾਂ ਨੂੰ ਕਮਾਈ ਇਹ ਸਾਰੇ ਲੋਕਾਂ ਦੀ ਜਿਹੜੀ ਕਮਾਈ ਚ ਹੋਈ ਇਹਨਾਂ ਨੂੰ ਦੇ ਦੇਣੀ ਆ ਇਹ ਕੋਈ ਤਰੀਕਾ ਸੁਣੋ ਇੱਕ ਸਿਸਟਮਾਈਜ਼ਡ ਠੀਕ ਆ ਲੈਂਦੇ ਤੁਸੀਂ ਪਰਾਕੀਤਾ ਵੀ ਉਹਨਾਂ ਨੂੰ 6 ਮਹੀਨੇ ਅਸੀਂ ਰੱਖਣਾ ਤੁਸੀਂ ਤੁਹਾਡੇ ਘਰ ਪਰੋਣਾ ਆਉ ਤੁਹਾਡਾ ਰਿਸ਼ਤਾਰ ਆਉਂਦਾ ਤੁਸੀਂ ਉਹਨੂੰ ਕਹੋ ਮਹੀਨਾ ਰੱਖੋਗੇ ਉਦੋਂ ਬਾਅਦ ਕਹੋਗੇ ਲੈ ਵੀ ਤੂੰ ਕੰਮ ਤੇ ਕਿਤੇ ਕਾਰ ਹੋਰ ਆਪਣੇ ਇੰਤਜ਼ਾਮ ਕਰ ਤੇ ਇਸ ਮੁਲਕ ਨੂੰ ਜਿਹੜੇ ਵੱਡੇ ਵੱਡੇ ਲੀਡਰ ਆ ਇਹਨਾਂ ਦੇ ਕਿਸੇ ਤੇ ਘਰ ਹੈਗਾ ਵੀ ਇਹ ਕਿਉਂ ਨਹੀਂ ਇਹਨਾਂ ਨੂੰ ਸੋਚ ਲਈ ਵੀ ਇਹ ਇਹ ਹੋ ਗਿਆ ਬਾਰ-ਬਾਰ ਉਹਨਾਂ ਵਜ਼ੀਫੇ ਦੇ ਰਾਇਆ ਆ ਕਿ ਦਾਸਾਂ ਨੇ ਆਲੇ ਵਜ਼ੀਫੇ ਉਹਨਾਂ ਨੂੰ ਕੰਮ ਕਰਨ ਦੀ ਲੋੜ ਹੈ ਕੋਈ ਨਹੀਂ ਕੰਮ ਕਰਦਾ ਤੇ ਇਹਨਾਂ ਨੂੰ ਇਹ ਇਹ ਹੈ ਕਿ ਜਿਹੜਾ ਇਹਨਾਂ ਨੂੰ ਦਿਆ ਨਹੀਂ ਸਿਰਫ ਆਪਣੀਆਂ ਸੀਟਾਂ ਆਪਣੀਆਂ ਆਪਣੀਆਂ ਤਰ੍ਹਾਂ ਬਣਾਉਣ ਵਾਸਤੇ ਇਹ ਇਹ ਜੇ ਨਕਮੀਆਂ ਨੂੰ ਸਹਾਇਤ ਕਰਕੇ ਤੇ ਲੋਕਾਂ 'ਚ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਬੜੇ ਤਰਸ ਕਰਦੇ ਆ ਦਾ ਕਰਦੇ ਆ ਤਰਸ ਤਾਂ ਸਾਡੇ ਤੇ ਕਰੋ ਜਿਨ੍ਹਾਂ ਜਿਹੜੇ ਲੋਕ ਸਾਡੇ ਗਰੀਬ ਬੰਦੇ ਕੰਮ ਕਰਦੇ ਬੁੱਢੇ ਵੀ ਕੰਮ ਕਰਦੇ ਵਿਚਾਰੀਆਂ ਜਨਨੀਆਂ ਕੰਮ ਕਰਦੀਆਂ ਉਹਨਾਂ ਤੇ ਤੇ ਧੀਰੇ ਨਹੀਂ ਮੈਂ ਤੁਹਾਨੂੰ ਆਪਣੀ ਮਿਸਾਲ ਦੱਸਾਂ ਮੈਂ ਲੈਣ ਗਿਆ ਐਸਯੂਵੀ ਦੇਖਣ ਗਿਆ ਉਹਦੇ ਕੋ ਐਸਯੂਵੀ ਵਧੀਆ ਐਸਯੂਵੀ ਸੀ ਦੋਤ ਨਹੀਂ ਆਣੇ ਬੈਠੇ ਉਮੈਗਾ ਵੀ ਕਾਕਾ ਤੂੰ ਇਹ ਵੇਚ ਦਸ ਕਿਉਂ ਉਹ ਤਾਂ ਤੇਰੇ ਲਈ ਵਧੀਆ ਦੋ ਦੋ ਆ ਦੋ ਟ ਵਾਲੇ ਹੋਗਾ ਉਹ ਕਹਿੰਦਾ ਨਹੀਂ ਜੀ ਅੰਕਲ ਜੀ ਪੰਜ ਘਰਵਾ ਦੋ ਆ ਇੱਕ ਆਉਣ ਸਾਲ ਦੇ ਪੰਜ ਸੱਤ ਹੋ ਹਜੇ ਛੱਡਨੇ ਤਾਂ ਹੁਣ ਤੂੰ ਦੱਸੋ ਵੀ ਉਹ ਸਾਰੇ ਪੈਸੇ ਜਿਹੜੇ ਆ ਉਹ ਸਾਰਿਆਂ ਦਾ ਟੈਕਸ ਹੀ ਖਾਂਦੇ ਆ ਉਹ ਕੀ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਲੇਕਿਨ ਹਰ ਆਦਮੀ ਦੀ ਜ਼ਿੰਮੇਵਾਰੀ ਆ ਹਰਾਮੀ ਇਸ ਮੁਲਕ ਦੇ ਜ਼ਿੰਮੇਵਾਰ ਹੋਇ ਸੇ ਕਮਾ ਕੇ ਰਹੇ ਕਮਾ ਕੇ ਸਭ ਕੁਝ ਕਰੇ ਔਰ ਜਿਹੜੀ ਗੱਲ ਬਣਦੀ ਹੋ ਜਾਇਜ਼ ਉਹੋ ਕਰੇ ਮੈਂ ਇਹ ਅਰਜ਼ ਕਰਦਾ ਵੀ ਸਾਰਿਆਂ ਨੂੰ ਚਾਹੀਦਾ ਮਿਹਰਬਾਨੀ ਠੀਕ ਹੈ ਸਰ ਜੀ ਸਰ ਜੋਗਿੰਦਰ ਸਿੰਘ ਜੀ ਲਾਈਨ ਨੰਬਰ 3 ਸਰ ਜੋਗਿੰਦਰ ਸਿੰਘ ਲਾਈਨ ਨੰਬਰ 3 ਜੀ ਅੰਦਰਪੀਰ ਸਿੰਘ ਟਵਾਣਾ ਨੰਬਰ 4 ਭਾਈ ਜੀ ਸਤਿ ਸ਼੍ਰੀ ਅਕਾਲ ਦਵਾਰਾਤਾ ਜੀ ਜਿਹੜੀ ਮਾਂ ਬੋਲੀ ਦੀ ਗੱਲ ਕਰਦੇ ਆ ਨਾ ਦੇਖੋ ਜਿਹੜੀ ਬੋਲੀ 'ਚ ਜੰਮੇ ਆ ਨਾ ਠੀਕ ਆ ਚਲੋ ਆਪਾਂ ਪੜ੍ਹਦੇ ਸੀਗੇ ਨਾ ਜਦੋਂ ਆਪਾਂ ਚਲੇ ਜਾਂਦੇ ਆ ਨਾ ਦੁਬਾਰਾ ਤੇ ਜਦੋਂ ਉਹ ਭਾਸ਼ਾ ਤੇ ਸਾਡੇ ਜਿਵੇਂ ਪਿੰਡਾਂ ਦੇ ਥੋੜੇ ਜਿਹਾ ਡਿਫਰੈਂਟ ਆ ਜਿਹੜੇ ਪਟਿਆਲੇ ਦੇ ਨੇੜੇ-ਨੇੜੇ ਥੋੜੀ ਜਿਹੀ ਪੁਆਦੀ ਜੀ ਮਿਕਸ ਹੋ ਜਾਂਦੀ ਹੈ ਤੇ ਉਹ ਜਦੋਂ ਜਾ ਕੇ ਭਾਸ਼ਾ ਬੋਲਦੇ ਆ ਲੱਗਦਾ ਜਿਵੇਂ ਪਤਾ ਨਹੀਂ ਕਿਵੇਂ ਬੁੱਕਲ ਗਏ ਮਾਂ ਬੋਲੀ ਤੇ ਉਹਦਾ ਸਵਾਦ ਵੱਖਰਾ ਜਾਦਾ ਘੋਟ ਕੇ ਬੋਲਣ ਲੱਗ ਜੰਨੇ ਆ ਨਾ ਸ਼ਹਿਰੀ ਹੋ ਗਿਆ ਉਹ ਹੋ ਗਿਆ ਮੈਂ ਆਪਣਾ ਦੱਸਦਾ ਕਿ ਮੈਂ ਜਮੇਂ ਦੇਸੀ ਭਾਸ਼ਾ ਬੋਲਦਾ ਘਰੇ ਵੀ ਜੇ ਠੀਕ ਹੈ ਬਾਹਰ ਵੀ ਪਰ ਜਦੋਂ ਕਿਤੇ ਪੜੇ ਲਿਖਿਆ ਜਾਂ ਬੋਲੀ ਬੋਲਣ ਦੇ ਤੁਹਾਡੇ ਦੋ ਤਰੀਕੇ ਹੋ ਸਕਦੇ ਨੇ ਜਿਹੜੀ ਆਪਾਂ ਪਿਓਰ ਜਿਵੇਂ ਗੁਰਮੁਖੀ ਚ ਗ੍ਰੈਮੈਟਿਕ ਉਹ ਤੁਸੀਂ ਮੌਕੇ ਦੇ ਹਿਸਾਬ ਨਾਲ ਪਰ ਜਦੋਂ ਅਸੀਂ ਪਿੰਡ ਪੁੰਡ ਜਾਈਦਾ ਹੈ ਤੇ ਉਹ ਲੋਕ ਵੀ ਸ਼ਬਦ ਨੇ ਆਪਣੇ ਮੇਰੇ ਯਾਰ ਫਲਾਣਾ ਠਮਕਾ ਇਹ ਜੇ ਹੁਣ ਮਤਲਬ ਕਾਫੀ ਸ਼ਬਦ ਨੇ ਜਿਹੜੇ ਤੁਹਾਨੂੰ ਆਪਣਾ ਜੀ ਸ਼ੋਅ ਨੇ ਤੁਸੀਂ ਆਪਣੇ ਲੋਕਾਂ ਜਾ ਕੇ ਬੋਲਦੇ ਤੇ ਉਹਨਾਂ ਨੂੰ ਵਧੀਆ ਲੱਗਦਾ ਤੇ ਘਰ ਚ ਵੀ ਜਿਵੇਂ ਆਪਾਂ ਕਈ ਵਾਰੀ ਕਹੇ ਅਸੀਂ ਸ਼ਬਦ ਨੇ ਜਿਹੜੇ ਐਗਜ਼ਿਸਟੇ ਨਹੀਂ ਕਰਦੇ ਜਿਹੜੀ ਆਪਾਂ ਅਸਲੀ ਜੇ ਆਪਾਂ ਗੁਰਮੁਖੀ ਚ ਦੇਖੀਏ ਜਾਂ ਆਪਣੇ ਪੰਜਾਬੀ ਅਸਲੀ ਜਿਹੜੀ ਭਾਸ਼ਾ ਚ ਪਰ ਉਹ ਆਪਾਂ ਬੋਲਦੇ ਆ ਕਿਉਂਕਿ ਆਪਾਂ ਨੂੰ ਆਪਣੇ ਏਰੀਆ ਤੋਂ ਮਿਲੇ ਹੋਏ ਨੇ ਆਪਣੇ ਮਿਲੇ ਹੋਏ ਨੇ ਤੇ ਬਾਕੀ ਠੀਕ ਹੈ ਗੱਲ ਸਾਬਾਕੀ ਮੈਂ ਜਾ ਰਹੀ ਜੀ ਕਿ ਸਾਡੇ ਤਾਏ ਚਾਚਿਆਂ ਦੇ ਪੁੱਤ ਇੱਥੇ ਆਏ ਹੋਏ ਨੇ ਥੋੜਾ ਬਹੁਤਾ ਇਹਨਾਂ ਦਾ ਇਹਨਾਂ ਤੇ ਫਰਕ ਨਾ ਰੱਖਿਆ ਕਰੋ ਬੱਸ ਜੀ ਜੇ ਇਹਨਾਂ ਦਾ ਕੁਝ ਤਾਏ ਚਾਚਿਆਂ ਦੇ ਨੇ ਧੰਨਵਾਦ ਜੀ ਜੀ ਧੰਨਵਾਦ ਸੁਖਵੀਰ ਸਿੰਘ ਜੀ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜੀਰ ਜੀ ਮੈਂ ਤਾਂ ਇੰਨਾ ਹੀ ਆਖਣਾ ਚਾਹੀਦਾ ਤਰ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਉਹਨਾਂ ਵੀ ਜਿਵੇਂ ਅਸਲ ਜੀ ਅਸਲ ਦੇ ਵਿੱਚ ਤਾਂ ਲਫ਼ਜ਼ ਇਹੀ ਹੈ ਨਾ ਵੀ ਸਤਿ ਸ੍ਰੀ ਅਕਾਲ ਹੀ ਆਪਾਂ ਨੂੰ ਕਹਿਣਾ ਚਾਹੀਦਾ ਤਾਂ ਕਿ ਉਹਦੇ ਵਿੱਚ ਫਤਿਹ ਦੀ ਆ ਜਾਂਦੀ ਆ ਚਾਹੇ ਬਨਾਈ ਬਲਾਈਏ ਕੋਈ ਲਖ ਜਿਹਦਾ ਅਰਥ ਵੀ ਬਣਦਾ ਵਾ ਜਿਵੇਂ ਸਤਿ ਸ੍ਰੀ ਅਕਾਲ ਦਾ ਮੈਨੂੰ ਮਗਰ ਜੀ ਕੋਈ ਅਰਥ ਵੀ ਨਹੀਂ ਸੁਣਿਆ ਕੀ ਬਣਦਾ ਵਾ ਅਸੀਂ ਨਹੀਂ ਜਣਾ ਚਾਹੁੰਦਾ ਸੀ ਕਿ ਜੀ ਧੰਨਵਾਦ ਧੰਵਾਦ ਜੀ ਸਤ ਸ੍ਰੀ ਅਕਾਲ ਇਹ ਸ਼ਬਦ ਠੀਕ ਹੈ ਬਿਲਕੁਲ ਸਾਲਮਜੀਤ ਸਿੰਘ ਦੀ دیਵਾਨਾ ਲਾਈਨ ਅਪ ਵਿੱਚ ਅਨੀਰ ਰੇਸ਼ ਸਿੰਘ ਜੀ ਸਤ ਸ੍ਰੀ ਅਕਾਲ ਸਤ ਅਕਾਲ ਜੀ ਆਪਾਂ ਮਾਹੌਲੀ ਬਾਰੇ ਗੱਲ ਕਰਦੇ ਤੁਸੀਂ ਉਹਨਾਂ ਕਹਿ ਕੇ ਰਿਹਾ ਉਹਨਾਂ ਪਹਿਲਾਂ ਕਹਿ ਕੇ ਹਟਿਓ ਜੇ ਸਾਡੇ 'ਚ ਕੋਈ ਪ੍ਰੋਗਰਾ ਹੋਸਟ ਵੀ ਕਹਿਣਾ ਕਹਿ ਦਿਓ ਉਹਨੂੰ ਇਹ ਮੈਂ ਤਾਂ ਕਹੀਏ ਮਾ ਜੀ ਆਨ ਏਅਰ ਆਨ ਏਅਰ ਠੀਕ ਕਰੋ ਜਦ ਅਚਾਈ ਮੈਂ ਤਾਂ ਦਾ ਮੈਂ ਤਾਂ ਆਈ ਪੁੱਛਣੇ ਬੈਠਿਆ ਬਿਲਕੁਲ ਆਪਣੇ ਹੈਗੇ ਹੋਸਟ ਦਾ ਇੱਕ ਦੋ ਇੱਕ ਹੀ ਹੋਸਟ ਹੈਗਾ ਦੋ ਤਿੰਨ ਲੱਖ ਜਿਹਦਾ ਮੈਨੂੰ ਤਾਂ ਪੰਜਾਬੀ ਦਾ ਪੂਰਾ ਆਦਾ ਵੀ ਉਹ ਗੱਲ ਗੱਲ ਕਹਿੰਦੇ ਆ ਉਹ ਇਸ ਕਰਕੇ ਕੱਲ ਸੋਚਿਆ ਮੈਂ ਕਿ ਕੱਲ ਮੈਂ ਪਹਿਲਾਂ ਕਰ ਉਹ ਆਨ ਹੋਸਟ ਮੈਨੂੰ ਕਹਿੰਦਾ ਡੋਕਤਾ ਨਹੀਂ ਕੋਈ ਨਾ ਹੌਸਟ ਕਿਹੜਾ ਉੱਪਰੋਂ ਖਾਸ ਉਤਰਿਆ ਤੁਹਾਡੇ ਵਰਗੇ ਅਸੀਂ ਕਿੱਲੀ ਦੱਬ ਲਿਆ ਕਰੋ ਥੈਂਕ ਯੂ ਧੰਨਵਾਦ ਬਹੁਤ ਬਹੁਤ ਹੋ ਗਈ ਹੋ ਗਈ ਪ੍ਰਾਣ ਅਨਵਰ ਨੇ ਜਿਹੜੇ ਪੰਜਾਬ ਦੇ ਉਹਨਾਂ ਦੇ ਨੌ ਅਸੀਂ ਭੁੱਲ ਗਏ ਤਾਂ ਤੋਤੇ ਚਿੜੀ ਚੱਕੀ ਰਾਹਾ ਲਾਲੜੀ ਕਾਲਕਲੀ ਚੀ ਪੂਰੀ ਗਲੜੀ ਵੱਡਾ ਮਸ਼ੇਰਾ ਰਾਤੋਂਤਾ ਬਦਾਮੀ ਬਗਲਾ ਟਟਿਰੀ ਨੀਲ ਕੰਠ ਚੁਗਲ ਗੰਗਾ ਘਟਾਰ ਬੁਲਬੁਲ ਛੋਟਾ ਪਤਰੰਗਾ ਸੁਨਹਿਰੀ ਉੱਲੂ ਚਿੱਟੀ ਇਲੂ ਇਲੂ ਐਲਿਆ ਇਲੂ ਨਹੀਂ ਐਲ ਲੈ ਚਿੜੀ ਮਾਰ ਛੋਟਾ ਬਗਲਾ ਅਸਮਾਨੀ ਪਿੱਦੀ ਰੰਗ ਹੋ ਗਈ ਬਹੁਤ ਵਧੀਆ ਲਾਪੀ ਸਿੰਘ ਬਰਾੜ ਨੇ ਨੌ ਭੇਜੇ ਕਾਲੀ ਗੱਲੜੀ ਇੱਕ ਮਾਦੀ ਕੁੱਕੜ ਹੁੰਦਾ ਸੀ ਇੱਕ ਲਾਲ ਖੰਭਾ ਵਾਲਾ ਪੂਛ ਹੁੰਦੀ ਸੀ ਉਹਨੂੰ ਵੀ ਸਿਰਦੇ ਸੀ 12 ਬੋਰ ਨਾਲ ਕਦੇ ਕਦੇ ਲਟੇਟਾ ਪੂਰਾ ਚਤਰ ਇਹ ਭਗਵਾਨ ਤੇਰੀ ਕੁਦਰਤ ਜਿਹੜਾ ਸਵੇਰੇ ਬੋਲਦਾ ਹੁੰਦਾ ਸ਼ਿਕਰੇ ਨੂੰ ਕਿਹਾ ਮੈਂ ਯਾਰ ਬਣਾਇਆ ਸ਼ਿਕਰਾ ਕੀ ਕਰਦਾ ਹੈ ਕਿਸੇ ਦਰਖਤ ਦੇ ਉੱਪਰ ਕਿਸੇ ਪੰਛੀ ਨੂੰ ਦੋਸਤ ਬਣਾਉਂਦਾ ਸ਼ਿਕਰੇ ਦੇ ਬਾਰੇ ਜੇ ਤੁਸੀਂ ਖੋਜ ਕਰੋ ਇਹ ਹੈ ਲਿਖਿਆ ਸ਼ੇ ਬਟਾਲਵੀ ਨੇ ਉਹ ਫਿਰ ਸ਼ਿਕਰੇ ਦਾ ਇੱਕ ਗੁਣ ਹੈ ਦਰਖਤ ਤੇ ਬੈਠ ਕੇ ਉਹ ਰਹਿਣ ਵਾਲੇ ਪਹਿਲੇ ਪੰਛੀ ਨੂੰ ਦੋਸਤ ਬਣਾਉਂਦਾ ਫਿਰ ਜਦ ਇੱਕ ਦਿਨ ਉਹਨੂੰ ਸ਼ਲਾਵਾ ਦੇ ਕੇ ਉਹਨੂੰ ਸ਼ੱਕਦਾ ਫਿਰ ਸੁੱਤੇ ਪੈ ਨੂੰ ਉਹਦਾ ਕੰਮ ਕਰਦਾ ਘੋਗਾ ਚਿਤ ਕਰਦਾ ਸ਼ਿਕਰੇ ਪਰ ਇਹ ਗੱਲ ਹੈ ਕਾਲਾ ਤਤਰ ਘੁੱਗੀ ਵੱਡਾ ਮਮੂਲਾ ਕਿਤਾ ਮਮੋਲਾ ਮਮੋਲੇ ਦਾ ਨੋਂ ਵੀ ਆਇਆ ਕਿਸੇ ਗੀਤ ਚ ਮੈਂ ਭੁੱਲ ਗਿਆ ਕਿਤੇ ਮਮੋਲੇ ਦੀ ਗੱਲ ਖਾਣੀ ਮੋਲੇ ਦੀ ਅੱਖ ਬਾਰੇ ਗੱਲ ਹੋਈ ਉਹ ਇਹ ਸਾਡੇ ਪੰਛੀ ਸਨ ਵਪਾਰਕ ਸੰਦੇਸ਼ਾਂ ਤੋਂ ਬਾਅਦ ਵਧੀਆ ਜੀ ਸੁਣਾਉਣਾ ਤੇ ਫਿਰ ਗੱਲ ਚੱਲੇਗੀ ਅੱਜ ਐਸਵਾਈਐਲ ਦੀ ਕਈ ਵਾਰ ਅਸੀਂ ਮਾਲਵੇ ਪਿੰਡਾਂ ਦੇ ਵਿੱਚ ਸਤਸ੍ਰੀ ਅਕਾਲ ਕਹਿ ਦਿੰਦੇ ਉਹਨਾਂ ਸਤਸ੍ਰੀ ਅਕਾਲ ਜੀ ਇੱਕ ਦਿਨ ਮੈਂ ਲਿਖਤਾ ਫੇਸਬੁੱਕ ਤੇ ਬੰਦਾ ਆ ਕੇ ਮੈਨੂੰ ਕਹਿੰਦਾ ਸਤਸ੍ਰੀ ਅਕਾਲ ਨਹੀਂ ਬਾਈ ਜੀ ਸਤਸ੍ਰੀ ਅਕਾਲ ਇਵਰ ਤੇਜ ਬੋਲਦੇ ਮੈਂ ਵੀ ਕਹਿੰਦਾ ਸਤਿ ਸ੍ਰੀ ਅਕਾਲ ਆ ਨੀ ਸਤਿ ਸ੍ਰੀ ਅਕਾਲ ਪ੍ਰੋਪਰ ਜਿਹੜੇ ਅਸਲ ਸ਼ਬਦ ਕੋਸ਼ਿਸ਼ ਕਰੀਏ ਦੇਖੋ ਕੁਝ ਕੁ ਚੀਜ਼ਾਂ ਜਿਹੜੀਆਂ ਅੰਗਰੇਜ਼ੀ ਨੇ ਸਾਨੂੰ ਸਾਡੀਆਂ ਦੱਬ ਲੈਣੀਆਂ ਨੇ ਪਰ ਫਿਰ ਵੀ ਕੋਸ਼ਿਸ਼ ਕਰੀਏ ਅੱਛਾ ਅਗਲੇ ਹਿੱਸੇ ਦੇ ਵਿੱਚ ਮੈਂ ਗੱਲ ਕਰਨੀ ਹੈ ਕਿ ਐਸਵਾਈਐਲ ਦੀ ਐਸਵਾਈਐਲ ਤੇ ਅਬੇ ਛਟਾਲਾ ਹੁਣੀ ਜਿਹੜੇ ਭਤੀਜੇ ਐ ਨਾ ਪੋਤੇ ਲੱਗਦੇ ਐ ਮੈਂ ਆਪਣੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪੱਗ ਬਟਾਈ ਹੋਈ ਹੈ ਦੇਵੀ ਲਾਲ ਦੇ ਨਾਲ ਦੇਵੀ ਲਾਲ ਦਾ ਪੁੱਤ ਹੈ ਤੇ ਪੋਤਾ ਹੀ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਵਿੱਚ ਚਟਾਲਾ ਇੱਕ ਚਾਚੇ ਦਾ ਪੁੱਤ ਭਾਈ ਹੈ ਆਪਣੇ ਦਾ ਸਿਖਵੀਰ ਸਿੰਘ ਬਾਦਲ ਦਾ ਕਿਸਮਤ ਹੈ ਪਰਿਵਾਰਾਂ ਦੀ ਜਦ ਬਾਦਲ ਸਰਕਾਰ ਦੇ ਵਿੱਚ ਨਹੀਂ ਤਾਂ ਚਟਾਲੇ ਨੇ ਜੇ ਚਟਾਲੇ ਹੋਣੀ ਨਹੀਂ ਤਾਂ ਬਾਦਲ ਨੇ ਚੰਡੀਗੜ੍ਹੇ ਘਰ ਨੇ ਚੰਡੀਗੜ੍ਹੇ ਰਾਜਤਾਨੀ ਹੈ ਤੇ ਹਰਿਆਣਾ ਦੇ ਵਿੱਚ ਫਾਰਮ ਨੇ ਉਹਨਾਂ ਦਾ ਪੰਜਾਬ ਚ ਇੱਥੇ ਪਤਾ ਨਹੀਂ ਕੀ ਹੋਣਾ ਪਰ ਬਹੁਤ ਪਰਿਵਾਰ ਕਲੋਜ਼ ਐ ਨੇੜੇ ਨੇ ਸਾਰੇ ਜਾਣਦੇ ਆ ਪੱਗ ਬਟਾਈ ਹੋਈ ਐ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਦੇਵੀ ਲਾਲ ਦੀ ਯਾਦਗਾਰ ਤੇ ਕਰੋੜਾਂ ਹੀ ਰੁਪਏ ਖਰਚਤੇ ਪਿਛਲੇ ਦਿਨੀ ਪਿਛਲੇ 3 5 4 ਸਾਲਾਂ ਦੇ ਵਿੱਚ ਸਿਕਿਉਰਿਟੀ ਲਾ ਉੱਥੇ ਚਲੋ ਆਪਣੀ ਆਪਣੀ ਯਾਰੀ ਨਿਭਾਈ ਆ ਹੁਣ ਜਿਹੜਾ ਪੈਂਤੜਾ ਐ ਉਹ ਪੈਂਤੜਾ ਇਹ ਐ ਵੀ ਸਤੰਬਰ 11 ਦੇ ਰਿਜ਼ਲਟਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਗੜਬੜ ਕਿਵੇਂ ਹੋਵੇ ਹੁਣ ਉਹਦੇ ਵਿੱਚ ਮੈਂ ਤਾਂ ਸਿਰਫ ਗੱਲ ਪੀਰ ਮੁਹੰਮਦ ਦੀ ਉਹ ਕਰ ਸਕਦਾ ਹੈ ਪੀਰ ਮੁਹੰਮਦ ਦੀ ਟੂਟੀ ਕਿਹਦੇ ਕੋਲ ਹੈ ਤੁਸੀਂ ਲੱਭ ਸਕਦੇ ਹੋ ਮੇਰੇ ਕੋਲ ਤਾਂ ਹੈ ਨਹੀਂ ਟਟਾਲਿਆਂ ਨੇ ਕਹਿਤਾ ਬਈ ਅਨੈਲੋ ਵੱਲੋਂ ਅਸੀਂ ਨਹਿਰ ਪਟਣੀਆਂ ਨਹਿਰ ਪਹਿਲਾਂ ਹੀ ਪੱਟੀ ਹੋਈ ਹੈ ਹਰਿਆਣੇ ਦੇ ਵਿੱਚ ਉੱਚ ਖੱਬਲ ਖੜਾ ਹੈ ਇਉਂ ਕਹਿ ਸਕਦੇ ਹੋ ਬਈ ਨਹਿਰ ਖੋਤਣੀਆਂ ਅਸੀਂ ਜਾਂ ਨਹਿਰ ਘੜਨੀਆਂ ਜਿਵੇਂ ਜੱਟ ਖਾਲ ਘੜਦੇ ਹੁੰਦੇ ਆ ਪਾਣੀ ਲਾਉਣ ਤੋਂ ਇੱਕ ਦਿਨ ਪਹਿਲਾਂ ਪੈਰਾ ਪਰ ਬਹਿ ਕੇ ਚਾਰ ਕੀਲੇ ਦਾ ਖਾਲ ਕਢ ਕੇ ਮੁਰਦੇ ਹੁੰਦੇ ਸੀ ਉਹੀ ਖਾਲ ਦੇ ਵਿੱਚ ਕੰਗਣੀ ਵਾਲੀ ਨਿਕਲਦੀ ਸੀ ਹਲਾ ਕੇ ਫੇਕਣਾ ਦੇਖ ਉਤਰਾਰੇ ਬੰਦੀਆਂ ਮਰ ਜਾਣੀਆਂ ਕਹਿੰਦੇ ਹੁੰਦੇ ਸੀ ਹੁੰਦੇ ਵੇਖ ਉੱਪਰੋਂ ਧੂਆ ਕਿਵੇਂ ਉੱਠਦਾ ਤੋਂ ਉਹਦੇ ਨਾਲ ਗੱਲਾਂ ਕਰਕੇ ਫੇਰ ਦੱਬ ਦਿੰਦੇ ਆਥਣ ਠੰਡੀ ਹੋ ਕਹਿੰਦੇ ਪਾਣੀ ਦੇ ਥੱਲੇ ਦੱਬੀ ਹੋਈ ਠੰਡੀ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਆ ਜਿਹੜੀਆਂ ਬਲੈਂਡਡ ਸ਼ੈਲੈਂਡਰ ਹੁਣ ਕਹਿੰਦੇ 20 ਇਅਰਜ਼ 올ਡ 30 ਇਅਰਜ਼ 올ਡ ਆਪਾਂ ਨੂੰ ਪਤਾ ਹੀ ਹੁੰਦਾ ਸੀ ਵੀ ਰੂੜੀ ਚ ਦੱਬੀ ਹੋਈ ਕਿੰਨੇ ਕ ਆ ਉੱਥੇ ਵਾਲੀ ਹੁਣ ਸਾਰੇ ਇੱਥੇ ਬੜੀਆਂ ਗੱਲਾਂ ਤੋਂ ਬਿਨਾਂ ਵੀ ਅਸੀਂ ਫਾਈਨਸ ਸਕੌਚ ਆ ਬਿਲਕੁਲ ਸਿੰਗਲ ਮਾਲਟ ਪੀਂਦੇ ਆ ਕਈ ਮੇਰੇ ਅਰਗੇ ਜਿਹੜੇ ਲੀਟਰ ਚ ਪੀਂਦੇ ਆ ਇਹਨਾਂ ਸਪਰੇਅ ਵਾਲੇ ਦੇ ਉਹ ਵੀ ਐਉਂ ਕਹਦੇ ਆ ਹੁਣ ਸੋ ਚਲਿਏ ਫੇਰ ਉੱਥੇ ਇਹ ਗੱਲ ਨਾਲ ਕਰਨੀ ਪੈਂਦੀ ਹੈ ਸੋ ਉੱਥੇ ਤਾਂ ਘਰ ਨਹੀਂ ਹੋਇਆ ਬਣੀ ਹੋਈ ਐ ਸਾਰੀ ਭਜਨ ਲਾਲ ਨੇ ਬਣਵਾਈ ਹੋਈ ਐ ਤੇ ਉਧਰ ਉਹ ਹਰਿਆਣੇ ਦੇ ਬੰਦੇ ਨੇ ਤੇ ਹਰਿਆਣੇ 'ਚ ਫਿਰਦੇ ਨੇ ਇੱਧਰ ਪੀਰ ਮੁਹੰਮਦ ਕਹਿੰਦਾ ਮੈਂ ਕੱਠ ਕਰਕੇ ਜਾ ਕੇ ਉਹਨਾਂ ਨੂੰ ਰੋਕਣਾ ਦੇਖੋ ਪੈਂਤੜਾ ਕਿੱਥੇ ਖੜਾ ਹਰਿਆਣੇ ਦੇ ਵਿੱਚ ਹਰਿਆਣੇ ਦੇ ਬੰਦਿਆਂ ਨੇ ਜਾ ਕੇ ਜਿਹੜੀ ਆ ਉਹ ਖੋਦਣੀ ਪੰਜਾਬ ਵਾਲੇ ਪਾਸੇ ਤਾਂ ਅੱਧੀ ਪੂਰਤੀ ਅੱਧੀ ਟਹੀ ਪਈ ਐ ਇੱਟਾਂ ਉੱਥੋਂ ਪਟ ਕੇ ਲੋਕਾਂ ਨੇ ਕੰਧਾਂ ਨੂੰ ਲਾਤੀਆਂ ਬਾਹਰਲਾ ਬਾਗਲਾ ਕਰ ਲਿਆ ਘਰਾਂ ਦਾ ਇੱਧਰ ਤਾਂ ਪੱਟੀ ਦੀ ਨਹੀਂ ਤੇ ਪੀਰ ਮੁਹੰਮਦ ਜਿਹੜਾ ਟਟਰੀ ਵਾਂਗੂ ਬੋਲਦਾ ਟੰਗਾ ਉੱਪਰ ਨੂੰ ਕੀਤੀਆਂ ਉਹਦੇ ਚੇਲੇ ਬਾਲ ਕੇ ਇੱਥੇ ਵੀ ਬਹੁਤ ਹੈ ਉਹ ਕਹਿੰਦਾ ਵੀ ਮੈਂ ਜਾ ਕੇ ਹੁਣ ਅਨੈਲੋ ਨਾਲ ਪੰਗਾ ਲੈਣਾ ਤੇ ਉਹੀ ਪੀਰ ਮੁਹੰਮਦ ਦਾ ਕਦੇ ਸਿਕਸਪਾਸਟ ਜਸਟਿਸ ਨਾਲ ਜੀ ਮੈਂ ਮਾਰਚ ਇਧਰੋਂ ਕੱਢਣਾ ਮੈਂ ਇਧਰੋਂ ਉਧਰ ਨੂੰ ਮਾਰਚ ਕੱਢਣਾ ਤੇ ਇਹ ਹੁਣ ਬੰਦਾ ਕੀ ਕਹਿ ਰਿਹਾ ਉਹਨੂੰ ਸੁਣਿਓ ਇਹਦੇ ਕਰਕੇ ਅਮਨ ਤੇ ਕਾਨੂੰਨ ਦੇ ਹਾਲਾਤ ਅਹਜੇ ਹੋ ਗਏ ਉੱਥੇ ਪੁਲਿਸ ਜਿਹੜੀ ਪੂਰੀ ਤਿਆਰੀ ਚ ਉਹਦੋਂ ਜਾਟ ਅੰਦੋਲਨ ਚਲਿਆ ਹੋਇਆ ਪਰ ਸਵਾਰੀ ਸਮਾਨ ਦੀ ਆਪ ਜ਼ਿੰਮੇਵਾਰਾ ਹੁਣ ਤੁਸੀਂ ਜਿਹੜੇ ਦਿੱਲੀ ਉਤਰਨ ਵਾਲੇ ਹੋ ਆਹ ਦਿਨਾਂ ਚ ਜਾਣ ਵਾਲੇ ਆਪਣਾ ਖਿਆਲ ਰੱਖਿਓ ਪਹਿਲਾ ਮੂਰਥਲ ਦੇ ਵਿੱਚ ਜਾਟਾਂ ਨੇ ਜਿਹੜਾ ਕੋਈ ਸਾਡੇ ਨਾਲ ਕੀਤਾ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਐਫ ਆਈ ਆਰ ਨਹੀਂ ਹੋਈ ਤੇ ਨਾ ਹੀ ਸਿੱਖ ਪਰਿਵਾਰਾਂ ਨੇ ਉਹ ਦੱਸਣ ਦੀ ਕੋਸ਼ਿਸ਼ ਕੀਤੀ ਦੁਨੀਆ ਦੇ ਵਿੱਚ ਇੱਥੇ ਹੀ ਬੈਠੇ ਆ ਕੋਈ ਭਾਰਤ ਚ ਨਹੀਂ ਬੈਠੇ ਇੱਥੇ ਜ਼ਿਆਦਾਤਰ ਬੈਠੇ ਆ ਉਹ ਦੱਬਰ ਜਿਹੜੇ ਸਾਰਾ ਕੋਈ ਗਵਾਹ ਬੈਠੇ ਪਰ ਦੱਸਣ ਯੋਗੇ ਨਹੀਂ ਹੈ ਇਹ ਲੰਗੜਾ ਵਾਲਿਆਂ ਦਾ ਕੁਝ ਨਹੀਂ ਜਾਣਾ ਹੈ ਹਰ ਚਾਰ ਇੰਚ ਕੰਨ ਨੇ ਹੱਥਾਂ 'ਚ ਹੁੱਕੇ ਨੇ ਇਹਨਾਂ ਦਾ ਕੋਈ ਨਹੀਂ ਲੱਗਦਾ ਕੁਝ ਇਹਨਾਂ ਤੋਂ ਬਚ ਕੇ ਰਹੋ ਇਹ ਗੱਲ ਸਹੀ ਹੈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰਾ ਚਾਹੇ ਅੰਮ੍ਰਿਤਸਰ ਸਾਹਿਬ ਦੀ ਟਿਕਟ ਲਾਓ ਚਾਹੇ ਚੰਡੀਗੜ੍ਹ ਦੀ ਲਾਓ ਸੜਕ 'ਤੇ ਉਹ ਦਿਨਾਂ 'ਚ ਨਾ ਜਾਓ ਜਦ ਤੁਹਾਨੂੰ ਪਤਾ ਹੋਵੇ ਪਲੀਜ਼ ਇੱਥੋਂ ਹੀਲਾ ਕਰਕੇ ਜਾਓ ਤੋਂ ਇਹ ਉਧਰਲੇ ਪਾਸੇ ਹਰਿਆਣੇ ਵਾਲੇ ਪਾਸੇ ਅਨੈਲੋ ਕਹਿੰਦਾ ਕਿ ਇਧਰੋਂ ਪੀਰ ਮੁਹੰਮਦ ਕਹਿੰਦਾ ਵੀ ਮੈਂ ਉਹ ਨਹਿਰ ਨਹੀਂ ਹੁਣ ਪੱਟਣ ਦੇਣੀ ਦੇਖੋ ਬਿਆਨ ਕਿੱਧਰ ਨੂੰ ਨੇ ਉਹਦੇ ਵਿੱਚ ਕੀ ਇਹਦੇ ਵਿੱਚ ਕਹਾਣੀ ਕੀ ਹੈ ਉਹ ਇਹ ਹੈ ਕਿ ਕੁਝ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਜੇ ਵਿਗੜਦੇ ਹੈ ਹੋ ਸਕਦਾ ਅਗਲੀ ਸਰਕਾਰ ਤੋਂ ਪਹਿਲਾਂ ਰਾਸ਼ਟਰਪਤੀ ਰਾਜ ਲੱਗ ਜਾਵੇ ਅਨੇ ਪਤਾ ਨਹੀਂ ਕੀ ਆਉਣੀ ਹੈ ਪਰ ਕਈਆਂ ਨੂੰ ਪਤਾ ਵੀ ਕੀ ਆਉਣੀ ਹੈ ਕਈ ਤਾਂ ਡੱਕਾ ਸਿੱਟਿਆ ਜਿਵੇਂ ਅਖੀਰ 'ਚ ਮੱਥਾ ਟੇਕਣ ਵਲੇ ਆਪਾਂ ਡੱਕਾ ਸਿੱੜਦੇ ਆ ਉਹ ਤਾਂ ਸੱਟਿਆ ਡੱਕਾ ਪਤਾ ਲੱਗ ਗਿਆ ਅੰਦਰੋਂ ਸਭ ਨੂੰ ਪਤਾ ਤੇ ਹੁਣ ਜਿਹੜਾ ਟਿੰਡ ਚ ਕਾਨਾ ਪੈਣਾ ਉਹ ਇਹ ਪੈਣਾ ਜ਼ਰੂਰਤ ਆ ਫਿਰ ਇੱਧਰ ਨੂੰ ਜਾਣ ਦੀ ਜਗ੍ਹਾ ਜੇ ਉੱਪਰ ਨੂੰ ਨੰਗਲ ਵਾਲੇ ਪਾਸੇ ਨੂੰ ਜਾਮੋ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਬਦੋ ਬਦੀ ਭਰੀਆਂ ਜਾਂ ਹਰੀਕੇ ਨੂੰ ਉੱਥੇ ਦੇਖੋ ਡੱਕ ਕੇ ਮਾਰਾ ਜਾ ਉਹਨਾਂ ਦਾ ਮੂੰਹ ਮੋੜ ਕੇ ਦੇਖੋ ਪੀਰ ਮਾਮਬਤ ਜੀ ਫਿਰ ਪਤਾ ਲੱਗੇ ਕਿਹੜੇ ਪਾਪ ਵਿਕਦੀ ਆ ਜਿਹੜੀ ਰਾਜਨੀਤੀ ਤਾਂ ਹੋ ਸਕਦੀ ਆ 5 ਸਾਲਾਂ ਬਾਅਦ ਵੋਟਾਂ ਵੇਲੇ ਪਰ ਜਿਹੜੀ ਸਦਾ ਹੀ ਰਾਜਨੀਤੀ 5 ਸਾਲ ਕਰਨੀ ਆ ਇਸ ਨੇ ਪੰਜਾਬ ਦਾ ਦਿਨ ਲਿਆਂਦੇ ਹੋਏ ਨੇ ਜਿਹੜਾ ਪੱਠਾ ਬੈਠਾ ਹੋਇਆ ਪੰਜਾਬ ਦਾ ਪਾਣੀ ਸਾਡਾ ਮੁੱਖ ਗਿਆ ਨਸ਼ੇ ਨੇ ਸਾਨੂੰ ਖਾ ਲਿਆ ਜ਼ਹਿਰੀਲੀਆ ਗੈਸਾਂ ਨੇ ਜ਼ਹਿਰੀਲੇ ਪਾਣੀਆਂ ਨੇ ਸਾਡੇ ਲੋਕ ਨਪੁੰਸੰਗ ਕਰਤੇ ਏਡੇ ਮਿਹਡੇ ਜਵਾਕ ਜੰਮਦੇ ਨੇ ਪਿੰਡਾਂ ਦੇ ਵਿੱਚੋਂ ਕੋਈ ਅੰਨਾ ਜੰਮਦਾ ਹੈ ਕੋਈ ਟੇਡਾ ਜੰਮਦਾ ਕਿਸ ਦੀਆਂ ਲੱਤਾਂ ਹੈ ਨਹੀਂ ਕਿਸ ਦੀਆਂ ਬਾਹਾਂ ਹੈ ਨਹੀਂ ਕਿੰਨੀ ਵਾਰ ਲੜਕੀ ਪ੍ਰਭਜੋਤ ਨਸਿਆ ਆਪਣੇ ਤੇ ਆ ਕੇ ਆਹ ਹਾਲ ਹੈ ਹਲੇ ਵੀ ਉਹ ਕਹਦਾ ਵੇ ਜਾਂਦੇ ਹੋਏ ਹੁਣ ਜਾਂਦੇ ਚੋਰ ਦੀ ਤੜਾਗੀ ਸੀ ਕੁਛ ਨਾ ਕੁਛ ਤਾਂ ਕਰੋ ਹੁਣ ਆਹ ਹਰਕਤ ਦੇ ਵਿੱਚ ਆ ਮਸ਼ੀਨਰੀ ਪੀਰ ਮੁਹੰਮਦੀਏ ਇਹ ਪਤਾ ਨਹੀਂ ਕਿੱਧਰੋਂ ਜਿਹੜੀ ਫੈਡਰੇਸ਼ਨ ਆਏ ਤੇ ਕੌਣ ਇਹਨੂੰ ਰੱਖਦਾ ਹੈ ਤੇ 55 ਸਾਲ ਦਾ ਕਿਹੜੀ ਜਗ੍ਹਾ ਹੁਣ ਇਹ ਪੜਦਾ ਇਹ ਤਾਂ ਇਹ ਦੱਸ ਸਕਦਾ ਪਰ ਹੁਣ ਇਹ ਅਨੈਲੋ ਵਾਲਿਆਂ ਨਾਲ ਟੱਕਰ ਲੈਣ ਨੂੰ ਫਿਰਦਾ ਬਾਦਲਾਂ ਦੇ ਭਤੀਜਿਆਂ ਨਾਲ ਤਾਂ ਸਿਸਟਮ ਨੂੰ ਸਲੂਟ ਆ ਮੈਂ ਭਾਰਤ ਦੇ ਨੂੰ ਕਰਦਾ ਜੇ ਕਿਤੇ ਚਲ ਪਰਵੇਲ ਤਾਂ ਕਰਦਾ ਸਿੱਖਾਂ ਲਈ ਤਾਂ ਨਹੀਂ ਹੋਇਆ ਪਰ ਕਿਤੇ ਤਾਂ ਕਰਦਾ ਅੰਦਰ ਬੈਠੇ ਨਾ ਚਟਾਲੇ ਹੋਣੀ ਤੇ ਅਜੇ ਚਟਾਲਾ ਹੋ ਸੋਸ ਹੋ ਸਕਦਾ ਵੀ ਹਰੀ ਪਾਗ ਵਾਲਾ ਟੋਹਰੇ ਵਾਲਾ ਤੋਤੇ ਰੰਗੀ ਪਾਗ ਵਾਲਾ ਕਦੇ ਫੜਿਆ ਜਾਊ ਉਹਨਾਂ ਨੇ ਤੁੰਨ ਤਾਂ ਕਰੋੜਾਂ ਹੀ ਕਮਾਉਣ ਵਾਲਿਆਂ ਨੂੰ ਇਉਂ ਹੋਈਆਂ ਕਾਸ਼ ਕਦੇ ਪੰਜਾਬ ਦੇ ਪ੍ਰਸ਼ਾਸਨ ਲੀਡਰ ਇਸ ਤਰ੍ਹਾਂ ਹੋਣ ਪਰ ਇੱਥੇ ਨਹੀਂ ਹੋਣਾ ਕਿਉਂਕਿ ਇੱਥੇ ਰੂਲ ਕਰਨ ਵਾਲੇ ਚਾਚੇ ਮਾਮੇ ਭੂਆ ਦੇ ਪੁੱਤ ਨੇ ਸੱਤ ਅੱਠ ਟੱਬਰਾਂ ਦੇ ਵਿੱਚੋਂ ਜਦ ਕੋਈ ਰੂਲ ਕਰਦਾ ਫੇਰ ਨਹੀਂ ਕੋਈ ਫੜਦਾ ਹੋਰ ਜੱਗੋਂ 13ਵੀਂ ਗੱਲ ਹੋ ਜਵੇ ਤਾਂ ਰੱਬ ਜਾਣਦਾ ਸੋ ਇਸ ਮੁੱਦੇ ਤੇ ਹੁਣ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਖਰਾਬ ਹਾਲਤ ਨੇ ਜਿਹੜੇ ਉਹ ਖਰਾਬ ਹੋ ਸਕਦੇ ਆ ਆ ਕਿੰਨਾ ਕੁ ਉਹਦੇ ਨਾਲ ਬੰਦੇ ਜਾਂਦੇ ਆ ਪੀਰ ਮੁਹੰਮਦ ਨਾਲ 23 ਤਰੀਕ ਦੀ ਗੱਲ ਹੈ ਕੀ ਕੁਝ ਹੋ ਰਿਹਾ ਜਾਟ ਨੇ ਜਿਹੜੇ ਉਹ ਬਿਲਕੁਲ ਢੇੜਾ ਕੱਢ ਰਹੇ ਨੇ ਸ਼ੰਭੂ ਬਾਰਡਰ ਤੱਕ ਹਰਿਆਣੇ ਤੱਕ ਹਰਿਆਣਾ ਉਹਦੇ ਤੱਕ ਹੁੰਦਾ ਇਹਦੇ ਲਈ ਸਾਜ਼ਗਾਰ ਨਹੀਂ ਹਾਲਾਤ ਇਹ ਹਾਲਤ ਇਸ ਸਮੇਂ ਵਧੀਆ ਨਹੀਂ ਆਪਣਾ ਖਿਆਲ ਰੱਖੋ ਜਾਨਾ ਪੰਜਾਬ ਦੇ ਆਉਣ ਵਾਲੇ ਦਿਨ 23 ਤਰੀਕ ਦੇ ਆਲੇ-ਦਾਲ ਗੜਬੜ ਹੋ ਸਕਦੀ ਪਾਣੀ ਜੀ ਚ ਵਗਿਆ ਨਹੀਂ ਉਹਨੂੰ ਪੂਰਨ ਦੀਆ ਤੇ ਉਹਨੂੰ ਖਦਣ ਦੀਆ ਗੱਲ ਕਰਦੇ ਆ ਪੰਜਾਬ ਵਾਲੇ ਪਾਸੇ ਨਹੀਂ ਪੰਜਾਬ ਤੋਂ ਦੂਜੇ ਪਾਸੇ ਹਰਿਆਣਾ ਚ ਜਾ ਕੇ ਸਾਹ ਹਰਦੀਪ ਸਿੰਘ ਜੀ ਲਾਈਨ ਨੰਬਰ 2 ਗਿੱਲ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਜੀ ਸੋਢੀ ਸਾਹਿਬ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਸੀਂ ਅੱਜ ਬੜੇ ਵਿਸ਼ੇ ਛੇੜਿਆ ਬੜੇ ਮਤਲਬ ਕੱਠੇ ਪਹਿਲਾਂ ਉਹ ਜਿਹੜਾ ਕ੍ਰਿਟਸਾਈਜ਼ ਉਹ ਮੁੰਡੇ ਮਰੇ ਤੇ ਫਿਰ ਤੁਸੀਂ ਸਤਸ੍ਰੀਕਾਲ ਵਾਲਾ ਰੂੜੀ ਜੀ ਦੱਬੀ ਵਾਲਾ ਹਨ ਸਾਰੇ ਅਛੇੜੇ ਆ ਤੇ ਮੈਂ ਨਾ ਸਿਰਫ ਤੁਹਾਡੇ ਡੇਢ ਦੋ ਮਿੰਟ ਲਵਾਂਗਾ ਹੁਣ ਗੱਲਾਂ ਤਾਂ ਕਹੀ ਸੀ ਪਰ ਕਰਾਂਗੇ ਸਿਰਫ ਆਪਾਂ ਐਸਵਾਈਐਲ ਡੈਰ ਤੇ ਪਰ ਉਹਦੇ ਨਾਲੋਂ ਪਹਿਲਾਂ ਇੱਕ ਚੀਜ਼ ਤੁਹਾਡੇ ਵਿਸਰ ਗਈ ਕਿਸੇ ਕਾਲਰਾਂ ਦੇ ਵੀ ਵਿਸਰ ਗਈ ਮੈਂ ਉਹ ਤੁਹਾਨੂੰ ਯਾਦ ਵੀ ਕਰਾਉਣਾ ਚਾਹੁੰਦਾ ਤੇ ਧੰਨਵਾਦ ਵੀ ਕਰਨਾ ਚਾਹੁੰਦਾ ਜਰਮਨ ਗਵਰਨਮੈਂਟ ਦਾ ਵੇਖੋ ਪਰਸੋਂ ਦੀ ਗੱਲ ਹੈ ਮਤਲਬ ਜੇ ਕੋਈ ਗੱਲਬਾਤ ਸਹੀ ਹੋ ਜੇ ਫਿਰ ਸਾਰੇ ਵੀ ਸਹੀ ਹੈ ਜੇ ਕੋਈ ਬਾਣਾ ਵਾਪਰ ਜੇ ਫਿਰ ਸਾਰਿਆਂ ਨੂੰ ਯਾਦ ਆ ਜਾਂਦੀ ਆ ਵੀ ਐਵੇਂ ਹੋ ਸਕਦਾ ਸੀ ਐਵੇਂ ਹੋ ਸਕਦਾ ਸੀ ਤੇ ਉਹਨਾਂ ਜਾਂ ਨੇ ਉਹ ਕਾਰ ਬਖਾਈ ਜਿਹੜਾ 300 ਬੰਦਾ ਬਚਾ ਲਿਆ ਕਹਾਣੀ ਐ ਸੀ ਵੀ ਜਟਾਏਰਵਾਇਸ ਦੀ ਫਲਾਈਟ ਬੰਬੇ ਤੋਂ ਉੱਡੀ ਸੀ ਤੇ ਹੀਥਰੋ ਉਤਰਨੀ ਸੀ ਤੇ ਇੰਡੀਆ ਤੋਂ ਆਈ ਸੀ ਮੋਸਟਲੀ ਪੰਜਾਬੀ ਮਤਲਬ ਇੰਡੀਅਨ ਹੋਣਗੇ ਪੰਜਾਬੀ ਨਹੀਂ ਚਲੋ ਇਨਸਾਨ ਤਾਂ ਸਿਗੇ ਨਾ ਕਿੱਥੋਂ ਦੇ ਵੀ ਸੀ ਜਿਸ ਵੇਲੇ ਉਹ ਜਹਾਜ਼ ਜਰਮਨ ਦੇ ਉੱਤੇ ਉੱਡ ਰਿਹਾ ਸੀ ਤੇ ਉਹ ਜਹਾਜ਼ ਦਾ ਕੰਟਰੋਲ ਰੂਮ ਨਾਲੋਂ ਨਾਤਾ ਟੁੱਟ ਗਿਆ ਤੇ ਜਰਮਨ ਗਵਰਨਮੈਂਟ ਦੇ ਅਸ਼ਕੇ ਜਾਈਏ ਉਹਨਾਂ ਦੀ ਸੋਚ ਸਲਾਮ ਅਰਦਾਸ ਲੋ ਕਰਦਾ ਕਿ ਉਹਨਾਂ ਨੇ ਦੋ ਆਪਣੇ ਫਾਈਟਰ ਜਹਾਜ਼ ਇੱਕ ਸਨ ਇਹ ਤੇ ਇੱਕ ਖੜਲਾਤ ਹੋਇਆ ਕਿਉਂ ਫਾਈਟਰ ਦੀ ਸਪੀਡ ਬਹੁਤ ਹੁੰਦੀ ਆ ਵੀ ਇਹਨੂੰ ਕਿ ਹਾਈ ਜੈਨਾ ਕਰਕੇ ਲੈ ਜਾਵੇ ਨਾ ਦੇਵੇ ਔਰ ਕੁਝ ਮਿੰਟਾਂ ਬਾਅਦ ਉਹ ਜਿਹੜਾ ਪਲੇਨ ਦਾ ਫੇਰ ਕਨੈਕਸ਼ਨ ਬਣ ਗਿਆ ਕੰਟਰੋਲ ਰੂਮ ਨਾਲ ਤੇ ਸਾਰੇ ਬੰਦੇ ਦੀ ਜਿੰਦਾ ਸਾਹ ਸਾ ਆ ਗਿਆ ਜਾਂ ਮੈਂ ਕਹਿੰਦਾ ਵੀ ਵੇਖੋ ਉਹਨਾਂ ਦੇ ਉਹਦੇ ਜਾਣ ਨਾ ਲੋਕ ਵੀ ਬੰਦਿਆਂ ਨੂੰ ਫਾਇਦਾ ਹੋਇਆ ਹੀ ਹੋਇਆ ਲੇਕਿਨ ਉਹਨਾਂ ਆ ਤੇ ਬੜੀਆਂ ਮਨੁੱਖੀ ਜਾਨ ਬਚ ਸਕਦੀਆਂ ਕਿਉਂਕਿ ਜਦੋਂ ਮਲੇਸ਼ੀਆ ਦਾ ਜਹਾਜ਼ ਵੀ ਗਿਰਿਆ ਸੀ ਸਮੁੰਦਰ ਦੇ ਤੇ ਉਦੋਂ ਵੀ ਸਾਰੇ ਜਿਹੜੇ ਫਾਈਟਰ ਜਹਾਜ਼ ਲੱਗੇ ਹੁੰਦੇ ਤੇ ਉਹਦੀ ਘਟੋੜ ਵੜ ਪਿਕਚਰ ਕਲੀਅਰ ਹੁੰਦੀ ਤੇ ਮੈਂ ਇਹ ਧੰਨਵਾਦ ਕਰਦਾ ਜਰਮਨ ਗਵਰਨਮੈਂਟ ਦਾ ਨੰਬਰ 2 ਦੇ ਉੱਤੇ ਮੈਂ ਹੁਣ S Y ਦੇ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੇਖੋ ਉਹ ਮੁੱਦਾ ਹੈ ਹੀ ਨਹੀਂ ਉਹ ਬਣਾਇਆ ਗਿਆ ਕ੍ਰੀਏਟ ਕੀਤਾ ਗਿਆ ਇੱਕ ਰਾਜਨੀਤੀ ਦਾ ਲਾਹਾ ਲੈਣ ਵਾਸਤੇ ਇੱਕ ਪੀਰ ਨਹੀਂ ਉਹ ਪੰਜਾਬ ਦੇ بڑے ਪੀਰ ਬੈਠੇ ਜੇ ਤੁਸੀਂ ਕਾਂਗਰਸ ਵਾਲੇ ਪਾਸਿਓਂ ਵੇਖਣਾ ਤਾਂ ਮਨਿੰਦਰਜੀਤ ਸਿੰਘ ਬਿੱਟਾ ਉਥੇ ਪੀਰ ਮੁਹੰਮਦ ਬੈਠਾ ਜਿਹੜਾ ਕੋਈ ਗੱਲ ਕਦੀ ਹੁੰਦੀ ਵੀ ਨਹੀਂ ਤੇ ਉਹਦੇ ਤੇ ਵੀ ਬਿਆਨਾਂ ਦੀਆਂ ਧੋਪਾਂ ਛਿੜਦਾ ਮਨਿੰਦਰਜੀਤ ਸਿੰਘ ਬੇਟਾ ਤੇ ਇਧਰੋਂ ਜਿਹੜੇ ਅਮਰਜੀਤ ਮੈਤਾ ਤੇ ਨੇ ਪਹਿਲਾਂ ਮੁੰਡਿਆਂ ਦਾ ਕਾਹਨ ਕਰਾਤਾ ਉਹਨਾਂ ਨੂੰ ਸ਼ਕਲ ਦੇ ਦੇ ਕੇ ਮੁਕਾਬਲਿਆਂ ਤੇ ਪਰਵਾਹ ਆਪ ਬਚਨ ਲੈ ਕੇ ਕੁਰਸੀਆਂ ਲੈ ਕੇ ਕੋਈ ਐਸਜੀਪੀਸੀ ਦਾ ਮੈਂਬਰ ਤੇ ਕੋਈ ਕੋਈ ਬੈਠਿਆ ਇਹਨਾਂ ਕੋਲੋਂ ਬਚਣ ਦੀ ਲੋੜ ਹੈ ਰੇ ਗੱਲ ਜਿਹੜੀ ਝਟਲਿਆਂ ਦੀ ਹੈ ਜੋ ਚਟਾਲਿਆਂ ਦੇ ਨਾਲ ਪੱਗ ਬਾਦਲ ਸਾਹਿਬ ਨੇ ਵਟਾਈ ਨਾਲ ਪਰ ਇਹਨਾਂ ਨੇ ਪੱਗ ਦੇ ਵਿੱਚੋਂ ਆਪਣਾ ਮਤਲਬ ਕੱਢਿਆ ਕਿਉਂਕਿ ਉਹ ਚਟਾਲਿਆਂ ਨੂੰ ਉਹਨਾਂ ਫਾਇਦਾ ਹੋਇਆ ਨਹੀਂ ਹੋਇਆ ਇਹਨਾਂ ਨੇ ਆਪਣੀ ਪੂਰੀ ਬਾਲਾਸਰ ਵਾਲਾ ਫਾਰਮ ਵੀ ਤੇ ਜਿਹੜਾ ਦਿੱਲੀ ਵਾਲਾ ਗੁੜਗਾਓ ਸੈਵਨ ਸਟਾਰ ਤੇ ਇਹ ਸਾਰਾ ਕੁਝ ਮੁਕਤ ਮੁੱਲਾ ਮਾਰਿਆ ਜਗ੍ਹਾ ਉੱਤੋਂ ਇਹੋ ਜੀ ਪੱਗ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਵਟਾਈ ਅਹਿਮਦ ਅਸ਼ਬਦਾਲੀ ਦੇ ਭਤੀਜੇ ਨਾਲ ਇਤਿਹਾਸ ਪੜਿਆ ਯਾਦ ਹੋਏਗਾ ਤੁਹਾਨੂੰ ਪਰ ਉਹ ਉਹਨੇ ਮਹਾਰਾਜਾ ਰਣਜੀਤ ਸਿੰਘ ਨੇ ਕੋ ਆਪਣੇ ਵਾਸਤੇ ਨਹੀਂ ਸੀ ਵਟਾਈ ਉਹਨੇ ਸਾਰੀ ਸਿੱਖ ਕੌਮ ਵਾਸਤੇ ਜਾਂ ਪੰਜਾਬ ਵਾਸਤੇ ਜਾਂ ਇੰਡੀਆ ਦੇ ਵਟਾਈ ਸੀ ਉਹਨਾਂ ਨੇ ਪੱਗ ਵਟਾ ਕੇ ਤੇ ਉਹਦੇ ਚੋਂ ਕੋਈ ਨੂਰ ਦਾ ਹੀਰਾ ਕੱਢਿਆ ਤੇ ਇਹਨਾਂ ਨੇ ਕੋ ਨੂਰ ਦਾ ਹੀਰਾ ਕੱਢਿਆ ਆਪਣੇ ਵਾਸਤੇ ਤੇ ਇਹਨਾਂ ਨੂੰ ਉਹ ਅਕਾਲੀ ਜਿਹੜੇ 82 83 ਸਾਲਾਂ ਵਾਲੇ ਜਿਹੜੇ ਆ ਨਾ ਇੱਕ ਆਵਾਜ਼ ਮਾਰਦੇ ਸੀ 40000 ਖਮਰਸਾ ਮਰਜੀ ਬੜਾ ਬਣ ਕੇ ਪਹੁੰਚ ਜਾਂਦਾ ਸੀ ਉਹਨਾਂ ਵਿਚਾਰਿਆਂ ਦੇ ਹੱਥਾਂ ਦੇ ਵਿੱਚ ਉਹ ਲੈ ਹੁੰਦੇ ਹੀ ਟੈਚੀ ਟੁੱਤੀ ਅਜੇ ਇੰਨੇ ਪਰਚਲਤ ਨਹੀਂ ਸੀ ਉਹਦੇ ਵਿੱਚ ਉਹਨਾਂ ਦਾ ਅਗ ਪਰਨਾ ਤੇ ਇੱਕ ਤੇ ਖੇਸ ਉਹ ਪਾ ਕੇ ਵਿਚਾਰੇ ਤੇ ਕਦੀੋ ਫਰੀਦਕੋਟ ਜੇਲ ਕਦੀ ਫਿਰੋਜ਼ਪੁਰ ਜੇਲ ਕਦੀ ਲੁਧਿਆਣੇ ਜੇਲ ਉਹ ਜੇਲਾਂ ਕੱਟਦੇ ਰਹੇ ਤੇ ਇਹ ਕੁਰਸੀਆਂ ਮਾਣਦੇ ਉਹ ਘਾਲੀ ਹੁਣ ਨਹੀਂ ਲੱਭਣੇ ਉਹ ਵਿਚਾਰਿਆਂ ਦਾ ਨਾਮ ਮੁੱਲ ਪਿਆ ਉਹ ਮਰ ਗਏ ਚਲੇ ਗਏ ਜਹਾਨੋਂ ਤੇ ਉਹਨਾਂ ਦੇ ਸਲਾਮ ਹੈ ਉਹਨਾਂ ਦੀ ਸੋਚ ਨੂੰ ਜਿਹੜੇ ਇਹਨਾਂ ਨੂੰ ਕੁਰਸੀਆਂ ਦੇ ਗਏ ਪਰ ਆਪਣੇ ਉਹ ਘਰੋਂ ਵੀ ਕਈ ਬੇਕਾਰ ਹੋ ਗਏ ਤੇ ਕਈਆਂ ਦੇ ਨਿਆਣੇ ਕਿ ਮਰਦੇ ਪਏ ਆ ਤੇ ਉਹਨਾਂ ਅਕਾਲੀਆਂ ਦਾ ਕੋਈ ਮੁੱਲ ਨਹੀਂ ਪਿਆ ਤੇ ਹੁਣ ਗਾ ਧਿਆਨ ਨਾਲ ਪੀਰ ਮੁਹੰਮਦ ਦੇ ਜਹਾਜ ਤੇ ਚੜ੍ਹਿਆ ਕਿਉਂਕਿ ਇਹਨੇ ਵੀ ਉਹੀ ਕਰਨੀ ਹੈ ਜੋ ਬਾਦਲ ਸਾਹਿਬ ਕਰਦੇ ਰਹੇ ਧੰਨਵਾਦ ਤੁਹਾਡਾ ਜੀ ਸਿੰਘ ਲਾਈਨ ਨੰਬਰ 4 ਹਲੋ ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਸਤਿ ਸ਼੍ਰੀ ਅਕਾਲ ਬਾਈ ਜੀ ਅਜੀਤ ਸਿੰਘ ਜੀ ਹੁਣ ਸਾਰਾ ਕੁਝ ਜਾਂਦਾ ਦੇ ਕਿਉਂ ਹੁਣ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਦੇ ਇਸ ਵਲ ਆਇਆ ਕਿ ਇੱਧਰ ਵੱਲ ਤਾਂ ਹੈ ਚਾਰ ਹਰਿਆਣਾ ਰੋਡ 'ਤੇ ਬੱਸੇ ਸ਼ੀਸ਼ੇ ਭੰਨ ਤੇ ਇਹਨਾਂ ਨੇ ਤੁਸੀਂ ਹਲਾਰਾ ਦੇ ਲੋ ਕੀ ਬਣਨਗੇ ਫਿਰ ਉਹੀ ਗੱਲ ਆ ਜਾਂਦੇ ਜਾਂਦੇ ਇਹਨਾਂ ਨੇ ਗਵਰਨਮੈਂਟ ਨੂੰ ਇਹ ਲੋਟ ਆਈਸੋਲੇਟ ਕਰਨਾ ਉਹ ਇਹਨਾਂ ਦਾ ਸਾਰ ਮਨੋਤ ਹੈ ਇਹਨਾਂ ਦਾ ਹੋਰ ਇਹਦੇ ਵਿੱਚ ਕੁਝ ਨਹੀਂ ਹੈ ਥੈਂਕ ਯੂ ਜੀ ਸ਼ਿਵਦੇਵ ਜੀ ਲਾਈਨ ਨੰਬਰ 5 ਸ਼ਿਪ ਸਿੰਘ ਤੇ ਦੇ ਦੇ ਸੰਤਾਂ ਦੀ ਵੀਡੀਓ ਨਾਲ ਇਹ ਸਰਦਾਰ ਪੀਰ ਮੁਹੰਮਦ ਬੈਠਾ ਵਾ ਇੱਕ ਨਾ ਬਨਾਰਸ ਦਾ ਉਹ ਕੋਈ ਲਾਲਾ ਜਿਹਾ ਸੀਗਾ ਕੋਈ ਚੂਹਾ ਜਿਹਾ ਪਾਇ ਖੱਟਾ ਜਿਹਾ ਨਾਲ ਗੱਲਾਂ ਕਰਦਾ ਤੇ ਨਾਲ ਸਰਦਾਰ ਸਾਹਿਬ ਬੈਠੇ ਆ ਉਹ ਇਹਨਾਂ ਤੋਂ ਪਰਨ ਕਰਾਈ ਜਾਂਦਾ ਤੁਸੀਂ ਗੋਲੀ ਨਹੀਂ ਚਲਾਉਣੀ ਤੁਸੀਂ ਕਿਸੇ ਨੂੰ ਮਾਰਨਾ ਨਹੀਂ ਇਹ ਸਰਦਾਰ ਸਾਹਿਬ ਹੱਥ ਜੋੜ ਕੇ ਕਹਿੰਦਾ ਅਸੀਂ ਪਰਨ ਕਰਦੇ ਆਂ ਤਾਂ ਤਾਂ ਕਹਿੰਦੇ ਉਹ ਸਿੰਘਾ ਐ ਪਰਨ ਕਰੀ ਜਾਇਆ ਕਰੋ ਹੱਥ ਨਾਲ ਜੋੜੀ ਜਾਇਆ ਕਰੋ ਪਹਿਲਾਂ ਆਪਾਂ ਗਲਤੀ ਨਹੀਂ ਕਰਦੇ ਗਲਤੀਆਂ ਤੇ ਇਹ ਪਹਿਲਾਂ ਕਰਦੇ ਆ। ਤੋਂ ਬਾਈ ਜੀ ਇਹ ਕਾਗਜੀ ਸ਼ੇਰ ਆ ਇਹਨਾਂ ਨੇ ਪਹਿਲਾਂ ਮੁੰਡੇ ਬਹੁਤ ਮਰਵਾਏ ਆ ਜੇ ਹੁਣ ਵੀ ਕਦੇ ਐਹੇ ਜੀ ਨੋਬਤ ਆਉਂਦੀ ਹੈ ਤੇ ਕੇ ਮੂਰੇ ਲਾਉਣਾ ਚਾਹੀਦਾ ਪਹਿਲਾਂ ਤੁਸੀਂ ਸ਼ੀਦੀ ਦਿਓ ਤੁਸੀਂ ਨਾ ਰੋਕੋ ਮਗਰ ਅਸੀਂ ਲਗਾਵਾਂਗੇ। ਥੈਂਕ ਯੂ ਬਾਈ ਜੀ। 파ਰਖੰਦੇਸ਼ ਧੰਨਵਾਦ ਜੀ। ਡਾਂਡੀ ਮੰਗਤਰੀ ਲਾਈਨ ਨੰਬਰ ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਤੇ ਦੇਖੋ ਜੀ ਪਾਣੀਆਂ ਦੇ ਮੁੱਦੇ ਤੇ ਅਜੇ ਕੋਈ ਏਦਾਂ ਦਾ ਫੈਸਲਾ ਨਹੀਂ ਹੋਇਆ ਜਿੱਦਾਂ ਪਾਕਿਸਤਾਨ ਨੇ ਵੀ ਜਿਹੜਾ ਪਾਕਿਸਤਾਨ ਦੇ ਨਾਲ ਇਹ ਸਮਝੌਤਾ ਕੀਤਾ ਸੀ ਨਾ ਵੀ 1948 ਦੇ ਵਿੱਚ ਇਹ ਵਿਸ਼ਵ ਬੈਂਕ ਨੇ ਤਾਂ ਇਹ ਸਮਝੌਤਾ ਪਹਿਲਾਂ ਪਾਕਿਸਤਾਨ ਵੀ ਨਹੀਂ ਪਾਣੀ ਲੈਣ ਦੇਣ ਨਹੀਂ ਕਰ ਰਿਹਾ ਸੀਗਾ ਤੇ ਨਾ ਹੀ ਪੰਜਾਬ ਪੰਜਾਬ ਦਾ ਗਲਜਾਰੀਗਰ ਨੰਦਾ ਨੇ ਜ਼ਰੂਰ 1955 ਦੇ ਵਿੱਚ ਇਹ ਸਮਝੌਤੇ ਬਾਤੀ ਗੁਪਤ ਮੀਟਿੰਗਾਂ ਕਰਕੇ ਜਿੱਦਾਂ ਕਾਂਗਰਸ ਨੇ ਬਹੁਤ ਜਿੱਦਾਂ ਵੀ ਕੀਤਾ ਇਹ ਮੇਲਜੋਲ ਰਲ ਕੇ ਸਰਕਾਰਾਂ ਦੇ ਨਾਲ ਸੈਂਟਰ ਦੀ ਨਾਲ ਇਹ ਸਮਝੌਤਾ ਹੋਇਆ 1979 ਵਿੱਚ ਹਰਿਆਣੇ ਨੂੰ ਪਾਣੀ ਦੇਣ ਦੇ 1 ਕਰੋੜ ਰੁਪਇਆ ਦਿੱਤਾ ਜਿੱਦਾ ਕਹੋ ਵੀ ਇਹ ਹਰਿਆਣੇ ਨੇ ਦੇ ਦਿੱਤਾ ਪੰਜਾਬ ਨੂੰ ਹੁਣ ਪ੍ਰਕਾਸ਼ ਸਿੰਘ ਬਾਦਲ ਨੇ 2016 ਚ ਦੇ ਦਿੱਤਾ ਉਹ ਬੈਕ ਉਹਨਾਂ ਨੂੰ 1 ਕਰੋੜ ਰੁਪਇਆ ਲਓ ਇਹ ਕੰਮ ਵਧੀਆ ਕੀਤੀ ਪ੍ਰਕਾਸ਼ ਸਿੰਘ ਬਾਦਲ ਨੇ ਵੈਸੇ ਜੇ ਲਿਖਤ ਦੀ ਰੂਪ ਤੇ ਕੀਤਾ ਜਾਵੇ ਨਾ ਜਿੱਦਾਂ ਵੀ ਪਾਕਿਸਤਾਨ ਦਾ ਤਾਂ ਸਮਝੌਤਾ ਕਰਾਤਾ ਹੀ ਬਿਸ਼ਪਰ ਬੈਂਕ ਨੇ ਲਿਖਤੀ ਰੂਪ ਦੇ ਵਿੱਚ ਜਿਹੜਾ ਹੈਗਾ ਅਸਲੀ ਹੱਕਦਾਰ ਪੰਜਾਬ ਹੀ ਆ ਕੋਈ ਐਸਾ ਦਾ ਸਬੂਤ ਨਹੀਂ ਮਿਲਦਾ ਕਿ ਐਨੀ ਜਿੱਦਾਂ ਵੀ ਪੂਰਾ ਸਮਝੌਤਾ ਕੀਤਾ ਗੁਪਤ ਮੀਟਿੰਗਾਂ ਚ ਕਰ ਕਰਕੇ ਉਹ ਕਾਗਜ਼ਾਂ ਦੇ ਵਿੱਚ ਨਹੀਂ ਲਿਖਿਆ ਗਿਆ ਕਿਤੇ ਵੀ ਇੱਕ ਕੇਸ ਕਰ ਸਕਦੇ ਪੰਜਾਬ ਦੇ ਜਿੱਦਾਂ ਕਹਿੰਦਾ ਲੋਕ ਜੇ ਪੰਜਾਬ ਜੁਦਾ ਹੁੰਦਾ ਕੇਸ ਕਰਕੇ ਜੁਐਨਓ ਦੇ ਵਿੱਚ ਜਿੱਦਾਂ ਇਹ ਕੇਸ ਲਿਜਾ ਸਕਦੇ ਆ ਜੇ ਜਿਹੜਾ ਪੰਜਾਬ ਆਪਣਾ ਪਾਣੀ ਮਾਲ ਸਕਦਾ ਤੇ ਇਹ ਇਦਾਂ ਹੋਣੀ ਚਾਹੀਦੀ ਆ ਵੀ ਪਹਿਲਾਂ ਪੰਜਾਬ ਨੂੰ ਪਾਣੀ ਜਿਹੜਾ ਸਾਰਾ ਆਪਣਾ ਲਵੇ ਤੇ ਉਹ ਤੋਂ ਬਾਅਦ ਜਿਹੜਾ ਬਾਦੂ ਪਾਣੀ ਆ ਉਹਦਾ ਮੁੱਲ ਲਵੇ ਪੰਜਾਬ ਜਿਹਦਾ ਬਿਜਲੀ ਦਾ ਕਹਿ ਰਹੇ ਨਾ ਇਦਾਂ ਹੀ ਫੇ ਪੰਜਾਬ ਸਾਰਾ ਹੀ ਉਹ ਮੁੱਲ ਲਵੇ ਤਾਂ ਉਹ ਵਧੀਆ ਗੱਲ ਹੋਊਗੀ ਤੇ ਜਿੰਨੇ ਵੀ ਲੀਡਰ ਹੋਏ ਜਵਾਹਰ ਲਾਲ ਨਹਿਰੂ ਹੋਇਆ ਜਾਂ ਕੋਈ ਸੈਂਟਰ ਦੇ ਬڑے-ਬڑے ਲੀਡਰ ਹੋਏ ਇਹ ਨਹੀਂ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਵੀ ਕਾਂਗਰਸ ਨੇ ਤਾਂ ਇਹਨਾਂ ਦੇ ਲੀਡਰਾਂ ਨੇ ਬਹੁਤ ਜਿੱਦਾ ਰਾਜ ਵੀ ਉਹਨਾਂ ਨੇ ਕੀਤਾ ਵੀ ਧੱਕਾ ਬਹੁਤ ਕੀਤਾ ਤਾਂ ਵੀ ਉਹ ਉਹਦੇ ਨਾਲ ਮੈਂ ਤਾਂ ਕਹਿੰਦਾ ਵੀ ਪੰਜਾਬ ਨੂੰ ਬਹੁਤ ਜਿੱਦਾ ਵੀ ਪਿੱਛੇ ਚੱਲ ਗਿਆ ਤੇ ਇਹ ਨਹੀਂ ਜਿੱਦਾ ਵੀ ਕਹਿ ਲਓ ਵੀ ਗੁਪਤ ਜਿੱਦਾ ਮੁਕਾਦਮੇ ਜਿੱਦਾ ਵੀ ਮੁਕਾਦਮੇबाजी ਹੁਣ ਕਮਿਸ਼ਨਰ ਬਣਾਤਾ ਤਾਂ ਇਹਦਾ ਕੋਈ ਸਬੂਤ ਨਹੀਂ ਜਿੱਦਾ ਮਿਲਦਾ ਅਸਲੀ ਜਿੱਦਾ ਲਾਇਆ ਜਾਣਾ ਵਕੀਲ ਜੇ ਬਹਿਸ ਬਸਾਇਆ ਹੋਵੇ ਤੇ ਪੰਜਾਬ ਦਾ ਪਾਣੀ ਇਹ ਧੱਕੇ ਨਾਲ ਹੀ ਜਾਂਦੇ ਆ ਤੇ ਸਾਰਾ ਉਹਨਾਂ ਧੱਕਾ ਹੋ ਰਿਹਾ ਤੇ ਜੇ ਇਹ ਆਪਣਾ ਮਤਲਬ ਬਖਰਾ ਰਾਜ ਬਖਰੀ ਮੁਖਤਿਆਰੀ ਪੰਜਾਬ ਲੈਂਦਾ ਆ ਤੇ ਪੂਰਾ ਜਿਹਦਾ ਵੀ ਹੱਕਦਾਰ ਆ ਜਿਹਦਾ ਪਾਕਿਸਤਾਨ ਨੂੰ ਇਹ ਪਾਣੀ ਰੋਕ ਨਹੀਂ ਸਕਦੇ ਵਿਸ਼ ਬੈਂਕ ਨੇ ਜੋ ਵੀ ਸਮਝੌਤਾ ਕੀਤਾ ਆ ਇੰਡੀਆ ਵਾਲੇ ਕਹਿ ਦਿੰਦੇ ਆ ਧਮਕੀ ਦੇਂਦੇ ਆ ਉਹ ਰੋਕ ਨਹੀਂ ਸਕਦੇ ਇਸੇ ਤਰ੍ਹਾਂ ਹੀ ਮਤਲਬ ਪੰਜਾਬ ਆ ਪੰਜਾਬ ਦਾ ਵੀ ਕੋਈ ਫੈਸਲਾ ਨਹੀਂ ਹੋਇਆ ਤਾਂ ਇਸ ਕਰਕੇ ਪੰਜਾਬ ਪੂਰਾ ਆਪਣਾ ਜਿਹਦਾ ਵੀ ਸ਼ਕਤੀ ਦਿਖਾ ਸਕਦਾ ਪਰ ਲੀਡਰ ਪੰਜਾਬੀਆਂ ਦੀ ਬਹੁਤ ਕਮਜ਼ੋਰੀ ਰਹੀ ਆ ਇਹ ਜਿਹਦਾ ਵੀ ਇਹਨੇ ਜਿਦਾ ਵੀ ਬੋਨੇ ਸਾਫਤ ਹੋਏ ਆ ਇਹਨੇ ਪੜੇ ਲਿਖੇ ਨਹੀਂ ਹੋਏ ਠੀਕ ਹੈ ਇਸ ਕਰਕੇ ਮੈਂ ਕਹਿੰਦਾ ਹੱਕ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਏਸੀਜੀ ਅੱਜ ਦਾ ਪ੍ਰੋਗਰਾਮ ਵੱਖ-ਵੱਖ ਆਪਾਂ ਗੱਲਬਾਤ ਕੀਤੀ ਤੁਹਾਡਾ ਧੰਨਵਾਦ 1844 247 1550 ਇਹ ਆਉਣੇ ਨੰਬਰ ਹੁੰਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਮਾਂ ਬੋਲੀ ਨੂੰ ਪਿਆਰ ਕਰੀਏ ਵਧੀਆ ਸ਼ਬਦ ਉਚਾਰਨ ਕਰੀਏ ਵਧੀਆ ਬੋਲੀਏ ਮਾਂ ਬੋਲੀ ਜੇ ਭੁੱਲ ਜਾਵੋਗੇ ਕੱਖਾਂ ਵਾਂਗੂ ਰੁੜ ਜਾਵੋਗੇ ਰੱਬ ਰੱਖਾ ਕੱਲ 11 ਵਜੇ ਫੇਰ ਮੁਰਦਾ ਚੜ੍ਹਦੀ ਕਲਾ